ਚੋ ਫਨਿੰਦਰ ਫਨਿੰਦਰ ਕਈ ਸਤਿਨਾਮ ਤੁਹਾਨੂੰ ਸਮੁੰਦਰ ਸਮੁੰਦਰ ਦਾ ਸਮੁੰਦਰ ਗਿਆਨ ਦਾ ਹੀ ਹੋ ਸਕਦਾ ਹੈ ਹਰ ਦਾ ਨਾ ਹੈ ਕਹਿੰਦੇ ਆ ਕਿ ਤਰੀ ਬਹੁਤ ਜਿਹਾ ਪਿਆਸ ਹੈ ਕਈ ਇਨਕ ਗਿਆਨ ਹੁੰਦਾ ਕੋਲ ਦਾ ਉਹਦਾ ਸਮੁੰਦਰ ਹੀ ਉਤਰ ਇੱਕ ਮਤਲਬ ਐ ਉਹਨਾਂ ਨੂੰ ਹੰਕਾਰ ਵੀ ਹੈ ਨਾ ਹਾਥੀ ਦਾ ਕੀ ਹੰਕਾਰ ਪਹਾੜ ਜਿੱਡਾ ਹੰਕਾਰ ਪਰਬਤ ਪਹਾੜ ਜਿੱਡਾ ਸਭ ਤੋਂ ਵੱਡਾ ਯਾਰ ਲਗਿੰਦਰ ਹੁੰਦਾ ਤੇ ਹਾਥੀ ਵੀ ਡਾਇਆ ਕਿ ਪਹਾੜ ਜਿੱਡਾ ਜਿਵੇਂ ਉਹ ਤੇ ਚਾਇਆ ਚੱਲੀ ਚੱਤ ਤੇ ਚੱਲੀ ਦੀ ਚ ਬਹੁਤ ਬੁੱਢਾ ਘਕਾਰੀ ਹੋਵੇ ਜੇ ਗਿਆਨ ਜਿਆਦਾ ਤਾਂ ਹੰਕਾਰ ਵੀ ਉੱਡ ਜਾਂਦਾ ਐਣਾ ਮਤਲਬ ਜਿਹੜੇ ਸ਼ਾਸਤਰਾਂ ਦਾ ਗਿਆਨ ਹੈ ਗੁਰਮਤਿ ਮੈਂ ਉਹਦਾ ਹੰਕਾਰ ਹੁੰਦਾ ਨਹੀਂ ਇਸ ਕਰਕੇ ਗਿਆਨ ਕਣਦਾ ਹੁੰਦਾ ਹੁਣ ਕਣਦਾ ਗਿਆਨ ਹੈ ਗੁਰਮਤਿ ਦਾ ਗਿਆਨ ਹੁੰਦਾ ਹੀ ਕਣਦਾ ਇਹ ਤਾਂ ਛੱਡੀ ਜਾਂਦਾ ਬਾਕੀ ਗਿਆਨ ਇਹ ਤਾਂ ਇੱਕ ਖਿੰਦੇ ਦਰਸ਼ਨ ਵਾਲੀ ਗੱਲ ਰਹਿ ਜਾਂਦੀ ਹੈ ਬਸ ਬਾਕੀ ਤਾਂ ਸਾਰੇ ਖੱਡਣੇ ਹੀ ਕੀਤਾ ਰਿਹਾ ਨਾ ਇੱਕ ਆਦਮੀ ਨੂੰ ਇੱਕ ਗੱਲ ਦਾ ਗਿਆਨ ਕਰਾਉਣਾ ਤੇ ਤੂੰ ਕੀ ਹੈ ਸਰੀਰ ਵਾਲੇ ਦੀ ਗਿਆਨ ਕਰਾਉਣਾ ਉਹਦੇ ਬਾਰੇ ਸੰਸਾਰ ਵਾਲੇ ਦੀ ਗਿਆਨ ਕਰਾਉਣਾ ਸੰਸਾਰ ਵਾਲੇ ਤਾਂ ਜਿਹੜੇ ਸੰਸਾਰ ਦਾ ਪ੍ਰਭਾਵ ਪੈਂਦਾ ਉੱਗੜਨੇ ਉਹੀ ਗਿਆਨ ਕਰਾਉਣਾ ਸੰਸਾਰ ਬਰੀ ਸਾਇੰਸ ਐਡੀ ਬਥੇਰੀ ਹੈ ਕੋਈ ਵਿਸ਼ਾ ਦੀ ਟੱਚ ਕੀਤਾ ਹੋਇਆ ਜੀ ਜੰਤ ਦੇ ਜਿਹਨੇ ਸਾਰਿਆਂ ਨੂੰ ਉਹ ਤਾਂ ਗੁਰੂ ਤਾਂ ਸਾਰਿਆਂ ਨੂੰ ਗਿਆਨ ਦਿੰਦਾ ਇਸ ਕਰਕੇ ਗੁਰੂ ਨਿਹਯਾ ਗੁਰਦੇਵ ਵਾਲਾ ਗਿਆਨ ਹੈ ਸਾਡੇ ਕੋਲ ਗੁਰਦੇਵ ਕਹਿੰਦੇ ਨੇ ਇਹਨੂੰ ਗੁਰੂ ਨਹੀਂ ਕਹਿੰਦੇ ਗੁਰੂ ਤਾਂ ਪੂਰੇ ਦਾ ਨਾਮ ਜਿਹੜਾ ਸ਼ਬਦ ਸਿੱਧਾ ਹੁੰਦਾ ਉਹ ਤਾਂ ਸਾਰਿਆਂ ਨੂੰ ਹੀ ਗਿਆਨ ਜਿਹੜਾ ਬਿਨਾ ਕੰਨਾਂ ਦੇ ਸੁਣਦਾ ਹੈ ਨਾ ਉਹ ਗੁਰੂ ਹੈ ਉਹ ਸਭ ਖਾਤਰ ਇੱਕੋ ਹੀ ਹੈ ਜਿਵੇਂ ਜਿਹੜੀ ਲੈਕਟਿ ਸਿਟੀ ਹਲਦੀ ਦੇ ਵਿੱਚ ਤਾਰ ਵਿੱਚ ਉਹਦੇ ਨਾਲ ਤੁਸੀਂ ਕੁਝ ਕਰ ਲਓ ਮੋਟਰ ਚ ਲਓ ਚਾਹੇ ਚਾਹੇ ਲਾਈਟ ਹੀ ਲਓ ਚਾਹੇ ਪ੍ਰੈਸਤੀ ਲਾ ਲਓ ਗਰਮ ਕਰ ਲਓ ਹੀਟਰ ਚ ਲਓ ਉਹ ਤਾਂ ਕੋਈ ਚੀਜ਼ ਆਉਂਦੀ ਹੈ ਨਾ ਕੰਮ ਆ ਦੇ ਬਖਰੇ ਬਖਰੇ ਹੈਗੇ ਨੇ ਇਹ ਵੀ ਜਿਹੜਾ ਉਹ ਗਿਆਨ ਹੈ ਨਾ ਸ਼ਬਦ ਹੈ ਉਹ ਬਿਨਾ ਕਰਨ ਦਾ ਸੁਣ ਲਓ ਉਹ ਸਾਰੇ ਚੀਜ਼ਾਂ ਤੁਹਾਨੂੰ ਇੱਕੋ ਹੀ ਹੈ ਦੀ ਭਾਸ਼ਾ ਸਾਰੇ ਸਮਝਦੇ ਨੇ ਉਹ ਸਾਰਿਆਂ ਦੀ ਭਾਸ਼ਾ ਆ ਜਿਹੜੀ ਭਾਸ਼ਾ ਹੈ ਨਾ ਸਾਨੂੰ ਦਿੱਤੀ ਗਈ ਇਹ ਆਦਮੀ ਦੀ ਭਾਸ਼ਾ ਜਾਨਵਰ ਨਹੀਂ ਸਮਝਦੇ ਇਹ ਆਦਮੀ ਦਾ ਬੋਲਿਆ ਹੋਇਆ ਗਿਆਨ ਹੈ ਸਾਡੇ ਕੋਲ ਜਿਹੜਾ ਹੈ ਇਹ ਆਦਮੀ ਦਾ ਬੋਲਿਆ ਹੈ ਉਹ ਪਰਮੇਸ਼ਰ ਦਾ ਸਿੱਧਾ ਬੋਲਿਆ ਹੋਇਆ ਹੈ ਉਹ ਪਰਮੇਸ਼ਰ ਦਾ ਸਿੱਧਾ ਬੋਲਿਆ ਉਹ ਜੁਬਨ ਜਵਾਂਤ ਨਹੀਂ ਬੋਲੇ ਬਿਰਖਾ ਸਾਵਰਾ ਨਹੀਂ ਬੋਲੇ ਉਹ ਤਦ ਤੱਕ ਜੜ੍ਹ ਕੀ ਚੇਤਨ ਸਭ ਹਤੇ ਪੈ ਵਿੱਚ ਧਰਤੀ ਦੱਬੀ ਭਾਰ ਤ ਤਰਤੀ ਵੀ ਉਹਦੇ ਬੈਦੇ ਵਿੱਚ ਹਕਮਤ ਵਿੱਚ ਧਰਤੀ ਸੋਈ ਸਭ ਦੀ ਨਹੀਂ ਹੈ ਧਰਤੀ ਵੀ ਸਮਝ ਕੇ ਰਹੀ ਹੈ ਉਹ ਫੋਰਸ ਵਿੱਚ ਰੱਖੀ ਹੋਈ ਹੈ ਜਿਵੇਂ ਰਿਪੋਰਟ ਹੈ ਰਿਪੋਰਟ ਦੇ ਨਾਲ ਲਾਲੇ ਕੋਈ ਵੀ ਚੀ ਉਹ ਸਾਡੇ ਹਕੂਮਤ ਦੀ ਥੋੜੀ है. ਰਿਪੋਰਟ ਦੀ ਸ਼ਕਤੀ ਹੋਰ ਚੀਜ਼ ਆ ਉਹ ਇਹ ਰਿਪੋਰਟ ਕੰਟਰੋਲ ਚੀਜ਼ਾਂ ਨੇ ਜਿਹਨੀਆਂ ਜਾੜਿਆ ਰਿਪੋਰਟ ਨਾਲ ਚਲਦੀਆਂ ਨੇ ਜਿਹੜੀ ਚੇਤਨਾ ਉਹ ਹੋਰ ਚੀਜ਼ ਨਾਲ ਚਲਦੀ है, ਜਿਹੜੀ ਰਿਪੋਰਟ ਨਾਲ ਚਲਦੀ ਉਹ ਜੜ ਮਰ ਰਿਪੋਰਟ ਨਾਲ ਸਾਡੇ ਬਦੇ ਚਲਦੇ ਰਿਪੋਰਟ ਕੰਟਰੋਲਰ ਇਹ ਦੋਵੇਂ ਹੱਥਾਂ ਨਾਲ ਚਲਦੇ ਨੇ ਰਿਪੋਰਟ ਨਾਲ ਨਹੀਂ ਹੈ ਉਹ ਹੋਰ ਵੋੜ ਨਾ ਚੱਲਦਾ ਚੇਤਨ ਚੱਲਦਾ ਚੇਤਨ ਪ੍ਰੇਰੇ ਤੇ ਚੱਲਦਾ ਉਹ ਕੰਟਰੋਲ ਨਾਲ ਚੱਲਦਾ ਉਹ ਕੰਟਰੋਲ ਨਾਲ ਚੱਲਦਾ ਹੈ ਪ੍ਰੇਰੇ ਤੇ ਚੱਲਦਾ ਹੈ ਇਹਨੂੰ ਪ੍ਰੇਰਣ ਚੇਤਨ ਨੂੰ ਪ੍ਰੇਰਣਾ ਹੀ ਹੁੰਦੀ ਹੈ ਜਿਵੇਂ ਮਰਜ਼ੀ ਉਹ ਤੇ ਕਰਾ ਲੈਣ ਇਹ ਤਾਂ ਕਰਾਉਂਦਾ ਹੈ ਆਪਣੀ ਮਰਜ਼ੀ ਨਾਲ ਉਹ ਕਰਦੇ ਨੇ ਵੱਡੇ ਹੋਏ ਉਹਦੀ ਇੱਛਾ ਸ਼ਕਤੀ ਨਾਲ ਕੰਮ ਕਰਦੇ ਸੀ ਉਹ ਇੱਛਾ ਸ਼ਕਤੀ ਕੰਮ ਕਰਦੀ ਹੈ ਉੱਥੇ ਇੱਥੇ ਐਸੀ ਸ਼ਕਤੀ ਨਹੀਂ ਕੰਮ ਕਰਦੀ ਇੱਥੇ ਉਹਦੀ ਮਰਜ਼ੀ ਕੰਮ ਕਰਦੀ ਹੈ ਸਾਡੇ 'ਚ ਵਿੱਚ ਉਹਦੀ ਮਰਜ਼ੀ ਕੰਮ ਕਰਦੀ ਹੈ ਇੱਛਾ ਸ਼ਕਤੀ ਸਾਡੇ ਕੰਮ ਕਰਦੀ ਹੈ ਇੱਥੇ ਉਹਦੀ ਮਰਜ਼ੀ ਚਾਜਦੀ ਸਾਡੀ ਸਾਡੀ ਇੱਛਾ ਹੀ ਹੁੰਦੀ ਹੈ ਨਾ ਕੋਈ ਕਰਦੀ ਤਾਂ ਹੀ ਕਰਦੇ ਹਾਂ ਉੱਥੇ ਮਰਜ਼ੀ ਉਹਦੀ ਹੈ ਪਰ ਇਹ ਤਾਂ ਦੁਆ ਨਹੀਂ ਰਣੀ ਬਲੀ ਗੱਲ ਤਾਂ ਹੀ ਤਾਂ ਪੁੱਤ ਪਾਪ ਨੂੰ ਕਦੀ ਜਾਂਦੇ ਨੇ ਲੋਕ ਕਰਨ ਵਾਲੇ ਦੀ ਮਰਜ਼ੀ ਹੈ ਉੱਤੇ ਜੜ ਦੇ ਵਿੱਚ ਮਰਜ਼ੀ ਹੁੰਦੀ ਹੋਈ ਦੀ ਜੜ ਵਾ ਤੁਝ ਕੋਈ ਮਰਜ਼ੀ ਵਾਲੀ ਗੱਲ ਨਹੀਂ ਹੁੰਦੀ ਉਹ ਤਾਂ ਉਹ ਗੱਡੀ ਦੇ ਸਾਲ ਵਾਰਦੇ ਹੋਰ ਜੱਡੀ ਚੱਲਣੇ ਚੱਲ ਉੱਤੇ ਮਰਜ਼ੀ ਵਾਲੀ ਕਿਹੜੀ ਗੱਲ ਹੈ ਉੱਤੇ ਮਰਜ਼ੀ ਵਾਲੀ ਕੋਈ ਗੱਲ ਨਹੀਂ ਇੱਥੇ ਅਸੀਂ ਭੁੱਖੇ ਵੀ ਕੰਮ ਕਰ ਸਕਦੇ ਸਰੀਰ ਤੋਂ ਕੰਮ ਲੈ ਸਕਦੇ ਆਂ ਤੇ ਤੇਲ ਵੋ ਕੈ ਜਦ ਜੇ ਘਟ ਹਵਾ ਲੈ ਕੇ ਜਦ ਘਟ ਜਾਣਾ ਉੱਤਨੇ ਕੋ ਬਰਝੇ ਗੇਲ ਜਲਦੀ ਇਹ ਹੋਰ ਚੀਜ਼ ਆ ਹੋਰ ਚੀਜ਼ ਚੱਲਦਾ ਦੋਹੇ ਨੇ ਪੈਸੇ ਦੇ ਵਿੱਚ ਪਰ ਹੋਰ ਕਿਸਮ ਦੀ ਪਾਇਆ ਨੂੰ ਜਿਹੜੇ ਇੱਕ ਸਮੇਂ ਤੇ ਉਹਨੂੰ ਸਮਝਦੀ ਦੋਹਾਂ ਨੂੰ ਇੱਕ ਸਮਝਣਾ ਇਹ ਬੇਸਮਝ ਦੀ ਗੱਲ ਹੈ ਕਈ ਮੱਛ ਕਾਛ ਫਨਿੰਦਰ ਕਈ ਮੱਛ ਕਾਛ ਬੰਦਰ ਮੱਛੀ ਕਛਕੌੜ ਗਾਹਾਂ ਆ ਜਾਣੇ ਨੇ ਜਿਹੜੇ ਪਾਣੀ 'ਚ ਬੈਠ ਕੇ ਸਾਰਾ ਦਿਨ ਵਾਲਾ ਫੇਰਦੇ ਨੇ ਰਾਤ ਦਿਨ ਰਾਤ ਉਹ ਮੱਛੀ ਕਛਦੇ ਆਦਮੀ ਹੁੰਦੇ ਹੋਏ ਵੀ ਜਲ ਵਿੱਚ ਬੈਠ ਕੇ ਭਗਤੀ ਕਰਦੇ ਨੇ ਜਿਹੜੇ ਪਾਣੀ 'ਚ ਬੈਠ ਕੇ ਆਦਮੀ ਉਹ ਮੱਛੀ ਕਛਦੇ ਅਵਤਾਰ ਦੇ ਜਿਹੜੇ ਅਵਤਾਰ ਬਣੇ ਨੇ ਉਹਨੇ ਮੱਛੀ ਕਛ ਅਵਤਾਰ ਉਹਨਾਂ ਦੇ ਸੇਵ ਕਰਦੇ ਉਹ ਮੱਛੀ ਕਛ ਉਹ ਤਾਂ ਮੱਛੀ ਕਛ ਜਿਹੜੇ ਸੀਗੇ ਸੀ ਪਤਾ ਨਹੀਂ ਕੀ ਸੀ ਕੀ ਦੇਈ ਸੀ ਅਚਕਾਚ ਨਾ ਦਿਨ ਆਉਣੇ ਪਰ ਇਸ ਵਚਕਾਚੇ ਮੰਨ ਕੇ ਪਾਣੀ ਦੇ ਬੈਠ ਕੇ ਭਗਤੀ ਕਰਦੇ ਇੱਕ ਪਾਣੀ ਦੇ ਬੈਠ ਕੇ ਮੱਚ ਜਿਹੜੇ ਭਗਤੀ ਕਰਦੇ ਨੇ ਵਚਕਾਚ ਨੇ ਜਿਹੜੇ ਪੋਰੀਆਂ ਚ ਬੈਠ ਕੇ ਕਰਦੇ ਨੇ ਫਿਰ ਉਹਨਾਂ ਨੇ ਸਪਨੇ ਖੜ ਜੇ ਨਹੀਂ ਵੜਦਾ ਸਭ ਚਾਰ ਮਹੀਨੇ ਬਾਅਦ ਕੱਢੇ ਨਹੀਂ ਸਭ ਖਾਣਾ ਵੀ ਕੁਝ ਮਿੱਟੀ ਗਈ ਜਾਣੀ ਉਹ ਲੋਪ ਉਹ ਰਿਆਂ ਚ ਬੈਠ ਕੇ ਭਗਤੀ ਕਰਦੇ ਨੇ ਉਹਨਾਂ ਫਰਦਲ ਨੇ ਸਮਝ ਆਜੀ ਇਸ ਤਰੀਕੇ ਨਾਲ ਹਾਂ ਸਾਰੇ ਬੰਦੇ ਉਹ ਕਰਦੇ ਕੀ ਨੇ ਕੀ ਸੁਭਾਏ ਉਹਨਾਂ ਦਾ ਉਹ ਜਿਹੜਾ ਖੜ ਜਾ ਨਿਕੜ ਲੈ ਨਹੀਂ ਜੀ ਨੇ ਆਦਮੀ ਤੂੰ ਤੂੰ ਖੜ ਚ ਕਰ ਬੜਿਆ ਬਠ ਖੜਨ ਦਾ ਜਿਹਾ ਸਾਪ ਜਿਹਾ ਬੜਿਆ ਹੈ ਸੀ ਜਦ ਕਹ ਤਾਂ ਮੇਰਾ ਖੜਾ ਜਿਹੜਾ ਮੈਨੂੰ ਆਦਮੀ ਬਣਾ ਹੁਣ ਆਦਮੀ ਹੋ ਕੇ ਖੜ ਚ ਬਣ ਗਿਆ ਪੋਰੇਜ ਪੋਰੇਜ ਪੋਰੇਜ ਵੱਡ ਗਿਆ ਇਸ ਕਰਕੇ ਉਹਨਾਂ ਟਾਂਚ ਮਾਰੀ ਹੋਈ ਹੈ ਇਹਨਾਂ ਲੋਕਾਂ ਨੂੰ ਔਰ ਕ ਮੱਛਕਾਚ ਬੱਕੀ ਭਗ ਤੀਰ ਨਾਲ ਮੱਛਕਾਚ ਦਾ ਕੀ ਉਤਾਰ ਸਫਲਾ ਕੀ ਮਤਲਬ ਮੱਛਕਾਚ ਨਾਲ ਇਹ ਤਾਂ ਆਦਮੀ ਵਹਿਜ ਅੱਗੇ ਆਉਣਗੇ ਨਗੇ ਪੈਰੀ ਜਿਹੜੇ ਚੱਲਦੇ ਨੇ ਕਹਿੰਦੇ ਬਣਕਾ ਜਿਹੜੇ ਵਰਗ ਨੇ ਨਗੇ ਪੈਰੀ ਬਾਦਲ ਨੇ ਨਗੇ ਪੈਰੀਓ ਚੱਲਦੇ ਨੇ ਇਸ ਕਰਕੇ ਜਾਨਵਰ ਆ ਨਾ ਇਹਨਾਂ ਨੂੰ ਤੁਲਨਾ ਕੀਤੀ ਹੋਈ ਹੈ ਜਿਹੜੇ ਕੰਮ ਕਰਦੇ ਨੇ ਲੋਕ ਭਗਤੀ ਦੇ ਨਾ ਉਹ ਤੇ ਕਰਦੇ ਸੀ ਭਗਤੀ ਨਾ ਹੀ ਬੁੱਧੀ ਹਿੱਤ ਹੈ ਤੂੰ ਭੁਗਤ ਨੂੰ ਕਿਹੜਾ ਬੋਰਡ ਲਾਇਆ ਦਿੰਦਾ ਪੌੜੂ ਲੱਗਿਆ ਫਿਰ ਉਹ ਫਿਰਦਾ ਵਿਚਾਰਾ ਕਈ ਦੇਵ ਆਦਿ ਕੁਮਾਰ ਕਈ ਦੇਵ ਆਦਿ ਕੁਮਾਰ ਨੇ ਦੇਵਤੇ ਅਰੋਣਾ ਚ ਆਦਿ ਕੁਮਾਰ ਵੀ ਨੇ ਉਹ ਆਦਿ ਕੁਮਾਰ ਉਹਦੇ ਨਹੀਂ ਲੱਗਿਆ ਦੀ ਉਹਨਾਂ 'ਚ ਉਹਨਾਂ ਨੂੰ ਕਥਾ ਵਾਰਤਾ ਸੁਣਾਉਣ ਵਾਲੇ ਉਹ ਕਹਿੰਦੇ ਨੇ ਇਹਨਾਂ ਨੂੰ ਵੀ ਬ੍ਰਹਮਾ ਦਾ ਅਵਤਾਰ ਹੈ ਜੀ ਜਿਹੜੇ ਦੇਵਤਿਆਂ ਨੂੰ ਕਥਾ ਵਾਰਤਾ ਸੁਣਉਂਦੇ ਨੇ ਨਾ ਜਿਵੇਂ ਅਸਾਂ ਇੱਥੇ ਸੁਣਉਂਦੇ ਨੇ ਦੁਆ ਦੇ ਉਹ ਸ੍ਰੇਸ਼ਟ ਮੰਨਦੇ ਨੇ ਉਹਨੂੰ ਦੇਵਤੇ ਬੈ ਕੇ ਉਹਨਾਂ ਤੋਂ ਸੁਣਦੇ ਨੇ ਕੁਝ ਗ੍ਰੰਥ ਸੁਣਦੇ ਨੇ ਸਿੱਖਿਆ ਉਹ ਆਦਿਕੁਮਾਰ ਕਹਿੰਦੇ ਨੇ ਉਹ ਕਈ ਕ੍ਰਿਸ਼ਨ ਬਿਸ਼ਨ ਅਵਤਾਰ ਕਈ ਕ੍ਰਿਸ਼ਨ ਬਿਸ਼ਨ ਅਵਤਾਰ ਨੇ ਬਣੇ ਫਿਰਦੇ ਜਿਹੜਾ ਕ੍ਰਿਸ਼ਨ ਦਾ ਭਗਤ ਹੈ ਉਹ ਕ੍ਰਿਸ਼ਨ ਨੇ ਸਮਝ ਆਪਣੇ ਆਪ ਜਿਵੇਂ ਖਾਲਸਾ ਪਰਮੇਸ਼ਰ ਦਾ ਨਾਮ ਹੈ ਖਾਲਸਾ ਜਦੋਂ ਪਾਛ ਆਪਣੇ ਆਪ ਨੂੰ ਵੀ ਖਾਲਸਾ ਕਹਿੰਦੇ ਨੇ ਔਰ ਖਾਲਸਾ ਜਿਹੜਾ ਸਿੰਘ ਨੇ ਆਪਣੇ ਆਪ ਨੂੰ ਖਾਲਸਾ ਕਹਿੰਦੇ ਕਿ ਜੈਸਾ ਭਾਵੇ ਜੈਸਾ ਸੇਵੇ ਤੈਸਾ ਹੋਵੇ ਜੇ ਖਾਲਸਾ ਮੰਨ ਕੇ ਅਸੀਂ ਉਹਨੂੰ ਸੇਵਾਾਂ ਤਾਂ ਆਪੇ ਵੀ ਖਾਲਸੇ ਹੋ ਜਾਂਦੇ ਜਿਹੜੇ ਕ੍ਰਿਸ਼ਨ ਮੰਨ ਕੇ ਸੇਵਾਦਾਰ ਆਪ ਵੀ ਕ੍ਰਿਸ਼ਨ ਜਿਹੜੇ ਸ਼ਿਵ ਮੰਨ ਕੇ ਸੇਵਾਦਾਰ ਆਪ ਵੀ ਸ਼ਿਵ ਦੇ ਜੇ ਬਿਸ਼ਨੂ ਬਣ ਕੇ ਸੇਵ ਦੇ ਨਾਲ ਬਿਬਿਸ਼ਨ ਨੇ ਬਿਸ਼ਨ ਭਗਤ ਬਿਸ਼ਨੇ ਹੁੰਦਾ। ਕ੍ਰਿਸ਼ਨ ਭਗਤ ਕ੍ਰਿਸ਼ਨ ਹੁੰਦਾ। ਜਿਹਾ ਜਿਹਾ ਤੈਸਾ ਹੋਇਆ ਨਾ। ਕਈ ਕਿਸ਼ਨ ਬਿਸ਼ਨ ਅਵਤਾਰ ਕਈ ਕਿਸ਼ਨ ਬਿਸ਼ਨ ਦੇ ਪਜਾਰੀ ਨੇ ਜਿਹੜੇ ਸੇਵ ਦੇ ਨੇ ਉਹ ਅਵਤਾਰ ਉਹਦੇ ਕੋ ਕੋ ਨੂੰ ਪ੍ਰੋਜੈਕਟ ਕਰਦੇ ਨੇ ਕਿਸ਼ਨ ਨੂੰ ਐਸਾ ਹੋਇਆ। ਦੀ ਯਾਦ ਨਾਲ ਉਹਦਾ ਤਾਜ਼ਾ ਰੱਖਦੇ ਨੇ ਉਹਦੀ ਯਾਦ ਨੂੰ ਉਹ ਅਵਤਾਰ ਹੈ ਪਹਿਲੀ ਯਾਦ ਨੂੰ ਤਾਜ਼ਾ ਕਰਨ ਵਾਲਾ ਉਹਦਾ ਅਵਤਾਰ ਹੁੰਦਾ ਦੇਖੋ ਅਵਤਾਰ ਕਾਪੀ ਹੁੰਦੀ ਹੈ ਅਵਤਾਰ ਅਸਲੀ ਨਹੀਂ ਹੁੰਦਾ ਪਹਿਲਾਂ ਕੁਝ ਹੋਰ ਸੀ ਉਹਦਾ ਅਵਤਾਰ ਇਹ ਉਹ ਸੈਕੰਡ ਫਾਰਮ ਹੁੰਦੀ ਕਾਪੀ ਹੁੰਦੀ کئی ਇੰਦਰ ਬਾਰ ਬਹਾਰ کئی ਇੰਦਰ ਉਹ ਕੀ ਨੇ ਝਾੜੂ ਮਾਰਨ ਵਾਲੇ ਉਹ ਉਹ ਦਰਵਾਜੇ ਤੇ ਝਾੜੂ ਮਾਰਨ ਵਾਲੇ ਨੇ ਬਾਹਰ ਹੁੰਦਾ ਦਰਵਾਜਾ ਦਰਵਾਜੇ ਦੇ ਸੇਵਾਦਾਰ ਨੇ ਸੇਵਾਦਾਰ ਝਾੜੂ ਮਾਰਨ ਵਾਲੇ ਲੋਕਾਂ ਨੂੰ ਲੋਪਾਲੂ ਗਲਤ ਕੰਮਾਂ ਤੋਂ ਰੋਕ ਰੋਕੜ ਵਾਲੇ ਜਿਹੜਾ ਰਾਜਾ ਗਲਤ ਕੰਮਾਂ ਤੋਂ ਰੋਕਦਾ ਉਹਨਾਂ ਦੇ ਅੰਦਰ ਝਾੜੂ ਮਾਰਦਾ ਕੀ ਕਹਿੰਦਾ ਕੰਮ ਕਰਦੇ ਉਹ ਜਿਹੜੀ ਉੱਥੇ ਆਈ ਸੀ ਨਾ ਦੇਵੀ ਝਾੜੂ ਮਾਰਦੀ ਉਹ ਐਸਾ ਕਰਕੇ ਖੈਨ ਨਾ ਰਿਹਾ ਹੁਮ ਗੁਰਮਤਿ ਵੀ ਸਾਡਾ ਅੰਦਰ ਸਾਫੇ ਕਰਦੀ ਕਿਸੇ ਨੂੰ ਚੰਦੇ ਪਾਸੇ ਲਾਉ ਲੋ ਚਾਹੇ ਰਾਜਾ ਆਪਣੇ ਰੋਹ ਨਾਲੇ ਲਾਉਂਦਾ ਉਹਦੇ ਹਿਰਦੇ ਨੂੰ ਕਾਨੂੰਨੀ ਤੌਰ ਤੇ ਸ਼ੁੱਧ ਕਰਨ ਕਾਨੂੰਨੀ ਤੌਰ ਤੇ ਉਹਨੂੰ ਬਤਰਾ ਠੀਕ ਕਰ ਫੋਰਸ ਨਾਲ ਠੀਕ ਕਰ ਲੋ ਉਹ ਵੀ ਉਹਦਾ ਝਾੜੂ ਮਾਰ ਰਹੀ ਹੈ ਉਹਦੇ ਅਸਲ ਗੱਦਗੀ ਆ ਨੂੰ ਦੂਰ ਕਰ ਲੋ ਕਈ ਬੇਦ ਔ ਮੁਖਚਾਰ ਕਈ ਬੇਦ ਬੇਦ ਜਿਹੜਾ ਲਫਜ਼ ਹੈ ਬੇਦ ਅਸਲ ਦੇ ਵਿੱਚ ਗ੍ਰੰਥ ਦਾ ਨੋ ਬੇਦ ਨਹੀਂ ਹੈ ਗ੍ਰੰਥ ਦਾ ਨੋ ਬੇਦਵਾਚ ਪੈ ਗਿਆ ਜਿਵੇਂ ਜਿਹੜਾ ਗੁਰੂ ਆ ਚੇਤਨ गुरु तो परमेश्वर है गुरु तो परमेश्वर है फिर ओ तो जो मिलता गया रोदा नु गुरु पे गया हां hmm. ज्ञान गुरु ज्ञान गुरु जड़ हो गया हूं कि गुरु तो हो जाना ना फिर ज्ञान तो हो जाना ज्ञान हो जाना है हो जाता जड़ होता फिर खाने वाली चीज है खांदा ਪ੍ਰਭ ਗਿਆਨਿਕਾ ਭੋਜਨ ਗਿਆਨ ਗਿਆਨ ਜਿਹੜਾ ਗਿਆਨ ਭੋਜਨ ਪ੍ਰਭ ਗਿਆਨਿਕਾ ਭੋਜਨ ਇਸੇ ਕਰਕੇ ਕਿ ਹੈ ਨਾ ਥਾਲੇ ਵਿੱਚ ਇਤਨੀ ਵਸਤੂ ਪਈਓ ਸਤ ਸੰਤੋਖ ਵਿਚਾਰੋ ਉਬਰਤਨਾਮ ਠਾਕਰ ਕਾ ਪਈਓ ਜਿਸ ਦਾ ਸਬਸਦਾਰ ਜੇ ਕੋ ਖਾਵਾ ਜੇ ਕੋ ਹੋਇਆ ਲਾਲੋ ਹਮ ਖਾ ਕੇ ਹਜਮ ਕਰਨ ਵਾਲੀ ਚੀਜ਼ ਹੈ ਜਿਵੇਂ ਕੋਈ ਚਾਟੀ ਚੱਪਾ ਦਹੀਂ ਬਾ ਕੇ ਰੜਕਦੇ ਆਂ ਦਰਭੋਜਨ ਵੀ ਤਾਂ ਰੜਕੇ ਹੁੰਦਾ ਉਹਦੇ ਤਾਤੜ ਗਲੇ ਉਹ ਅੱਡ ਲੱਸੀ ਅੱਡ ਹੋ ਜਾਂਦੀ ਹੈ ਇਹ ਜੇ ਕੋਈ ਖਾਵੇ ਜੇ ਕੋ ਕੋ ਪੁੱਛਿਆ ਲਿਖਾ ਉਹ ਜੇ ਗੁਰੂ ਚੇਤਨ ਹੋਵੇ ਤਾਂ ਖਾਈ ਤਾਂ ਥੋੜੀ ਉੱਦਾਂ ਜੇ ਉਸ ਗੁਰੂ ਨੂੰ ਚੇਤਨ ਮੰਨਾਂਗੇ ਤੁਸੀਂ ਤਾਂ ਖਾਣ ਵਾਲੀ ਚੀਜ਼ ਨਹੀਂ ਹੁੰਦੀ ਚੇਤਨ ਨੂੰ ਕਿ ਮੈਂ ਚੇਤਨ ਬਸ ਇਹ ਫਰਕ ਨਹੀਂ ਸਿੱਖ ਨੂੰ ਸਮਝਾਉਣ ਵਾਲੀ ਸੌਖਾ ਨਹੀਂ ਸਮਝਾਉਂਦਾ ਹਾਂ ਵੈਸੇ ਮੋਟੀ ਕਰ ਲੈਗੇ ਅੰਨ ਹੋਏ ਤਾਂ ਅੰਨ ਹੋਏ ਹੋਏ ਨੇ ਤਾਂ ਹੋਈ ਸੁਣਦੇ ਹੀ ਨਹੀਂ ਗੱਲ ਗੱਲ ਕੀ ਹੈ ਚੇਤਨ ਛੱਡਦੀ ਇਹਨਾਂ ਨੂੰ ਸਮਝੇ ਨਹੀਂ ਗਿਆਨ ਜਿਹੜਾ ਗੁਰੂ ਦਾ ਚੇਤਨ ਦਾ ਭੋਜਨ ਹੈ ਗਿਆਨ ਗੁਰੂ ਆਤਮ ਉਪਦੇਸ਼ੋ ਆਤਮ ਉਪਦੇਸ਼ ਦੇ ਵਿੱਚ ਗਿਆਨ ਗੁਰੂ ਹੁੰਦਾ ਗਿਆਨ ਗੁਰੂ ਕਿਹੜਾ ਗਿਆਨ ਗੁਰੂ ਹੈ ਜਿਹੜਾ ਆਤਮ ਉਪਦੇਸ਼ ਗੁਰਬਾਣੀ ਆਤਮ ਉਪਦੇਸ਼ ਹੈ ਸਾਰਾ आत्मज्ञान या ब्रह्मचर्य लोग कहेंगे गीता तो ब्रह्मचर्य ब्रह्म ने विचार कीती हुई है ब्रह्म की है ब्रह्म बारे विचार कीती हुई है ये आत्मज्ञान सार आत्मोपदेश आत्मोपदेश पे संजुब को जाप सु अजपा जाप है अजपा जाप है उनी जपा जांदा वाला फड़के गुरु वाणी नु समझणा जाप जाप है ਜਪਿਆ ਜਾਦਾਰੀ ਹੈ ਜਾਪ ਇਹ ਅਸਲ ਤੇ ਜਾਪ ਇਹੀ ਹੈ ਦੂਜਾ ਜਾਪ ਨਹੀਂ ਹੈ ਵਾਰ-ਵਾਰ ਰਟਮ ਕਰਨਾ ਉਹ ਰਟਣ ਚੀਜ਼ ਹੈ ਉਹ ਰਟਣਾ ਰਟਮ ਕਰਨਾ ਦੋ ਤਾਰ ਰਟ ਦੋ ਤਾਰ ਰਟਣ ਜਿਵੇਂ ਸਤ ਲੈ ਕੇ ਸ਼ਬਦ ਲੈ ਲਿਆ ਵਾਰ-ਵਾਰ ਉਹ ਪੜੀ ਜਾਣਾ ਉਹ ਜਾਪ ਨਹੀਂ ਹੁੰਦਾ ਇਹ ਅਜਾਪਾ ਜਾਪ ਹੈ ਗੁਰਵਾਨੀ ਕੋ ਜਾਪ ਪਰਵਾਨੀ ਹੈ ਉਹ Hindu ਮਤ ਦਾ ਜਾਪ ਹੈ ਉਹ ਜਾਪ ਘਟਣ ਕੀਤਾ ਹੈ ਕੁਰਬਾਨੀ ਨਹੀਂ ਉਹ ਜਾਪ ਲਗੋਦੀ ਹੈ ਉਹ ਜੋ ਪ੍ਰਾਪਤੀ ਕੁਛ ਨਹੀਂ ਪ੍ਰਾਪਤੀ ਤਾਂ ਹੈ ਜੇ ਵਿਚਾਰੀ ਜਾਵੇ ਵਾਡੀ ਉਹ ਜੋ ਪ੍ਰਾਪਤੀ ਹੈ ਸੰਤਾਂ ਬਖਣ ਖਾਇਆ ਛਾਜ ਪੀਏ ਖਰਚੇ ਕੱਢੋਗੇ ਤਾਂ ਖਾਓਗੇ ਜੇ ਕੱਢਣਾ ਨਹੀਂ ਲੜਕਲਾਂ ਨਹੀਂ ਖਾਓਗੇ ਇਹ ਅਜਾਬ ਆਜਾਬ ਕਹਿੰਦੇ ਡੋਟੋ ਬਿਲਕੁਲ ਤਾਂ ਕਾ ਮੂੜੋ ਚਾਰਤ ਪੈਦਾ ਜਾ ਕੋ ਪੈਪ ਨੂੰ ਪਵਤ ਬੇਦਾ ਇੱਕ ਤਾਂ ਪਕਤੀ ਆ ਸਾਡੇ ਕੋਲ ਹੁਣ ਇਹਦਾ ਵੀ ਉਹ ਅਰਥ ਐ ਕਰ ਦਿੰਦੇ ਨੇ ਪੜਤ ਲਿਖੀ ਹੋਈ ਜੇ ਪੇਤਾ ਲਿਖਣਾ ਵਾਲੇ ਨੂੰ ਪੜੋ ਅਸੀਂ ਬੇਦਾ ਨਾਲ ਬੇਤਾ ਉਹ ਲਿਖਣ ਵਾਲੇ ਨੇ ਭੇਦ ਪਾਇਆ ਜੋ ਲਿਖਣ ਵਾਲੇ ਨੇ ਭੇਦ ਪਾਇਆ ਉਹ ਲਿਖ ਦਿੱਤਾ ਉਹ ਗਰਮ ਤਾਂ ਆਪਣੇ ਆਪ ਕੋਈ ਵੇਦ ਬਲੂ ਜਰੋਈ ਵੀ ਛੱਡੋ ਫਰੋ ਕਨ ਇਹ ਬੇਦਾ ਹੈ ਨਾ ਬੇਦ ਸੁਣ ਇਹ ਸੁਣ ਇਹਨੂੰ ਸੁਣਦਾ ਬੇਹਦ ਸੁਣ ਬੇਦ ਸੁਪਈਦਾ ਸੁਣੇ ਸਾਹਿਬ ਦੇ ਪੁਗਤੀ ਹੈ ਇਹ ਮੇਰੇ ਵਿਚਾਰ ਕੀ ਇਹ ਸਮਝਦਾ ਵੇਦ ਵੇਦ ਸੁਣਦਾ ਸੁਣਦਾ ਚੇਤਨ ਹੋਦਾ ਸੁਣਦਾ ਸਮਝਣਾ ਤਾਂ ਚੇਤਨ ਨਾਲ ਸੰਬੰਧ ਇਸ ਕਰਕੇ ਜਿਹੜਾ ਭੇਦ ਹੈ ਹਾਂ ਸਾਧਕੇ ਮਾਮਾ ਭੇਦ ਨਾ ਜਾਣੇ ਭੇਦ ਉਹਨਾਂ ਸਾਧਕੇ ਮਾਮਾ ਬੇਦਨ ਜਾਣਣਾ ਤਾਂ ਉਹਨੂੰ ਚੇਤਨ ਬੇਦਨ ਜੇ ਤਾਂ ਸੁਣਾ ਬਖਿਆ ਨਾ ਫਿਰ ਇੱਥੇ ਬੇਦਨ ਕੀ ਕਰਾਂਗਾ ਤੁਸੀਂ ਸੁਣੇ ਵੀ ਆ ਗਿਆ ਬੇਦਵਸਤ ਸੁਣੇ ਵੀ ਆ ਗਿਆ ਨਾ ਬੇਦਵਸਤ ਹੈ ਕੀ ਕਰਾਂਗਾ ਇੱਥੇ ਤੁਸੀਂ ਬੇਦਨ ਸ਼ਬਦ ਚੇਤਨ ਵਾਸਤੇ ਆਇਆ ਹੈ ਜਿਹੜਾ ਪੋਜ਼ਿਟਿਵ ਮਾਨਾ ਉਹਦੇ ਵਾਸਤੇ ਬੇਦ ਆਇਆ ਹੈ ਚਿੱਤ ਵਾਸਤੇ ਜਿਹੜਾ ਪੋਜ਼ਿਟਿਵ ਮਾਨਾ ਸ਼ੁੱਧ ਮਾਨਾ ਉਹਦੇ ਵਾਸਤੇ ਬੇਦ ਆਇਆ ਹੈ ਜੇ ਤਾ ਸੁਣਾ ਤੇ ਤਾ ਬਖਿਆਨੀ ਜਦਾਂ ਉਹਨੇ ਸੁਣ ਲਿਆ ਉਹਨੂੰ ਬਖਾਨ ਕਰ ਦਿੰਦਾ ਇਹ ਜਿਹੜਾ ਗੁਰਬਾਣੀ ਹੈ ਇਹ ਸੁਣ ਕੇ ਹੀ ਬਖਾਨ ਕੀਤਾ ਹੋਇਆ ਜਿਹੜਾ ਬਖਾਨ ਕਰ ਰਿਹਾ ਉਹ ਵੇਦ ਜਿਹੜਾ ਗੁਰਬਾਣੀ ਦਾ ਬਖਾਨ ਕਰ ਰਿਹਾ ਨਾ ਸੁਣ ਕੇ ਤੁਰਕੀ ਬਾਣੀ ਦਾ ਉਹ ਆਪੇ ਵੇਦ ਹੈ ਜਿਉ ਉਹਨੇ ਲਿਖ ਦਿੱਤਾ ਉਹਦਾ ਨਾਮ ਵੇਦ ਪੈ ਗਿਆ ਬਾਦ ਦੇ ਵਿੱਚ ਉਹਦਾ ਨਾਮ ਪੈ ਗਿਆ ਬੇਦਾ ਸਮਝ ਆਦੀ ਜੋ ਉਹਨੇ ਲਿਖ ਦਿੱਤਾ ਉਹਦਾ ਨਾਮ ਵੀ ਬੇਦੇ ਪੈ ਗਿਆ ਉਹ ਬੇਦ ਜਿਹੜਾ ਉਹਦੇ ਨਾਲ ਬੇਦ ਪਿਓ ਦਾ ਅਰਥ ਗਿਆਨ ਹੁੰਦਾ ਹੈ ਉਹਦਾ ਅਰਥ ਫਿਰ ਗਿਆਨ ਹੋ ਜਾਂਦਾ ਬੇਦ ਦਾ ਬੇਦਬਾਣੀ ਕਹੂ ਬੇਦਬਾਣੀ ਗਿਆਨ ਵਾਣੀ ਜਿਵੇਂ ਗੁਰਬਾਣੀ ਸਭ ਜਾਣੀ ਗੁਰਬਾਣੀ ਦਾ ਮਤਲਬ ਆ ਕਿ ਤੇ ਗਿਆਨ ਮਿਲਿਆ ਸਾਨੂੰ ਇਹ ਆ ਸਤਗੁਰ ਦੁਆਰਾ ਬੋਲੀ ਹੋਈ ਬੜੀ ਗੁਰਬਾਣੀ ਫਿਰ ਉਹਨਾਂ ਗੁਰਲਾਖੀ ਦੇ ਫਾਇੰਡ ਕੀਤਾ ਗੁਰ ਕੀ ਹੁੰਦਾ ਗੁਰ ਮੇਰਾ ਗਿਆਨ ਗੁਰ ਦੇ ਦਾ ਗਿਆਨ ਕਹਿੰਦੇ ਸਾਰੇ ਗੁਰ ਗਿਆਨ ਹੀ ਹੁੰਦਾ ਗਿਆਨ ਜੋ ਸਤਗੁਰ ਤੋਂ ਮਿਲਿਆ ਗੁਰਦੇਵ ਤੋਂ ਮਿਲਿਆ ਗੁਰਬਾਣੀ ਜੋ ਮਿਲਿਆ ਉਹ ਵੀ ਗੁਰ ਹੈ ਗੁਰਬਾਣੀ ਦਾ ਮਤਲਬ ਹੈ ਉਹ ਬਾਣੀ ਜੀ ਸਾਨੂੰ ਗਿਆਨ ਬੜਦਾ ਤਾਂ ਮਿਲਦਾ ਉਧਰ ਬੇਦਬਾਨੀ ਦਾ ਮਤਲਬ ਵੀ ਹੈ ਜੀ ਤੋ ਸਾਨੂੰ ਖਿਆਲ ਬੇਦਾਰਸ਼ ਵਿਗਿਆਨ ਇਸ ਕਰਕੇ ਉਦੋਂ ਬੇਦਬਾਨੀ ਕਹਿੰਦੇ ਸੀ ਹੁਣ ਗੁਰਬਾਨੀ ਕਹਿੰਦੇ ਨੇ ਗੱਲ ਇੱਕੋ ਹੀ ਕਈ ਬੇਦ ਕਈ ਬੇਦ ਨੇ ਇਹਦੀ ਗੁਰਬਾਨੀ ਦੀ ਵਿਆਖਿਆ ਕਰਨ ਵਾਲੇ ਜਿਵੇਂ ਸਾਰੇ ਭਗਤ ਬੇਦ ਨੇ ਆ ਉਕਤਾਰ ਉਹਨੂੰ ਕਹਿੰਦੇ ਨੇ ਜਿਹੜੇ ਜੀਰਾਂ ਦੇ ਜਿਵੇਂ ਚਾਰੇ ਵੇਦ ਦੀ ਯਾਦ ਕਰ ਲੈਣੇ ਬੁਖ ਜਵਾਨੀ ਚਾਰੇ ਵੇਦ ਬੁਖਾਗਰ ਕਰ ਲੈਣੇ ਜਵਾਨੀ ਯਾਦ ਕਰ ਲੈਣੇ ਉਹਨੂੰ ਬੁਖਚਾਰ ਕਹਿੰਦੇ ਨੇ ਹਾਂਜੀ ਕਈ ਰੁੱਦਰ ਛੁੱਦਰ ਸਰੂਪ ਕਈ ਰੁੱਦਰ ਛੁੱਦਰ ਸਰੂਪ ਰੁੱਦਰ ਦੇ ਸਰੂਪ ਨੂੰ ਛੁੱਦਰ ਕਹਿੰਦੇ ਕਟਿਆ ਲੂਝ ਕੋਈ ਕਹੇ ਫਿਰ ਜੀ ਦੀ ਬਿਰਤੀ ਤਾਂ ਉਹ ਬੜੀਆਂ ਜਾਣਾ ਜਿਹੜੇ ਖੰਭ ਨੇ ਇਹਦੇ ਇਹਨਾਂ ਦੇ ਪੈਰੋਂ ਭੂਤ ਸੀਤ ਲਤਾਵਾ ਜਿਹੜੇ ਉਹ ਕੰਮ ਕਰਨ ਵਾਲੇ ਨੇ ਉਨੀ ਚੇ ਆਦਮੀ ਬਣੇ ਜਾਂਦੇ ਸੀ ਉਹ ਸਾਧੂ ਵੀ ਐਸਾ ਦੇ ਚੇ ਟੂੜੇ ਡਾਂਬਣ ਕਰਨੇ ਹੋਣਾ ਪਰਾ ਕਟਿਆ ਹੈ ਕੰਮ ਰੁੱਦਰ ਦੇ ਜੇ ਉਤਾਰ ਨੇ ਸ਼ੁੱਦਰ ਨੇ ਸ਼ੁੱਦਰ ਜਿਹੜੀ ਕਟਿਆਨ ਉਹਨਾਂ ਦੀ ਬਿਰਤੀ ਦੀਚ ਬਿਰਤੀ ਦੇ ਨੇ ਵਿਰਤੀ ਦੀ ਗੱਲ ਹੈ ਗ੍ਰਿਹੀ ਹੋਈ ਵਿਰਤੀ ਦੇ ਨੇ ਕਈ ਰਾਮਕ੍ਰਿਸ਼ਨ ਅਨੂਪ ਕਈ ਰਾਮਕਿਸ਼ਨ ਰੂਪ ਰਾਮਕ੍ਰਿਸ਼ਨ ਨਹੀਂ ਜਿਹੜੇ ਅਨੂਪ ਅਨੂਪ ਮਾਨ ਕਰਕੇ ਰਾਮਕਿਸ਼ਨ ਨੇ ਸਰੀਰ ਕਰਕੇ ਰਿਹਾ ਨੋ ਬਣ ਕਰਕੇ ਰਾਮਕ੍ਰਿਸ਼ਨ ਦਾ ਰੂਪ ਹੋ ਸਰ ਕਹਿ ਲਿਓ ਆਤਮਾ ਕਰਕੇ ਹੁਣ ਸਰੀਰ ਤਾਂ ਉਹਨਾਂ ਦਾ ਅਲੱਗ ਹੈ ਆਤਮਾ ਕਰਕੇ ਕ੍ਰਿਸ਼ਨ ਨੂੰ ਦੇਰੇ ਆਪਣੇ ਆਪ ਨੂੰ ਉਹ ਕ੍ਰਿਸ਼ਨ ਬਣਨਾ ਚਾਹੁੰਦੇ ਨੇ। ਸਰੀਰ ਕਰਕੇ ਨਹੀਂ ਭੇਖਤਾਲਨ ਕਰਦੇ ਹੋ। ਸਰੀਰ ਕਰਕੇ ਨਹੀਂ ਭੇਖਤਾਲਨ ਕਰੇ ਖਾਲਸੇ ਦਾ ਭੇਖਿਆ ਜਾ। ਇਹ ਤੇ ਸਰੀਰ ਦਾ ਭੇਖਾ ਸਾਡਾ ਇਹ ਜਿਹਾ ਪਰਮੇਸ਼ਰ ਆ ਬੇ ਥੋੜੀ ਹੈ। ਕਿਉਂਕਿ ਸਮਝੇ ਪਰਮੇਸ਼ਰ ਵੀ ਆਇਆ ਜੀ ਅਸਲ ਤੇ ਚੱਕਰ ਲਾਇਆ ਹੋਇਆ ਨੇ। ਦਮਾਲਾ ਬਣਿਆ ਹੋਇਆ ਇਹ ਤਾਂ ਗੱਲ ਕਰਦਾ। ਉਹ ਤਾਂ ਆਤਮਾ ਹੈ। ਸ਼ਬਦ ਦਾ ਰੂਪ ਹੈ ਉਹ ਤਾਂ। ਆਤਮਾ ਕਰਕੇ ਅਸੀਂ ਖਾਲਸਾ ਹੈ ਆਤਮਾ ਕਰਕੇ ਸਭ ਕਿਉਂਕਿ ਜੋ ਆਤਮਾ ਨੇ ਸ਼ਬਦ ਸੁਣੋ ਕੋਰ ਸ਼ਬਦ ਸੁਣਾ ਹੋਇਆ ਪਰ ਲੈ ਜਾਣੇ ਕੋਈ ਨਹੀਂ ਉਹ ਸਰੀਰ ਤਾਂ ਇਥੇ ਰਹਿ ਜਾਂ ਉਹ ਜਿਹੜੇ ਰਾਮਚੰਦਰ ਰਾਕੇਸ਼ਨ ਨੂੰ ਬੋਲ ਰਹੇ ਉਹ ਵੀ ਆਤਮਿਕ ਲੈਵਲ ਦੀ ਗੱਲ ਹੈ ਉਹਨਾਂ ਦੀ ਆਤਮਾ ਉਹ ਜਿਹੜੇ ਸਟੇਟੂਡ ਦੀ ਹੋ ਜੂ ਜਾਇਜਾ ਉਹਨਾਂ ਦਾ ਸਟੇਟੂਡ ਸੀ ਗੱਲ ਸੀ ਉਹ ਹੈ ਜੇ 14 ਦਿਨ ਸਰੀਰ ਤਾਂ ਹਟਾ ਉਹਨਾਂ ਦਾ ਵਾਰੋਸ਼ਰੀਰੇ ਤੇ ਹੈ ਰਹਿਣਾ ਉਹ ਜਿਆ ਵੱਡਣਾ ਚਾਹੁੰਦੇ ਨੇ ਉਹਦੇ ਸੁਭਾਅ ਵਰਗਾ ਯਾਨੀ ਡਵੈਲਪਮੈਂਟ ਆਪਣੀ ਚਾਹੁੰਦੇ ਨੇ ਕਰਦੇ ਕਈ ਕੋਕ ਕਾਬ ਪੜੰਤ ਕਈ ਕੋ ਕਾਗੜੂ ਪੜਦੇ ਨੇ ਦੇ ਵਿੱਚ ਹੀ ਆਊਗਾ ਕੋਈ ਕਾਵੀ ਧਰਮ ਦੇ ਬਾਹਰ ਨਹੀਂ ਤੁਸੀਂ ਇਹਨੂੰ ਪੜ ਸਕਦੇ ਅਸਲ ਦੇ ਵਿੱਚ ਪੂਰਾ ਧਰਮ ਗੁਰਬਾਨੀ ਦੇ ਪਜ ਚਾਰ ਬੰਲੀਆਂ ਪੜ ਲੈਣੀਆਂ ਪੂਰਾ ਧਰਮ ਦੀ ਪੜਾਈ ਨਹੀਂ ਹੈ ਇਹ ਇਹ ਤਾਂ ਸਟਾਰਟ ਐ ਇਥੋਂ ਵੀ ਪੜ ਪਈ ਲੀ ਚਾਰ ਬਾੜੀਏ ਤੋਂ ਪੜ ਲੀਆ ਪੂਰਾ ਧਰਮ ਤੇ ਸਾਨੂੰ ਗਿਆਨ ਹੋ ਗਿਆ ਧਰਮ ਤਾਂ ਬਹੁਤ ਬੜਾ ਵਿਸ਼ਾਇਕ ਇਹ ਤਾਂ ਉਹ ਸਟਾਰਟ ਕੀਤਾ ਇਹਨੂੰ ਸਟਾਰਟ ਕਰਕੇ ਤੁਹਾਨੂੰ ਇੰਨਾ ਗ੍ਰੰਥ ਲਿਖੇ ਪਏ ਨੇ ਧਰਮ ਦੇ ਕਿਤੇ ਛੋਟੀ ਜੀ ਗੱਲ ਐ ਇਹ ਤਾਂ ਸੁਨੰਦਰ ਐ ਕੋਕਾ ਜਿੰਨੇ ਲੋਕ ਦਾ ਤੁਸੀਂ ਗਿਆਨ ਲੈਣੇ ਤੇ ਲੋਕ ਦਾ ਗਿਆਨ था, एक ਪਾਸੇ ਥੋੜਾ थोड़ा ਗਿਆਨ ਸ਼ੁਰੂ शुरू करके ही सारी ਲੱਗ ਜਾਂਦੀ ਹੈ ਲੈ ਦਾ ਤਾਂ ਕੋ ਕਾਵੇ ਦੇ ਵਿੱਚ ਹੀ ਆਉ ਤੇ ਲੋਕ ਤੇ ਬਾਹਰ ਵੀ ਜਾ ਸਕਦਾ ਕਿਉਂਕਿ ਜੋ ਸ੍ਰਿਸ਼ਟੀ ਪੈਦਾ पैदा ਹੈ ਇਹ ਤਾਂ ਸ੍ਰਿਸ਼ਟੀ ਪੈਦਾ ਕਰਨ ਵਾਲਾ ਸ਼ੁਰੂ ਹੈ ਬਾਦ ਦੇ ਵਿੱਚ ਜੋ ਹੋਣਾ ਉਹ ਤਾਂ ਬਾਤ ਦੀ ਗੱਲ ਹੈ ਜੰਮਣ ਪਹਿਲਾਂ ਦੁਆਰੇ ਇਹਦਾ ਵੀ ਕਾਰਨ ਹੈ ਉਹਨੇ ਕੰਮ ਕਿਉਂ ਪਹਿਲਾਂ ਰੱਖਿਆ ਉਹਨਾਂ ਦੇ ਦਲੀਲ ਵੀ ਜਾਨੋਂ ਪਹਿਲਾਂ ਮਰਨ ਤਾਂ ਬਾਅਦ ਦੇ ਵਿੱਚ ਇਹ ਵਿਸ਼ਾ ਪਹਿਲਾਂ ਚਾਹੀਦਾ ਸਮਝ ਆਲੀ ਕੋਟ ਗੁਰੂ ਸਾਹਿਬ ਕਹਿੰਦੇ ਵੀ ਜਨੂ ਤਾਂ ਹੋ ਗਿਆ ਪੜਾ ਤਾਂ ਹੋ ਰਹੇ ਆ ਉਹ ਤਾਂ ਹੋ ਗਿਆ ਸਾਡਾ ਜਲਪਤਾ ਇਰ ਪੜਾਉਣ ਦੇ ਲੋੜ ਦੀ ਜਨਮ ਤੋਂ ਪਹਿਲਾਂ ਜਨਮ ਤੋਂ ਸਿੱਖਣ ਦੀ ਲੋੜ ਸੀ ਜਿਹੜਾ ਕੰਮ ਕਰਨਾ ਹੋਵੇ ਉਹ ਤੋਂ ਪਹਿਲਾਂ ਸਿੱਖੀ ਜਾਂਦਾ ਹੁਣ ਸਾਡੇ ਮੂੰਹੇ ਮਾਰਨੇ ਮਾਰਨ ਦਾ ਰਾਹ ਲੱਭਣਾ ਸੀ ਹੁਣ ਤਾਂ ਮੂੰਹੇ ਮਾਰ ਰਹੇ ਆ ਮਾਰਨੇ ਲਗਾਏ ਜਨਮ ਤੋਂ ਹੋ ਗਿਆ ਜਾਂ ਜਨਮ ਦੀ ਤਕਲੀਫ ਸੀ ਉਹਦਾ ਇਲਾਜ ਉਹ ਤੋਂ ਪਹਿਲਾਂ ਕਰਨਾ ਸੀ ਤੁਸੀਂ ਜਨਮ ਵਿੱਚ ਵੀ ਤਾਂ ਤਕਲੀਫ ਹੈ ਇਹਦਾ ਰਾਜ ਪਹਿਲਾਂ ਕਰਨਾ ਦੀ ਉਹ ਪਿਛਲੇ ਜਨਮ ਵਿੱਚ ਕਰਨਾ ਤਾਂ ਉਹ ਤਾਂ ਤੁਸੀਂ ਕੀਤਾ ਨਹੀਂ ਇਹ ਜਨਮ ਦੇ ਵਿੱਚ ਹੁਣ ਜਨਮ ਦਾ ਇਲਾਜ ਕਰੋ ਮਰਨ ਦਾ ਨਹੀਂ ਜੀ ਜਨਮ ਦਾ ਇਲਾਜ ਕਰਨਾ ਅਗਲਾ ਜਨਮ ਨਾ ਹੋਵੇ ਬੁਰਨਾ ਦਾ ਪਹਿਣਾ ਹੀ ਹੈ ਹਾਂ ਸੰਜੋ ਜਨਮ ਦਾ ਜਨਮ ਦਾ ਇਲਾਜ ਹੁਣ ਕਰਨਾ ਅਸੀਂ ਸ਼ਰੀਰ ਛੱਡਣਾ ਕਬੀਰੇ ਤਾਂ ਜਾਏਗਾ ਕੌੜੇ ਬਾਗ ਲੈ शरीर कमात तो नहीं बचाया जा सकता अगला जन्म ना होवे जन्म ना इलाज ढूंढ करना जे जन्म ना इलाज करना है तो नर वर्ण बऊ इलाज दा जन्म दा करना मरना है मरन ते नहीं कोई बच सकता शरीर छड़ना त्यागना ए नहीं कोई ए तो बच सकता अगला जन्म ना होवे रौला जन्म दा है मरन दा रौला नहीं है ਜੇ ਜਨਮ ਤਾਂ ਮਰ ਲੂ। ਜੇ ਜਨਮ ਹੋਇਆ ਮਰਨਾ ਪਊਗਾ। ਜੀ ਰੀਣਾ ਪਊਗਾ। ਹੁਣ ਅਗਲਾ ਜਨਮ ਰੋਕਣ। ਮਰਣਾ ਨਹੀਂ ਰੋਕ ਸਕਦੇ ਤੁਸੀਂ। ਮਰਨਾ ਤਾਂ ਹੁਗਾਇ ਜਨਮ ਰੁਕੂਗਾ। ਮਰਨਾ ਆਪੇ ਰੁਕੂਗਾ। ਮਰਨਾ ਦਾ ਰਾਜ ਸਰਬ ਜਨਮ ਦਾ ਰਾਜ ਹੈ। ਇਹ ਕਹੋ। ਜਨਮ ਦੇ ਰਾਜ ਵਿੱਚ ਮਰਨ ਦਾ ਰਾਜ ਛੁਪਿਆ ਹੋਇਆ ਕਿਉਂਕਿ ਜਨਮ ਤਾਂ ਮਰਨਾ ਦਾ। ਜੇ ਜਨਮ ਹੋਊਗਾ ਤਾਂ ਹੀ ਮਰਨ ਹੋਊਗਾ ਰੋਕਣਾ ਜਲਬ ਤੇ ਜਿੱਥੋਂ ਜਲਬ ਹੁੰਦਾ ਉੱਥੇ ਸੁਰਤੀ ਕਦੇ ਵੀ ਨਹੀਂ ਜਾਣੀ ਚਾਹੀਦੀ ਜਿਹੜੇ ਵਿਸ਼ਾ ਨਾਲ ਜਨਮ ਹੁੰਦਾ ਅਗਲਾ ਉਹ ਵਿਸ਼ਾ ਤੇ ਬਹੁਤ ਦੂਰ ਪੱਜ ਕੇ ਰਹਿਣਾ ਚਾਹੀਦਾ ਇਸ ਕਰਕੇ ਕੋ ਗੱਲ ਹੈ ਖਤਰਾ ਉੱਥੇ ਆ ਤੁਹਾਨੂੰ ਦੂਜੇ ਜਨਮ ਦਾ ਤੁਹਾਨੂੰ ਜਨਮ ਦਾ ਖਤਰਾ ਤਾਂ ਉੱਥੇ ਹੀ ਹੈ ਜੇ ਜਨਮ ਨਾਲ ਜੁੜੇ ਹੋਇਓ ਜਨਮ ਦੇ ਕਿਸੇ ਵੀ ਪ੍ਰੋਸੀਜਰ ਨਾਲ ਜੇ ਜੁੜੇ ਹੋਇਓ ਨਹੀਂ ਤੁਸੀਂ ਪੈ ਜਨਮ ਦੀ ਆ ਬਣਦੀ ਪੈ ਰਹੀ ਹੈ ਬਣ ਦਾ ਪਰਮ ਬਣ ਦਾ ਪਰਮ ਆ ਜਨਮ ਦੀ ਪੈ ਆ ਬਣ ਤਾਂ ਸਾਨੂੰ ਲੱਗਦੀ ਹੈ ਜਨਮ ਬਰਨ ਕਾ ਪਰਮ ਗਿਆ ਗੁਰ ਸਾਖੀ ਜਾਗੀ ਇਹਦਾ ਸੁਤ ਸੌ ਜਾਣਾਂ ਲੰਬੀ ਨੀਂਦ ਕਿਦਾਂ ਸੌਣਾ ਹੋਏਗਾ ਲਾਂਬੇ ਕੋਡ ਲਾਂਬੇ ਕੋਡ ਪਸਾਰ ਰੋਜੇ ਵਰਤੇ ਵਰ ਨੂੰ ਤਾਂ ਜਿ ਸੌ ਜਾਣੇ ਵਰ ਜਾਣੀ ਸ੍ਰੀ ਰੋਜੇ ਛੱਡਦੇ ਆਂ ਅਸੀਂ ਇਹ ਐਵੇਂ ਪਰਬ ਜੇ ਪਹਿਲਾਂ ਸੋਤਾ ਉੱਠੇ ਹੀ ਨਾ ਜੇ ਸੌ ਜਾਣੇ ਕੋ ਪਤਾ ਹੋਣਾ ਦਵਾਰ ਉੱਠੇ ਨਾ ਜਿੰਨਾ ਰੋਜ਼ੇ ਮਰਦੇ ਆਂ ਬਸ ਉਹਨਾਂ ਉਠਣਾ ਨਹੀਂ ਦਵਰਾ ਜਲ ਨੂੰ ਜਨਮ ਰੋਕਣਾ ਹੈ ਮਰਨ ਦੀ ਰੋਕਣਾ ਸੀ ਸਕਦੇ ਹੀ ਨਹੀਂ ਜਿਹੜੇ ਮਰਨ ਨੂੰ ਰੋਕਦੇ ਨੇ ਉਹ ਮੂਰਖ ਸੀ ਉਹ ਜੋਗੀ ਮਰਨ ਨੂੰ ਰੋਕ ਰਹੇ ਗੁਰਬਾਣੀ ਜਲ ਨੂੰ ਰੋਕ ਰਹੀ ਹੈ ਇਹ ਫਰਕ ਹੈ ਬੂੜ ਫਰਕਾ ਸਾਡਾ ਸਾਰੀਆਂ ਬੱਤਾਂ ਨਾਲੋਂ ਲੋਕ ਜਨਮ ਤੋਂ ਡਰਦੇ ਮਰਨ ਤੋਂ ਡਰਦੇ ਨੇ ਗੁਰਮੁਖ ਜਨਮ ਤੋਂ ਡਰਦਾ ਮਰਨ ਤੋਂ ਨਹੀਂ ਡਰਦਾ ਬਰਨ ਦਾ કબੂਲ ਕਰਨੂ ਕਿ ਹੈ ਪਹਿਲਾ ਵਰਨ ਕਬੂਲ ਕਬੀਰੇ ਤਨ ਜਾਏਗਾ ਕੌਣ ਮਾਰਗ ਲਾਏ ਇਹ ਬੂੜ ਫਰਕ ਨੂੰ ਕੌਣ ਦੱਸੂਗਾ ਇਹ ਬੂੜ ਫਰਕਾ ਜਿਹੜਾ ਨਾ ਇਹ ਬੂੜ ਫਰਕ ਤਾਂ ਹੀ ਨਹੀਂ ਅਸਲ ਚ ਨਾ ਉਹ ਧਰਮ ਦਾ ਹੀ ਪਤਾ ਨਹੀਂ ਲੋਕਾਂ ਨੂੰ ਤਾਰੂਗਾ ਉੜੇ ਜਾਣ ਦਾ ਪਤਾ ਨਹੀਂ ਸਿੱਖਾ ਉਹਨਾਂ ਨੂੰ ਦੇ ਰਹੇ ਨੇ ਜਿਹੜੇ ਧਰਮ ਦੇ ਬਹੁਤ ਦੀਪ ਚਲੇ ਗਏ ਬਹੁਤ ਦੂਰ ਲੰਘ ਗਏ ਜਿਹੜੇ ਧਰਮ ਵਿੱਚ ਬਹੁਤ ਦੂਰ ਲੰਘ ਗਏ ਉਹਨਾਂ ਨੂੰ ਸਿੱਖਾ ਦੇ ਰਹੇ ਨੇ ਉਹ ਆਪਣੇ ਅੰਦਰ ਤਾਂ ਚੱਕ ਕੇ ਦੇਖੋ ਤੁਹਾਨੂੰ ਆਉਂਦਾ ਕੀ ਹੈ ਤੁਹਾਡੇ ਪੱਲੇ ਕੀ ਹੈ ਤੁਸੀਂ ਖੜੇ ਕਿੱਥੇ ਹੋ ਧਰਮ ਚੀਜ਼ ਕੀ ਹੈ ਤਾਂ ਤੁਹਾਨੂੰ ਇਹੀ ਦੀ ਵਾਧਾ ਧਰਮ ਹੁੰਦਾ ਕੀ ਹੈ ਧਰਮ ਦੇ ਵਿੱਚ ਇਲਾਜ ਕੀ ਹੈ ਧਰਮ ਵਿਸ਼ਾ ਕੀ ਹੈ ਵਿਸ਼ਾ ਧਰਮ ਜਾਨਵਰ ਰੋਕਣ ਦਾ ਵਾਧਰੋ ਕਰਨ ਦਾ ਵਿਚਾਰ ਨਹੀਂ ਆ ਸਰ ਅਨਾ ਮੌਤ ਕਿਸੇ ਤੇ ਰੁਕੀਆ ਨਾ ਰੁਕੇ ਸਰੀਰ ਕਬੋਤ ਦੁਬਾਰਾ ਜਨਮ ਨਾ ਹੋਵੇ ਦੁਬਾਰਾ ਜਨਮ ਕਿਵੇਂ ਨਹੀਂ ਹੋ ਦੁਬਾਰਾ ਜਨਮ ਤਾਂ ਨਹੀਂ ਹੋਊ ਜੇ ਮਾਨੋ ਬਾਹਾਂ ਦੇ ਸਾਰੇ ਬਕਾਰਾਂ ਤੋਂ ਲਿਪਤ ਅਲਪਤ ਹੋ ਉੱਪਰ ਉੱਡ ਜੂਗਾ ਛੱਡ ਜੂਗਾ ਡਰੂਗਾ ਅਚੇਤ ਪਾਪ ਤੋਂ ਡਰੂਗਾ ਵੀਰਾਂ ਨੂੰ ਪਾਪ ਨਹੀਂ ਬਣਦਾ ਉਹਨਾਂ ਤੇ ਡਰੂਗਾ ਅਚੇਤ ਪਾਪ ਤੇ ਡਰਨਾ ਜਿਹੜਾ ਹੈ ਨਾ ਇਹ ਤਾਂ ਜਿਹੜੂ ਅਸੀਂ पाप ਮੰਨਦੇ ਨਹੀਂ ਉਹ ਅਚੇਤ ਪਾਪ ਹੈ ਜਿਹੇ ਬਾਰੇ ਬਾਪਾਰੇ ਸਾਨੂੰ ਗਿਆਨ ਨਹੀਂ ਉਹ ਅਚੇਤ ਪਾਪ ਹੈ দান ਕਰਨਾ ਦਾਦੀ ਬਣਨਾ ਅਚੇਤ ਪਾਪ ਹੈ ਜਿਹੜੇ ਫੋਗੜਾ ਧਰਮ ਤਰਮਨ ਕੀ ਕਰ ਰਹੇ ਹਨ ਜਨਮ ਕਾਤੇ ਹੋ ਜਾਂਦਾ ਦੁਆ ਫਿਰ ਜਨਮ ਜਨਮ ਕਿਉਂ ਨਹੀਂ ਰੋਕ ਸਕਦੇ ਅਗਲਾ ਅਗਲਾ ਜਨਮ ਕਿਉਂ ਨਹੀਂ ਰੋਕ ਸਕਦੇ ਉਹ ਪਾਪ ਉਹ ਕਾਬ ਅਗਲਾ ਜਨਮ ਕਿਉਂ ਨਹੀਂ ਰੋਕਦੇ ਅਚੇਤ ਪਾਪ ਹੈ ਉਹ ਜਿੰਨੇ ਫੋਕਟ ਆ ਜਿੱਥੇ ਹੁਣ ਸ਼ੁਰੂ ਹੋਇਆ ਨਾ ਇਹਦੇ ਐਂਡ ਵਿੱਚ ਇਹਦਾ ਰਿਜ਼ਲਟ ਆਉਣਾ ਸਾਰੀਆਂ ਕੈਟਾਗਰੀਆਂ ਆ ਗਈਆਂ ਧਰਮ ਦੀਲ ਦੇ ਵਿੱਚ ਡਿਸਕਸ ਕਰਤੀਆਂ ਕੋਈ ਕੈਟਾਗਰੀ ਨਹੀਂ ਛੱਡੀ ਇਹ ਸਾਰੀਆਂ ਕੈਡਗਰੀਆਂ ਤੇ ਕੰਮ ਕਰਨ ਵਾਲੇ ਲੋਕ ਨੇ ਜਿਹੜੇ ਇਹ ਅਚੇਤ ਪਾਪ ਕਰ ਰਹੇ ਨੇ ਧਰਮ ਦੇ ਨਾਂ ਤੇ ਕੁਝ ਹੋਰ ਕਰ ਰਹੇ ਨੇ ਪਾਪ ਨਹੀਂ ਕਰ ਰਹੇ ਪਾਪ ਨਹੀਂ ਕਰ ਰਹੇ ਧਰਮ ਕਰ ਰਹੇ ਨੇ ਲੇਕਿਨ ਧਰਮ ਉਹ ਹੈ ਨਹੀਂ ਅਚੇਤ ਪਾਪ ਕੀ ਹੁੰਦਾ ਹੁਕਮ ਦਾ ਵਿਰੋਧ ਕਰ ਰਹੇ ਨੇ ਆਪਣੀ ਜਾਨੇ ਧਰਮ ਕਰ ਰਹੇ ਨੇ ਆਪਣੇ ਆਪ ਇਸ ਧਰਮ ਕਰ ਰਹੇ ਨੇ ਬੰਦਾਰੀ ਨਾ ਕਰ ਰਹੇ ਨੇ ਸਭ ਕੁਝ ਉਹ ਲਾ ਮਨ ਗਈ ਕਰ ਰਹੇ ਨੇ ਪਰ ਉਹਨਾਂ ਤੇ ਹੁਕਮ ਦਾ ਵਿਰੋਧ ਹੋ ਰਿਹਾ ਜੀ ਦਾ ਕਿ ਉਹਨਾਂ ਨੂੰ ਪਤਾ ਨਹੀਂ ਇਹ ਜੇਤਪਾ ਇਹ ਤੋੜ ਜੇ ਮੈਂ ਦਾਨੀ ਹਾਂ ਤਾਂ ਮੇਰਾ ਕੁਛ ਹੈਗਾ ਸੰਸਾਰ ਤਾਂ ਮੈਂ ਦਾਨ ਕਰ ਦਦਾ ਮੇਰਾ ਹੈ ਹੀ ਕੁਛ ਨਹੀਂ ਸੱਚੇ ਮੇਰਾ ਕੁਛ ਨਹੀਂ ਇਹ ਮੈਂ ਬੰਨਾ ਵੀ ਮੇਰਾ ਮੈਂ ਦਾਨ ਕਰਦਾ ਇਹ ਜੇਤਪਾ ਹੈ ਇਹ ਚੇਤ ਪਾਪ ਕਬੀਨੂ ਗਿਆਨ ਦੀ ਨਾ ਹੈ ਵੀ ਮੇਰਾ ਹੈ ਮੈਂ ਬੰਦੂ ਮੇਰਾ ਹੈ ਇਹ ਚੇਤ ਪਾਪ ਜਾਇ ਕਿਤਨੋਂ ਜਾਗੂਗਾ ਫਿਰ ਕੋ ਮੇਰਾ ਬੁਝਮੇ ਕੁਛ ਨਹੀਂ ਜੋ ਕੁਛ ਐਸੋ ਤੇਰਾ ਅਤ ਬੇਰੇਜ ਵੀ ਮੇਰਾ ਤਾਂ ਕੁਝ ਨਹੀਂ ਹੈ ਤੇ ਜੋਤ ਵੀ ਤੇਰੀ ਹੋ ਹੈ ਉਜੋਦ ਵੀ ਤੇਰੀ ਹੈਗਾ ਸਰੀਰ ਦੀ ਤਾਂ ਗੱਲ ਛੱਡੋ ਮੇਰਾ ਤਾਂ ਵजूद ਹੀ ਹੈ ਨਹੀਂ ਕੁਛ ਮੈਨੇ ਕੁਛ ਹੋ ਨਹੀਂ ਇਹ ਫਰਕ ਹੈ ਇਹ ਨਕਸ਼ਾ ਦਿਖਾ ਲਦਾ ਜੀਵ ਨੂੰ ਜੀਵਦਾ ਦਾ ਵੀ ਤੂੰ ਕੀ ਹੈ ਜਦ ਇਹ ਦੇਖਦਾ ਮੈਂ ਕੀ ਆ ਫਿਰ ਪਤਾ ਲੱਗਦਾ ਮੇਰਾ ਕੁਝ ਨਹੀਂ ਮੇਰਾ ਮੁਝ ਵਿੱਚ ਕੁਛ ਨਹੀਂ ਉਹਨਾਂ ਚੰਨਿਆ ਬੰਦਾ ਮੇਰਾ ਮੁਝ ਵਿੱਚ ਕੁਛ ਨਹੀਂ ਸਾਰਾ ਕੁਝ ਇੱਕ ਪਾਸੇ ਦੀਦਾ ਆਪੇ ਇੱਕ ਪਾਸੇ ਖੜਾ ਦੀਦਾ ਔਰ ਡੁੱਬ ਗਿਆ ਆਪਣੇ ਆਪ ਚ ਕੀਏ ਧੁੱਪ ਅਰੇ ਤਖਨ ਜਦੋਂ ਪਾਛਾ ਕਰਦੇ ਕਹਿੰਦੇ ਰੇ ਤਸੂਰਤ ਦੀ ਗਰਮੀ ਨਾਲ ਗਰਮ ਹੋ ਜਾਂਦਾ ਸੂਰਜ ਦੀ ਧੁੱਪ ਨਾਲ ਰੇਤ ਗਰਮ ਹੋ ਜਾਂਦਾ ਹੜ ਦੇ ਮੀਂਹ ਦੇ ਜਿਹੜ ਦੇ ਦੇ ਮੀਂਹ ਫੋਕ ਨੂੰ ਕਰਦਾ ਕਨਾ ਨਾਕੇ ਦੇ ਨਾ ਮਰੇ ਉੱਤੇ ਦੀ ਦਸ ਤਾਂ ਨੂੰ ਪਤਾ ਜੇ ਮੈਂ ਆਪਾਂ ਕਹਾਂ ਮੇਰੇ ਖੇਤੀ ਨੂੰ ਕੇ ਦਿਖਾਉ ਸਾਡੇ ਮੂਲਕ ਦੇ ਜਿਹਨੂੰ ਕੇ ਦਿਖਾਓ ਸਾਡਾ ਨਾ ਮੂਲਕ ਪਰਮੇਸ਼ਰ ਦਾ ਤਾਂ ਹੈ ਦੀਦੋ ਅਚੇਤ ਪਾਪ ਹੈ ਨਾ ਮੂਲਕ ਤੇ ਸਾਡਾ ਅਚੇਤ ਪਾਪ ਹੈ ਸੁਮੰਦਰ ਸਾਡਾ ਇਹ ਅਚੇਤ ਪਾਪ ਹੈ ਸੁਪਾਪ ਹੈ ਉਹ ਰੇਤਾ ਘਰ ਪਾਇਆ ਸੂਰਜ ਦੀ ਧੁੱਪ ਨੂੰ ਉਹਨਾਂ ਨੂੰ ਪਤਾ ਹੈ ਨਹੀਂ ਕਹਦੇ ਆਪਨ ਹਾਂ ਹਾਂ ਕਰੇ ਮੈਂ ਮੈਂ ਕਰਦਾ ਆਪੇ ਗਰਮੀ ਏ ਸੂਰ ਦੀ ਜੇ ਸੂਰ ਦੀ ਛਿਪ ਜੂ ਫੇਰ ਫਿਰ ਉਹ ਪਛਣ ਕੀ ਹਾਲ ਆ ਬਸ ਆਹੀ ਗੱਲ ਇਹ ਜੀਵ ਨੂੰ ਪਤਾ ਹੀ ਨਹੀਂ ਕਸ ਜਿਵੇਂ ਰੇਤੇ ਨੂੰ ਗਿਆਨ ਨਹੀਂ ਨਾ ਆਵੇ ਮੈਂ ਤਾਂ ਗਰਮੀ ਸੂਰਜ ਦਵਾਈ ਹੋਈ ਆ ਇਹ ਬੱਦਲ ਹੋ ਜਾਣ 10 ਮਿੰਟ ਵਾਸਤੇ ਤਾਂ ਹੀ ਮੇਰੇ ਹਵਾ ਜੀ ਨਿਕਲ ਜਾਣੀ ਇਹ ਮੈਂ ਠੰਡਾ ਹੋ ਜਾਣਾ ਠੰਡਾ ਹੋ ਜਾਂਦਾ ਇਹਦਾ ਮੂਹ ਦੀ ਨਾ ਆਪਣਾ ਜੇ ਗਿਆਨ ਦੀ ਨਾ ਜਦ ਇਹ ਸਰੀਰ ਛੱਡ ਦਿੰਦਾ ਜਦ ਇਹ ਠੰਡਾ ਹੋ ਜਾਂਦਾ ਜਨਰੇ ਸਰੀਰ ਉਹਨਾਂ ਜਰੇ ਹੰਕਾਰ ਇਹਨੂੰ ਉਹਨਾਂ ਜਰੇ ਹੰਕਾਰ ਜੇ ਢਾਰਜ ਆਵਾਜ਼ ਜ਼ਿਆਦਾ ਹੋਵੇ ਫਟੜ ਨੂੰ ਫਿਰਦਾ ਜੇ ਕੱਢਦੀ ਏ ਥਲੇ ਲੱਗ ਜਾਂਦਾ ਪਹਿਲਾਂ ਫਟੜ ਨੂੰ ਮਰਦਾ ਆਵਾਨਾਂ ਕੁ ਨਾ ਦੀ ਐ ਵਰ ਕੋ ਜੁਨੀ ਅਤੇ ਹਵਾ ਹੀ ਅੱਜ ਭਰੀ ਹੋਰ ਕੋਈ ਨਹੀਂ ਹਵਾ ਜਿਹੜੀ ਅੱਜ ਹਵਾ ਭਰੀ ਹੋਈ ਹੈ ਜਰ ਸਾਹ ਹੁੰਦਾ ਇਹ ਹਵਾ ਦਾ ਇਕਰ ਹੈ ਇਹ ਹਵਾ ਕਰਦੀ ਏ ਸਾਰਾ ਕੁਝ ਥਮੈ ਆਇਆ ਕਹਾਦਾ ਪਵਨ ਕਾ ਥਮ ਰਕਤ ਵੋਧ ਕਾ ਗਾਰਾ ਵਗਾਰਾ ਜਾਂਦੇ ਭੈਜੋ ਧਰਲੇ ਫਤਬ ਨਿਕਲ ਜਾਂਦਾ ਨਾ ਹਵਾ ਦਾ ਘਾਰਾ ਥੱਲੇ ਭੈਜੋ ਹਾੜ ਮਾਸ ਨਾੜੀ ਕੋ ਪਿੰਜਰ ਪੰਛੀ ਵਜੇ ਬਦਦਾ ਵਿਚਾਰ ਇਹ ਤਾਂ ਇੰਨਾ ਲੋਡ ਚੱਕ ਕੇ ਖੜਾ ਜਿਹੜਾ ਇਹ ਤਾਂ ਹਵਾ ਦੇ ਕਰਾਮਾਤ ਹੈ ਔਰ ਕੁਝ ਨਹੀਂ ਇਹਦੇ ਜੋਰ ਕੀ ਰੱਖੇ ਸਭ ਕੁਝ ਹੁੰਦਾ ਆਇਆ ਵੀ ਕੁਝ ਨਹੀਂ ਹੈ ਹਵਾ ਨਿਕਲ ਜਾਂ ਹਵਾ ਨਿਕਲ ਜਾਂਦੀ ਹੈ ਸਭ ਕੁਝ ਹੁੰਦਾ ਹੋਇਆ ਬਾਕੀ ਦਸਾਰਾ ਕੁਝ ਵਿੱਚ ਹੀ ਹੈ ਕੁਛ ਬਦੀ ਬਾਕੀ ਰਹਿ ਗਿਆ ਕਈ ਕੋ ਕਾਪ ਪੜੰਤ ਹਾਂ ਕਈ ਕੋ ਕਾਪੜੰਤ ਇੱਕੋ ਕਾ ਵੀ ਧਰਮ ਦਾ ਹਿੱਸਾ ਹੈ ਇਹ ਧਰਮ ਦਾ ਹਿੱਸਾ ਹੈ ਕਈ ਬੇਦ ਭੇਤ ਕਹੰਤ ਹੁਜੇ ਕੋ ਡਾਕਟਰ ਦੇਖੂਗਾ ਕਿਸੇ ਦੀ ਬਾਡੀ ਨੂੰ ਉਹ ਦੇਖੂਗਾ ਚੈਨਾ ਪਾਣੀ ਐ ਐਨੀ ਮਿੱਟੀ ਐ ਵਾਸਾ ਵਾਦੇ ਕਿ ਬੜਾਣੀ ਵਾਚ ਮਿੱਟੀ ਬੜ ਜਣੀ ਇਹ ਨਹੀਂ ਹੱਡੀਆਂ ਨੇ ਇਹਨਾਂ ਫਲਾਣਾ ਉਹ ਤਾਂ ਉਹ ਦੇਖੂਗਾ ਵੈਦ ਦਾ ਫਾਸਪੋਰਟ ਹੈ ਚ ਉਹ ਤਾਂ ਬੌਡੀ ਚੋ ਹੀ ਦੇਖੂਗਾ ਬਾਅਦ ਚ ਇੱਕ ਸਿੱਕਾ ਦੇਤਲਵਰਡਿਜ ਉਹ ਕਹਿੰਦਾ ਦੱਸੋ ਵੀ ਇਹ ਚ ਕੀ ਹੈ ਉਹ ਅੜੜਾ தாਤਾ ਦੱਸਦਣੇ ਕੱਢ ਗਏ ਜੀ ਇਹ ਚੀਜ਼ ਇੰਨੀ ਹੈ ਲੋਹਾ ਹੈ ਨਾ ਫਲਾਣੀ ਕੀ ਚੀਜ਼ ਹੈ ਜਿਹੜੀ ਚੀਜ਼ ਦਾ ਸਿੱਕਾ ਬਣਿਆ ਉਹ ਦੱਸਦੇ ਉਹਨਾਂ ਨੂੰ ਸਿੱਕੇ ਦੇ ਕੀ ਮਤਲਬ ਹੈ ਵੀ ਕਿੰਨੇ ਦਾ ਹੈ ਕਿਦੀ ਚੀਨੀ ਕਿੰਨੀ ਆਊਗੀ ਰਾਲ ਕਿੰਨੀ ਆਊਗੀ ਦੀ ਸਬਜੀ ਕਿੰਨੀ ਆਊਗੀ ਉਹ ਤਾਂ ਇਹ ਕਹਿੰਦਾ ਇਹਦੇ ਵਿੱਚ ਕੀ ਕੀ ਹੈ اس ਕੋ ਕਾਵਲਾ ਮਤਲਬ ਹੈ ਇਹਦੇ ਵਿੱਚ ਕੀ ਕੀ ਹੈ ਉਹ ਹੋਰ ਚੀਜ਼ ਪੜਾਈ ਆ ਉਹ ਡਾਕਟਰ ਦੇ ਨਗਾਹ ਹੋਰ ਕੁਛ ਹੈ ਸਾਡੇ ਨਗਾਹ ਹੋਰ ਕੁਛ ਹੈ ਤਾਂ ਆਪਣੇ ਆਪਣੇ ਦ੍ਰਿਸ਼ਟੀ ਆ ਨਾ ਦ੍ਰਿਸ਼ਟੀ ਉਲਪੰਤਾ ਤੇ ਸਾਰਿਆਂ ਜੋੜ ਕਦੇ ਨਾ ਆਇਆ ভক্তਾਂ ਦਾ ਦ੍ਰਿਸ਼ਟੀਕੋਣ ਜਿਹੜਾ ਹੈਗਾ ਜਿੰਨਾ ਚਿਰ ਉਹ ਨਹੀਂ ਹੁੰਦਾ ਤੇ ਕੋ ਕਾਬ ਹੋਰ ਕੁਝ ਦੀਦਾ ਜਦੋਂ ਉਹ ਦ੍ਰਿਸ਼ਟੀਕੋਣ ਦੂਆ ਹੋ ਜਾਂਦਾ ਜਿਵੇਂ ਡਾਕਟਰ ਨੇ ਦ੍ਰਿਸ਼ਟੀਕੋਣ ਦੀ ਗੱਲ ਕੁਝ ਹੋਰ ਹੈ ਸੰਸਾਰੀ ਆਦਮੀ ਦੇ ਦ੍ਰਿਸ਼ਟੀਕੋਣ ਚ ਕੁਝ ਹੋਰ ਹੈ ਇਹ ਲੋਕ ਜਿਹੜੇ ਰੌਲਾ ਪਾਉਂਦੇ ਨੇ ਅਸਲ ਤੇ ਵੀ ਸੰਸਾਰੀ ਨੇ ਇਸ ਸੰਸਾਰੀ ਨੇ ਜਿੱਦਣ ਸਿੱਖ ਬਣ ਗਏ ਨਾ ਇਹ ਸਿੱਖ ਬਣ ਗਏ ਸੀ ਕਿ ਢਾਡ ਕਰ ਲਈ ਸਿੱਖਿਆ ਅਧਰ ਹੋ ਗਿਆ ਉਧਰ ਦੇ ਸਹੀ ਕੋਡ ਬਦਲੂਗਾ ਇਹਨਾਂ ਲੋ ਵਦਲਣਾ ਕਿਥੋਂ ਸਿੱਖਿਆ ਨਾਲ ਬੇੜੇ ਨਹੀਂ ਵੜਦੇ ਇਹ ਉਹ ਬੇੜੇ ਵੜ ਕੇ ਤਾਂ ਕੈਦ ਹੋਗੇ ਗੁਰਬਾਨੀ ਬੱਲੀ ਵੇ ਤਾਂ ਕੈਦ ਹੋਗੇ ਵਾਗੜੇ ਜਿਹਨੇ ਵੜਦੇ ਹੁੰਦੇ ਜਾਨਵਰ ਜਿਹੜੇ ਉਦਦੇ ਨੇ ਨਾ ਜਾਨਵਰ ਆਵਾਰਾ ਆਵਾਰਾ ਜਾਨਵਰ ਜਿਹੜੇ ਉਦਦੇ ਨੇ ਨਾ ਆਵਾਰਾ ਆ ਰਹੇ ਨੇ ਕਿ ਜਿ ਆਪਣੇ ਹੁਕਮ ਚੱਲਣ ਵਾਲੇ ਮਨ ਬੋਲਦੇ ਹੁਕਮ ਕਰਨ ਚ ਰਹਿਣ ਤੇ ਬੰਦੀਆਂ ਲੱਗ ਜਾਂਦੀਆਂ ਰਹੇ ਮਨ ਕੈਦ ਹੋ ਜਾਂਦਾ ਇੱਥੇ ਉਹ ਕੈਦ ਕਿੱਥੇ ਰਹਿ ਜਾਣਗੇ ਉਹ ਤਾਂ ਉਡਾਰੀਆਂ ਵਾਂਨ ਨਾਲੇ ਗੱਲਾਂ ਕਰਦੇ ਨੇ ਕੁਰਬਾਨੀ ਇੱਥੇ ਤਾਂ ਬੰਦਾ ਸੋਝੋ ਰਹੇ ਵਿੱਚ ਬੰਦੀ ਦੇਖਣ ਕੋ ਉਹ ਦਦਾ ਕੈਚ ਕੋਠੜੀ ਚ ਰਹਿਣਾ ਪੈਂਦਾ ਇੱਕ ਤੇ ਜਿਵੇਂ ਫਾਸੀ ਲੱਗੀ ਹੋਈ ਆ ਰਹਿਦਾ ਕਿ ਮਣਜੋ ਕਬੂਲ ਕੀਤਾ ਹੋਇਆ ਦਿਨ ਘਟਦੇ ਨੇ ਗਣ ਰਿਹਾ ਉਹ ਦਿਨ ਦਾ ਗਣਵੇ ਉਹ ਜਿਹੜੇ ਦਿਲ ਨਾਲ ਮੁਠੀ ਜੋਹੀ ਆਹੋ ਉਹ ਜਿਵੇਂ ਦਿਲ ਛੋੜ ਸੱਪੜ ਕੇ ਭੁਖਣੀ ਭਰੀ ਹੋਈ ਦਿਲ ਜਾਈ ਜਾਂਦਾ ਇਹਨਾਂ ਨੂੰ ਕੀ ਪਤਾ ਗੱਲ ਕੀ ਹੈ ਸਭ ਕੁਝ ਕਿਹਾ ਹੈ ਬਾਣੀ ਚ ਜੋ ਦਹੇ ਦਿਨ ਗਣਵੇਂ ਸਾਹ ਨੇ ਗੱਲਾਂ ਕਰਦੇ ਰੱਖੀ ਇਹਨਾਂ ਨੂੰ ਯਾਦ ਆ ਵੀ ਕਹਿੰਨਾ ਬੀਤ ਕੇ ਕੀ ਗੱਲ ਉਹਨਾਂ ਦੇ ਦੇਖੀ ਕੋਲ ਨਾ ਫਿਰ ਬਦਲ ਗੂ ਕੀ ਹੈ ਜਦ ਮੌਤ ਸਾਹਮਣੇ ਹੋਵੇ ਨਾ ਖੜੀ ਦੀਦੀ ਫਰੀਦ ਕਹਿੰਦਾ ਦਰਿਆ ਵੇ ਟਹਾ ਜਦੋਂ ਉਹ ਦਿਖੂਗਾ ਉਦੋਂ ਦੇਖ ਫੇਕੀਂਦਾ ਰੋ ਉਹ ਗੱਲ ਕਰਨ ਬਾਹਰ ਦੇ ਗੱਲਾਂ ਬਹੁਤ ਦੀਦੀ ਹਮੇ ਪੂਰੇ ਖੜੀ ਸਮਝੇ ਨਹੀਂ ਫਿਰ ਜੋ ਮਰਜੀ ਕਹੀ ਆ ਉਹ ਮੌਤ ਨਹੀਂ ਆ ਨਾ ਬਹੁਤ ਨਹੀਂ ਨਾ ਯਾਦ ਰੱਖਦੇ ਮਰਨ ਮਨੋਂ ਬੁਸਾਰਿਆ ਹੋਇਆ ਇਹਨਾਂ ਨੇ ਜਿੱਦ ਦੇ ਉਹਦੇ ਵਾਸਤੇ ਆ ਖਾਲਸੇ ਦਾ ਮਰਨ ਨਹੀਂ ਬੁਸਾਰਿਆ ਹੁੰਦਾ ਉਹਨਾਂ ਤਾਂ ਮੌਲਤ ਬਣਨ ਦੀ ਦੇ ਜਵੰਦਰਿਆ ਬਟਾ ਇਹਨਾਂ ਦੇ ਬਹੁਤ ਆਦੇ ਨਹੀਂ ਗੱਲਾਂ ਕਰਦੇ ਨੇ ਸਿੱਖੀ ਦੀ ਜਿਹਦੇ ਮੌਤ ਨਹੀਂ ਜਿਹਨੂੰ ਦਿੱਦੀ ਉਹ ਸਿੱਖ ਨਹੀਂ ਗਾ ਅਜੋ ਸਿੱਖ ਨੀ ਬਣਿਆ ਉਹ ਉਹਨੂੰ ਲੋੜ ਦੀੇ ਪੜ੍ਹਨ ਦੀ ਉਹ ਆਦ ਗੁਰੂ ਗ੍ਰੰਥ ਸਾਹਿਬ ਪੜ੍ਹਦਾ ਰਹੇ ਪਿੱਛੇ ਪਿੱਛੇ ਉਹ ਪਿੱਛੇ ਪਿੱਛੇ ਪੜ੍ਹਦਾ ਰਹੇ ਜਦ ਮੌਤ ਦੇਖਣ ਲੱਗੇ ਮਹੂਰੇ ਫਿਰ ਬੜੇ ਉਹਦੇ ਵਾਸਤੇ ਉਹ ਸਿਰ ਹੱਥਾਂ ਤੇ ਥੇੜੀਆਂ ਤਾਂ ਨਹੀਂ ਤੇ ਜਿਨ੍ਹਾਂ ਨੇ ਪੜਿਆ ਉਹ ਜਿਹੜੇ ਆਏ ਨੇ ਚੜ ਕੇ ਉਹਨਾਂ ਨੇ ਕਿਹਾ ਸੀ ਵੀ ਇਹ ਸੀ ਸਿਰ ਲਿਆਏ ਉਹ ਤਾਂ ਵੱਢ ਕੇ ਫਿਰ ਪ੍ਰਕਾਸ਼ ਕਰਦੇ ਹੋ ਤੁੱਕਾ ਦੇ ਮੁਤਾਬਕ ਸੋਨੇ ਕਿਹਾ ਨਾ ਦਬਦਬੇ ਆ ਕੇ ਵੀ ਜੇ ਤਾਂ ਅਸੀਂ ਵੱਡ ਕੇ ਲਿਆਏ ਸਰ ਫਿਰ ਤੁਸੀਂ ਇਹਨੂੰ ਇਦਾਂ ਹੀ ਪ੍ਰਕਾਸ਼ ਕਰਦੇ ਹੋ ਜੇ ਅਸੀਂ ਜੀਦ ਹੋ ਗਏ ਫਿਰ ਭਾਈ ਤੁਸੀਂ ਆਪਣੀ ਵਰਜੀ ਕਰਿਓ ਉਹਨਾਂ ਨੇ ਫੈਸਲੇ ਕੀਤੇ ਨਾ ਜਿਨ੍ਹਾਂ ਨੂੰ ਲੋਟਾਂ ਖੜੀ ਦੀਦੀ ਸੀ ਗੱਲਾਂ ਕਰਦੇ ਤੇ ਏ ਪਰਦਨੇ ਬਾਜਾ ਚੱਕੀ ਰੋਟੀਆਂ ਕੋ ਸਾਰੇ ਓਵਰ ਬਾਜਾ ਚੱਕੀ ਫਰਦਾ ਰਹਾ ਤੂੰ ਰੋਟੀਆਂ ਖਾਤਰ ਤੂੰ ਅੱਜ ਕਰ ਲਾਂ ਗਿਆ ਠਪੜੀ ਤੇਰੇ ਪੱਲੇ ਕੀ ਐ ਪੱਲੇ ਕੀ ਐ ਤੇਰੇ ਪੱਲੇ ਉਹਦੇ ਹੁੰਦਾ ਇਹਨਾ ਮੌਤਾਂ ਖੇਲੇ ਆ ਬੋਡੇ ਨਾ ਬੋਡੇ ਖੈਨੇ ਚਲੇ ਆ ਬੇ ਸਾਰੀ ਜ਼ਿੰਦਗੀ ਮੌਤ ਨੂੰ ਉਹ ਬੋਡੇ ਵਰਵਾਤੇ ਉਥੇ ਦੇ ਦੇ ਲੈਕਚਰ ਮੋਰਚੇ ਧਰਮ ਜਦ ਭੱਜ ਗਿਆ ਸਾਰੀ ਮੂਰੇ ਜਾਂਦਾ ਗੋਲੀ ਦੇ ਕਈ ਵੇਦ ਭੇਦ ਕਹੰਤ ਕਈ ਵੇਦ ਭੇਦ ਕਹੰਤ ਕਈ ਵੇਦ ਤੇ ਭੇਦ ਦੱਸਦੇ ਨੇ ਵੇਦ ਤੇ ਭੇਦ ਨਾ ਕੁਰਬਾਨੀ ਦੇ ਭੇਦ ਕੀ ਨੇ ਵੇਦ ਦੇ ਵੇਸ਼ਾ ਭੇਦ ਹੁੰਦੇ ਨੇ ਜਿਹੜਾ ਵੇਦ ਆ ਦਾ ਭੇਦ ਹੁੰਦਾ ਹੈ ਹਰ ਗੱਲ ਭੇਦ ਦਾ ਉਹਦਾ ਭੇਦ ਜੈਨ ਅਸੀਂ ਭੇਦ ਕੀ ਹੈ ਉਹਦੇ ਵਿੱਚ ਵੀ ਭੇਜਦਾ ਹੈ ਹਰ ਗੱਲ ਵਿੱਚ ਭੇਜ ਦੁੱਦਾ ਬੇਦ ਕਈ ਸ਼ਾਸਤਰ ਸਮਰਤੀ ਬਖਾਨ ਕਈ ਸ਼ਾਸਤਰ ਸਮਰਤੀ ਬਖਾਨ ਕਈ ਸ਼ਾਸਤਰ ਸਮਰਤਾਂ ਦਾ ਬਖਾਨ ਕਰਦੇ ਨੇ ਖੂਨ ਵੀ ਕਰਦੇ ਹੀ ਕਹੂੰ ਕਥਤ ਹੀ ਸੁ ਪ੍ਰਾਣ ਕੋਈ ਪ੍ਰਾਣਾਂ ਦੀ ਕਥਾ ਕਰਦੇ ਨੇ ਪ੍ਰਾਣ ਨੇ ਢਾਣਾ ਪ੍ਰਾਣ ਨੇ ਉਹਨਾਂ ਦੀ ਕਥਾ ਕਰ ਰਹੇ ਨੇ ਲੋਕ ਕਈ ਅਗਨ ਹੋਤਰ ਕਰਨਤ ਕਈ ਬੜਬੜ ਆਪਣੇ ਸਰੀਰ ਨੂੰ ਅਗਨ ਦੇ ਵਿੱਚ ਹੋਮ ਕਰਦੇ ਨੇ ਕੋਈ ਹੋਰ ਉਹ ਤਰ੍ਹਾਂ ਦਾ ਹੋਮ ਕਰਦੇ ਨੇ ਹੋਰ ਉਹ ਆਪਣੇ ਸਰੀਰ ਦਾ ਵੀ ਲੋਕ ਕਰਦੇ ਰਹੇ ਨੇ ਉਹ ਉਹਦਾ ਵੀ ਕਰਦੇ ਨੇ ਸੁਬਗਰੀ ਦਾ ਵੀ ਕਰਦੇ ਨੇ ਕਈ ਉਰਦ ਤਾਪ ਦੁਰੰਤ ਕਈ ਉਰਦ ਤਾਪ ਦੁਰੰਤ ਉਰਦ ਤਾਪ ਉਰਦ ਦਾ ਤਾਬ ਹੁੰਦਾ ਪੁੱਠਾ ਦੱਬ ਕਰ ਲੋ ਦੂਰ ਲਿਜਾਣ ਵਾਲਾ ਦੂਰ ਜਿਹੜਾ ਬੂਲ ਤੋਂ ਆਪਣੇ ਤੋਂ ਦੂਰ ਲੈ ਜਵੇ ਉਰਦ ਦਾ ਤਾਬ ਉਹ ਤੇ ਵੀ ਗਿਆ ਉਰਦ ਦਾ ਤੱਪ ਕਰਤਾ ਉਨ ਤਾਬ ਮਤਲਬ ਇਹ ਨਹੀਂ ਵੀ ਲੱਤਾਂ ਉੱਤੇ ਨੂੰ ਇੱਥੇ ਹਰਦ ਅਰਥ ਖੜਾ ਹੋ ਕੇ ਲਿਖਿਆ ਖੜਾ ਹੋ ਕੇ ਉੱਥੇ ਸਲਤਾ ਇਹਨਾਂ ਨੇ ਅਰਥ ਕਰਤਾ ਜੀ ਪੁੱਠਾ ਲੜਕੇ ਉਰਦੂ ਦਾ ਮਤਲਬ ਪੁੱਠਾ ਲੜਕੇ ਨਹੀਂ ਹੁੰਦਾ ਔਰ ਉੱਥੇ ਗਰਭ ਦੇ ਵਿੱਚ ਪੁੱਠਾ ਹੈ ਵੀ ਨਹੀਂ ਸਿਰ 위 ਪੁੱਠਾ ਕਮੇ ਹੋ ਗਿਆ ਹੈ ਜਿਵੇਂ ਆਦਮੀ ਕੋਡਾ ਹੋ ਕੇ ਧਰਤੀ ਨੂੰ ਲਾਉਂਦਾ ਹੈ ਲੱਖ ਪਰ ਲੱਖ ਜਿੰਨਾ ਖੜਾ ਹੋ ਕੇ ਉਹ ਤਾਂ ਗਰਭ ਗਰਭ ਦੇ ਵਿੱਚ ਪੁੱਠਾ ਕਿੱਥੇ ਉਹ ਤਾਂ ਵੇ ਸਿੱਧਾ ਉਹ ਲੱਤਾ ਉਹ ਤੇ ਨੂੰ ਬਿਲਕੁਲ ਸੱਥਲੇ ਨੂੰ ਆ ਲਮਾਉਂਦੇ ਫਿਰ ਪੁੱਠਾ ਉਹਨ ਦਾ ਤਾਬ ਅਸਲ ਤੇ ਉਹਨ ਦਾ ਤਾਬ ਆਪ ਕਰਦੇ ਤੇ ਨਾ ਹੋ ਤੇ ਜਿਹੜੇ ਤਾਬ ਕਰਦੇ ਤੇ ਉਰਦ ਤਾਬ ਅਸਲ ਤੇ ਸਿੱਧਾ ਤਾਬ ਕੀ ਹੈ ਗੁਰ ਨੂੰ ਸਮਝ ਕੇ ਮਨ ਨੂੰ ਬਣਾਉਣਾ ਨਾ ਪਵੰਦੀ ਤੇ ਰੱਖ ਬੰਦਾ ਸੋਜ ਰਹਿ ਵਿੱਚ ਬੰਦੀ ਇਹ ਤਪਸੀ ਸਿੱਧਾ ਇਹ ਠੀਕ ਤਪਸੀ ਮਨ ਨੂੰ ਬਨਣ ਜਰ ਰਖੜੋ ਕਾਬੂ ਜ ਰਖੜੋ ਹਰ ਵਕਤ ਧਿਆਨ ਰਖੜੋ ਨਾ ਖੋਲਾ ਨਹੀਂ ਛੜੜੋ ਉਹ ਇਹਨਾਂ ਨੇ ਕਰ ਲਾ ਨਹੀਂ ਸੀ ਜਿਹੜਾ ਇਹ ਦਬ ਕਰਦੇ ਸੀ ਉਹ ਨੂੰ ਤਪ ਮੰਨ ਲਿਆ ਨਹੀਂ ਉਹ ਤਪ ਨਹੀਂ ਸੀ ਰਹਿਣਾ ਜੇ ਉਰਦ ਦਬਦੇ ਸਹੀ ਅਰਥ ਕਰਦੇ ਨਾਲ ਤਪ ਰਹਿਣਾ ਨਹੀਂ ਸੀ ਕੋਈ ਵੀ ਕੋਈ ਤਪ ਨਹੀਂ ਸੀ ਰਹਿਦਾ ਇਹ ਜਿੰਨੀਆਂ ਕੈਡਾ ਨੇ ਸਭ ਫੇਲ ਹੁਣ ਕਿਉਂ ਹੋ ਰਹੀਆਂ ਨੇ ਉੱਥੇ ਵੀ ਫੇਲ ਨੇ ਐ ਜਿਹਨ ਦੇ ਬਿਹਰ ਆ ਜਿਹੜੀ ਅਕਾਲ ਉਸਤ ਦੇ ਵਿੱਚ ਜੇ ਕੱਲੀ ਅਕਾਲ ਉਸਤ ਪੜ ਲਈਏ ਕੱਲੀ ਹੀ ਅਕਾਲ ਉਸਤ ਪੜ ਲਈਏ ਤਾਂ ਦੁਨੀਆਂ ਦੀ ਕੋਈ ਮੱਤ ਨਹੀਂ ਮੰਨ ਸਕਦਾ ਸਿੱਖ ਕਿਸੇ ਮੱਤ ਦਾ ਪ੍ਰਭਾਵ ਨਹੀਂ ਹੋ ਸਕਦਾ ਹੁਣ ਸੇ ਸਾਰੀਆਂ ਬੱਤਾਂ ਚਲਦੀਆਂ ਨੇ ਆਲ ਗੁਰੂ ਰਾਜ ਦਾ ਪੜਦene ਸਾਰੀਆਂ ਬੱਤਾਂ ਛਡਾ ਕੇ ਦਿਖਾਉਣ ਰੌਲਾ ਪਾਉਦੇ ਨੇ ਛਡਾ ਕੇ ਦਿਖਾਉਣ ਦੋ ਜਿਹੇ ਕਿਉਂ ਰੇ ਹੋ ਰਹੇ ਕਿਉਂਕਿ ਆ ਕੱਲਾ ਹੀ ਅਕਾਲ ਉਸਤ ਪੜ ਲਈਏ ਕੱਲੀ ਉਹ ਹੁੰਦਾ ਕੱਖ ਵੀ ਨਹੀਂ ਰਹਿ ਸਕਦਾ ਕੁਝ ਵੀ ਨਹੀਂ ਛੱਡਦੀ ਇਹ ਕੱਲੀ ਹੋਈ ਇਹ ਲੋਕ ਹੈ ਇਹ ਲੋ ਹੋਰੇ ਹੋਰ ਕੁਝ ਬੋਲਦਾ ਉਹਨੂੰ ਕੀ ਪਤਾ ਮਤ ਮਰੀ ਹੈ ਇਹਦੀ ਬੁੱਧ ਪ੍ਰੇਸ਼ਟial ਹੋ ਜਾਂਦੀ ਹੈ ਨਾ ਜਾਂ ਬੁੱਧ ਪ੍ਰੇਸ਼ਟial ਦੀ ਆਦਮੀ ਦੀ ਫਿਰ ਇਦਾਂ ਹੀ ਬੋਲਦਾ ਹੁੰਦਾ ਬੁੱਧ ਪ੍ਰੇਸ਼ਟial ਹੋ ਗਈ ਸਮਝ ਆਈ ਉਹ ਤਾਂ ਕਹਿੰਦਾ ਨਾ ਮੈਂ ਉਹ ਜਿਹੜੇ ਅੱਗੇ ਹੋਏ ਨੇ ਆਪਣੇ ਸਰਕਾਰ ਦਾ ਨਾਲ ਸੀ ਕੀ ਹਾਲ ਹੈ ਉਹਨਾਂ ਦਾ RAMRADA ਕੀ ਹਾਲ ਹੈ ਉਹ ਤੁਹ ਬ੍ਰੇਸ਼ਟ ਹੋ ਗਈ ਸੀ ਲੋ 13 ਮਲਿਆ ਕੀ ਹਾਲ ਹੈ ਉਹ ਤੁਹ ਬ੍ਰੇਸ਼ਟ ਹੋ ਗਈ ਸੀ ਲੋ ਆਈ ਨਾਮਧਾਰੀਆਂ ਦਾ ਹੋ ਜਾਣਾ ਦੇਖ ਲੈਣ ਗੁਰਵਤ ਛੱਡ ਕੇ ਟੀਮ ਮੈਂਨ ਅਕੀ ਲਿਆ ਉਹ ਬਸ ਖਤਮ ਗਾਹ ਨੂੰ ਕੀ ਹੈ ਕੁਝ ਵੀ ਨਹੀਂ ਗੁਰਬਾਣੀ ਨਾਲ ਕੋਈ ਵੀ ਜੁੜਿਆ ਆਇਆ ਅਰਥ ਕੋਈ ਵੀ ਨਹੀਂ ਜਾਣਦਾ ਕਿਉਂਕਿ ਮਾਇਆ ਤਾਂ ਹੀ ਜਹ ਹੋ ਜਾਂਦਾ ਲਾਲ ਵੀ ਛੱਡ ਜਾਂਦਾ ਹੁੰਦਾ ਸਭ ਕੁਝ ਜਿਹੜੇ ਜੁੜੇ ਗੁਰਬਾਣੀ ਨੂੰ ਜੇ ਗੁਰਬਾਣੀ ਨਾਲ ਜੁੜੇ ਹੁਣ મતਭੇਦ ਇਹਨਾਂ ਦੇ ਇਹਨਾਂ ਦੇ ਪਿੱਛੇ ਤਾਂ ਕੋਈ ਹੋਰ ਸ਼ਕਤੀਆਂ ਕੰਮ ਕਰਦੀਆਂ ਨੇ ਹੰਕਾਰ ਦੀ ਸ਼ਕਤੀ ਵੀ ਕੰਮ ਕਰਦੀ ਹੁੰਦੀ ਵੀ ਜੋ ਮੈਂ ਕਹਤਾ ਬਸ ਮੈਂ ਤਾਂ ਉਸ ਕਹੀ ਜਣ ਇਹ ਉਰਦ ਤਾਪ ਹੈ ਉਰਦ ਦਾ ਤਾਪ ਦਾ ਮਤਲਬ ਹੈ ਫੁੱਟਕ ਤਾਪ ਫੁੱਟਕ ਦੁਰੰਤ ਹੈ ਉਰਦ ਤਾਪ ਨਾਲ ਆਪਣੇ ਮੂਲ ਤੇ ਦੂਰ ਹੋ ਜਾਂਦਾ ਹੈ ਹੰਕਾਰ ਪੈਦਾ ਹੋ ਜਾਂਦਾ ਉਹਦੇ ਨਾਲ ਉਰਦ ਤਾਪ ਨੂੰ ਹੰਕਾਰ ਪੈਦਾ ਹੋ ਜਾਂਦਾ ਜੇ ਕੋਈ ਚੰਗਾ ਕੰਮ ਵੀ ਕਰੇ ਨਾ ਉਹਦੇ ਨਾਲ ਵੀ ਹੰਮੇ ਪੈਦਾ ਹੋ ਜਾਂਦੀ ਹੈ ਉਰਦ ਦਾ ਫੋੜੂ ਹੈ ਤਾਪ ਕਰੀਦਾ ਹੰਕਾਰ ਨੂੰ دیਵਾ ਕਰਨ ਵਾਸਤੇ ਹਮਨ ਆਵੈ ਨਾਲ ਬ੍ਰੋਧ ਜੇ ਹੰਕਾਰੇ है, ਜਾਓ ਉਹ ਤਾਬੀ ਉਰਦ ਤਬੇ ਹੈ ਜਿਹੜੇ ਤਾਬ ਨਾਲ ਹੰਕਾਰ ਵੱਜੇ ਉਹ ਤਾਬ ਉਰਦ ਤਾਪ ਹੈ ਤਬ ਕੋਈ ਵੀ ਹੋਵੇ ਚ ਹੈ ਇੰਦਕਾਰ ਕੇ ਜਿੰਨੇ ਹੋਏ ਨੇ ਨਾ ਰਿਸ਼ੀ ਪੁਰੀ ਸਾਹਿਬ ਹੰਕਾਰੀ ਸੀ ਕਰੋਧੀ ਸੀ ਉਹ ਸਾਰਿਆਂ ਦਾ ਤਬ ਉਰਦ ਤਬ ਕੇ ਹੋਇਆ ਜਿਹੜਾ ਮਨ ਨੂੰ ਨੀਵਾ ਕਰੇ ਉਹੀ ਤਪ ਤਪ ਹੈ ਬੰਨੀ ਮਾ ਕਲੋਂ ਨਾ ਪਾਣਾ ਬੰਨੇ ਤੇ ਪਾਣਾ ਬੰਨੇ ਤਾਂ ਨਹੀਂ ਬੋਤ ਪਾਣਾ ਬੰਨੇ ਬਰਨ ਬਦੀ ਬਦੀ ਹੁੰਦਾ ਫਿਰ ਦਾਸ ਬਣਦਾ ਜਿਹੜਾ ਦਾਸ ਬਣ ਗਿਆ ਉਹਨੇ ਤਾਂ ਠੀਕ ਕੀਤਾ ਜਿਹੜਾ ਗੁਰੂ ਬਣ ਗਿਆ ਉਹਨੇ ਤਾਂ ਗਲਤ ਕੀਤਾ ਜਿਹੜਾ ਗੁਰੂ ਕਹਾਇਆ ਸੰਤ ਕਹਾਇਆ ਸਾਧ ਕਹਾਇਆ ਵੱਡਾ ਕਹਾਇਆ ਜੇ ਕੋ ਨਾ ਉਤਰ ਆਏ ਵੱਡਾ ਵੱਡਾ ਸਾਧ ਕਰੇ ਮਨ ਪਾਣੇ ਖਸਮਾਂ ਤਰੀ ਕੀੜਾ ਵੇਜੇ ਚੁੱਕੇ ਧਾਣੇ ਇਹ ਗੁਰੂਆਂ ਨੂੰ ਇਹ ਜਿਹੜੇ ਅਸੀਂ ਬਣਾਈ ਬੈਠੇ ਆ ਨਾ ਅੱਜ ਆਪਣੇ ਗੁਰੂਆਂ ਨੂੰ ਗੁਰੂ ਇਹਨਾਂ ਨੂੰ ਦਾਸ ਰਹਿਣ ਦੋ ਚੰਗੇ ਰਹੂਗੇ ਨਹੀਂ ਉਹਨਾਂ ਦੀ ਉਹਨਾਂ ਦੀ ਨਗਾ ਸਿੱਖ ਨਹੀਂ ਹੈਗੇ ਬਲੇਖੇ ਜਣਾ ਰਹੇ ਕੋਈ ਜੋ ਉਹ ਚਾਹੁੰਦੇ ਸੀ ਬੜਨਾ ਫੜੀ ਖੁਸ਼ੀ ਨਾਲ ਉਹੀ ਬੜੇ ਰਹਿੰਦੇ ਇਹ ਦੇਖੋ ਉਹਨਾਂ ਨੇ ਬੜਿਆ ਹੀ ਹੈ ਸ਼ਕਤੀ ਜ਼ਿਆਦਾ ਐਟਮ ਸਭ ਤੋਂ ਛੋਟਾ ਐਟਮ ਦੀ ਸ਼ਕਤੀ ਜ਼ਿਆਦਾ ਐਟਮ ਦੀ ਸ਼ਕਤੀ ਨਾਲ ਉਹ ਦੁਨੀਆ ਬਣਦੀ ਹੈ ਬੰਬ ਵੀ ਚੱਲਦਾ ਵੱਡੇ ਵੱਡੇ ਟੁਕੜੇ ਡਿੱਗਦੇ ਨੇ ਦੂਏ ਬੱਬਾ ਦੇ ਪਰ ਐਟਮ ਜਦ ਟੁੱਟਦਾ ਉਹਦੇ ਟੁਕੜੇ ਕੀ ਕਰਦੇ ਨੇ ਔਰ ਉਦੋਂ ਗਾਹਾਂ ਜਿਹੜੇ ਹਾਈਡਰੋਜਨ ਨਾਈਟ੍ਰੋਜਨ ਪੱਬ ਨੇ ਉਹ ਕੀ ਕਰਦੇ ਨੇ ਜਿੱਦ ਦੀ ਬਰੀਕੀ ਚਲੀ ਜਾਊਗੀ ਅੱਗੇ ਜਾ ਕੇ ਛੋਟਾ ਹੋਈ ਜਾਊਗਾ ਓਨਾ ਹੀ ਵੱਡਾ ਹੋਈ ਜਾਂਦਾ ਓਨੀ ਸ਼ਕਤੀ ਵਧ ਜਾਂਦੀ ਇਹ ਕੀ ਇਸ ਨੂੰ ਵੀ ਜਾਣੇ ਕੀ ਉਜੜ ਖੜਾ ਫਿਰ ਵਸੇ ਔਰਖ ਜਾਣੇ ਕੀ ਇਹ ਤਾਂ ਮਰ ਕੇ ਜਾਉਣਾ ਹੋਣ ਵਾਲੀ ਗੱਲ ਹੈ ਇਹ ਤਾਂ ਮਰ ਕੇ ਜਾਉਣਾ ਹੋਣ ਵਾਲੀ ਗੱਲ ਹੈ ਸਾਇੰਸ ਨੂੰ ਵੀ ਦੇਖ ਲੈਣ ਜਿਹੜਾ ਮੋਟਾ ਹੈ ਉਹਦੀ ਅਕਲ ਮੋਟੀ ਇਹ ਖਣੇ ਉੱਤ ਕੀ ਬਾੜੋਂ ਨਿਕੀਏ ਤਮਾਰਗ ਜਾਣ ਨਿਕਲੋ ਕਹਵਾਇ ਤਮਾਰਗ ਕੁਬੀਰ ਖਾਨਾ ਖਬੀਰ ਮੁਕਤਦਵਾਰਾ ਸੰਪੁਰਾ ਰਾਈ ਦਾ ਸਮਾਂ ਭਾਏ ਮਨ ਤੋਂ ਮੈਗਲ ਹੋ ਰਿਹਾ ਮਨ ਤੋਂ ਹਾਥੀ ਬਣਿਆ ਉਹ ਜਿਹੜੇ ਗੁਰੂ ਨੇ ਹਾਥੀ ਨੇ ਉਹ ਨਹੀਂ ਨਿਕਲ ਸਕਦੇ ਉੱਥੇ ਦੀ ਉਹਨਾਂ ਨੂੰ ਮੁਕਤੀ ਨਹੀਂ ਮਿਲਦੀ ਹੁੰਦੀ ਵਿੰਕਣਾ ਬਬਰ ਰੂਬ ਹੋ ਜਾਵਾਂਗੇ ਆਪਣ ਕੋਈ ਡਾੜੇ ਉੱਚਾ ਸੋਈ ਗਣੀ ਸਭ ਤੋਂ ਆ ਇਹ ਕੀ ਜਾਣ ਇਹ ਬੜਾ ਬਣਾਉਂਦਾ ਨਾ ਜਦੋਂ ਹੰਕਾਰ ਹੀ ਰਹਿਣਾ ਆਪ ਬਣਾਵਣਾ ਚਾਹੁੰਦੇ ਨੇ ਇਹਨਾਂ ਦਾ ਆਪਣਾ ਹੰਕਾਰ ਬੋਲਦਾ ਹੰਕਾਰ ਇਹ ਹੰਕਾਰ ਬੋਲਦਾ ਇਹਨਾਂ ਨੂੰ ਢੁੱਡੀ ਸਮਝ आएगी ਮਤਮਾਰੀ ਹੋਈ ਹੈ ਹੰਕਾਰ ਦੀ ਮਤਮਾਰੀ ਹੁੰਦੀ ਹੈ ਗੁਰਬਾਣੀ ਕੀ ਕਹਦੀ ਹੈ ਤੁਸੀਂ ਕੀ ਕਰਦੇ ਹੋ ਜੇ ਦਾਤ ਬਣਾਉਣਗੇ ਤਾਂ ਆ ਜਿਹੜੇ ਦੂਏ ਜੱਬੇ ਨੇ ਨਾ ਸਾਰੇ ਆਪੇ ਹੀ ਵਹਿ ਜਾਣਗੇ ਆਪੇ ਗੁਰੂ ਬਣੇ ਬੈਠੇ ਆਪੇ ਜਿਹੜੇ ਗੁਰੂ ਬਣੇ ਰਹੇ ਆਪੇ ਬੰਦ ਹੋ ਜਾਣਗੇ ਬਣਾਏ ਗੁਰੂ ਬਣਨੇ ਤਾਂ ਬੰਦ ਕਰੇ ਤੇ ਰਾਨ ਕਰਨੇ ਇਹ ਕਹਿ ਕੇ ਸ਼ਬਦ ਗੁਰੂ ਸਤ ਤੋ ਚੇਲਾ ਗੁਰੂ ਬਣਨੇ ਬੰਦ ਕਰੇ ਤਾਂ ਤੁਸੀਂ ਫਿਰ ਬਣਾਤੇ ਆਪਣੀ ਬੋਧੀ ਸਿਆਣਪ ਨੂੰ ਸਿਆਣੇ ਨੇ ਨਾ ਹੈ ਇਹ ਆਪਣੀ ਬਹੁਤ ਹੀ ਸਿਆਣਪ ਨਾਲ ਗੁਰੂ ਨਾਲ ਵੀ ਸਿਆਣੇ ਨੇ ਇਹ ਗੁਰੂਆਂ ਨਾਲ ਸਿਆਣੇ ਨੇ ਉਹਨਾਂ ਨੂੰ ਗੁਰੂ ਬਣਾ ਰਹੇ ਨੇ ਗੁਰਬਾਣੀ ਨਾਲ ਸਿਆਣੇ ਨੇ ਕਹੋ ਨਾ ਗੁਰਬਾਣੀ ਦੇ ਉਪਦੇਸ਼ ਨਾਲ ਆਪ ਸਿਆਣੇ ਨੇ ਭਗਤਾਂ ਨਾਲ ਆਪ ਸਿਆਣੇ ਬਣਦੇ ਉਹ ਰਿਜ਼ਲਟ ਸਭ ਨੇ ਉਹ ਤੇ ਚਾਹੁੰਦੇ ਸੀ ਵੀ ਇਧਰ ਨੂੰ ਜਲ ਫਿਰ ਅਸੀਂ ਉਹਨੂੰ ਘੇਰਾ ਪਾ ਲਈਏ ਉਹਨਾਂ ਨੇ ਕਿ ਰਪਾਲਿਆ ਆਪਣਾ ਹਾਂਜੀ ਕਈ ਉਹਨਰ ਤੇ ਬਹਾ ਸੁਨਿਆਸ ਕਈ ਉਹਨਰ ਤੇ ਬਹਾ ਸੁਨਿਆਸ ਸੁਨਿਆਸ ਕੀ ਹੈ ਉਹਨਰ ਤੇ ਬਹਾ ਬਹਾ ਲਬਦਾ ਬਾਂ ਨਹੀਂ ਹੈ ਬਹਾ ਵਾਹ ਵਹਾਓ ਕੀ ਹੈ ਪੁੱਠੀ ਗੰਗਾ ਚਲਾ ਦੇਣੀ ਯਾਨੀ ਸੁਨਿਆਸ ਆਸ ਨੂੰ ਸੁਣ ਕਰ ਲੈਣ ਆਸ ਸੁਣ ਨਹੀਂ ਹੋ ਸਕਦੀ ਆਸ ਸੁਣ ਹੋ ਸਕਦੀ ਜਦ ਇੰਜਣਾ ਪੂਰਿਸਪੀਡ ਤੇ ਚੱਲਦਾ ਉਹਦੇ ਚੱਕੇ ਦੇ ਉੱਤੇ ਕੋਈ ਚੀਜ਼ ਬ੍ਰੇਕ ਲਾ ਕੇ ਇੰਜਣਾ ਨਹੀਂ ਬੰਦ ਕਰਨਾ ਉਹਦਾ ਤਾਂ ਫਿਊਲ ਨਹੀਂ ਘਟਾਉਣਾ ਤੇਲ ਨਹੀਂ ਘਟਾਉਣਾ ਚੱਲਣ ਈ ਉਹਨੂੰ ਦੇਣਾ ਤੇ ਤਾਂ ਨੁਕਸਾਨ ਆ ਫਿਰ ਅੱਗ ਪੈਦਾ ਹੂ ਅੱਗ ਪੈਦਾ ਹੂ ਇਹ ਉਹਦਾ ਬਹਾਅ ਕੀ ਕਰਨਾ ਕੀ ਜਾਈਦਾ ਸੀ ਆਸ ਆਖਰ ਇਹ ਸੁਣ ਕਰਦੇ ਨੇ ਆਸਰੂ ਦਾ ਟਾਰਗੇਟ ਕੀ ਹੈ ਟਾਰਗੇਟ ਕੀ ਕਾਦੇ ਵਾਸਤੇ ਸੁਣਵਾਸ ਕਰਦੇ ਕਾਦੇ ਵਾਸਤੇ ਕਰਦੇ ਨੇ ਆਸ ਤੁਸੀਂ ਜੇ ਕਿਸੇ ਚੀਜ਼ ਦੇ ਵਾਸਤੇ ਜੇ ਉਹਨਾਂ ਦਾ ਬੁੱਧਾ ਨਹੀਂ ਨਾ ਕੋਈ ਹੈ ਤੇ ਆਸ ਵਿੱਚ ਸੁਣ ਕਿਉਂ ਕਰਦੇ ਨੇ ਸੋਚਣਾ ਬੰਦ ਕਿਉਂ ਕਰਦੇ ਨੇ ਸੋਚਣਾ ਤਾਂ ਬੰਦ ਨਹੀਂ ਹੋ ਸਕਦਾ ਸੁਪਨਾ ਵਿੱਚ ਸੁਪਨਾ ਨਹੀਂ ਬੰਦ ਹੁੰਦਾ ਸਪਨਾ ਬੰਦੋਂ ਅੰਦਰ ਸਪਨੇ ਵਾਲੇ ਨੂੰ ਜਗਾ ਦੀਦਾ ਹੁੰਦਾ ਸਪਨੇ ਨੂੰ ਜਗਾ ਲੋ ਆਪੇ ਬੰਦ ਹੋ ਜੂ ਜੇ ਸਮਝਣ ਲੱਗ ਜਾਂਦੇ ਕੁਝ ਸਮਝਣ ਲੱਗ ਜਾਂਦੇ ਸੁਣਨ ਲੱਗ ਜਾਂਦੇ ਬੋਲਣ ਦੀ ਬਜਾਏ ਇੱਕ ਆਦਮੀ ਲੈਕਚਰ ਦੇ ਰਿਹਾ ਹੈ ਇੱਕ ਆਦਮੀ ਲੈਕਚਰ ਦੇ ਬਜਾਏ ਆਪ ਸੁਣ ਰਿਹਾ ਜਿਹੜਾ ਸੁਣ ਰਿਹਾ ਉਹਦੀ ਕੋ ਟੈਲੀਵਿਜ਼ਨ ਦੇਖਣਾ ਜੋ ਕਿਤਾਬ ਪੜ੍ਹਣਾ ਕਿ ਜੋ ਆਪੇ ਕਲਪਨਾ ਕਰਦਾ ਕਲਪਨਾ ਕਰਦਾ ਤੇ ਬਹਿਲਾ ਬਹਿਲਾ ਦਿਮਾਗ ਦੇ ਸ਼ੈਤਾਨ ਦਾ ਕਰ ਇਹ ਪਹਿਲਾਂ ਰਹਿਣ ਜਿਹੜੂ ਇਹ ਸਮਝਣ ਆਇਆ ਸੀ ਆयो ਸੁਣ ਲਿਓ ਪੜ੍ਹ ਬਾਣੀ ਇਹ ਕੰਮ ਆਇਆ ਸੀ ਉਹ ਕੰਮ ਦਾ ਲਾਇਆ ਨਹੀਂ ਕਹਿੰਦੇ ਚੁੱਪ ਕਰਕੇ ਬਹਿ ਜਾ ਚੁੱਪ ਕੇ ਬੈਠੇ ਇਦਾਂ ਨਹੀਂ ਚੁੱਪ ਕਰਦਾ ਚੁੱਪੇ ਚੁੱਪ ਨੂੰ ਹੋ ਗਈ ਜੇ ਬੂ ਵੀ ਚਪਾਰ ਗਿਆ ਤਾਂ ਨਹੀਂ ਚੁੱਪ ਹੋ ਰਹੇ ਇਹ ਉਹਨ ਦਵਾ ਹੋ ਇਹ ਵੀ ਪੁੱਠਾ ਵਾਹ ਹੋਇਆ ਪੁੱਠਾ ਕਰ ਰਹਿ ਨੇ ਜੇ ਇਹ ਕਰੋਗੇ ਆਦਮੀ ਡਿਪਰੈਸ਼ਨ ਚਲਾ ਜਾਊਗਾ ਪਾਗਲ ਹੋ ਜਾਊਗਾ ਉਪਲ ਜੇ ਇਮਾਨਦਾਰੀ ਨਾ ਕਰੂ ਪਾਗਲ ਹੋ ਦਿਮਾਗ ਉਹਦਾ ਦਿਮਾਗ ਰੁੱਕ ਕੇ ਮੈਂ ਵੰਦ ਤੁਸੀਂ ਖਤਰਨਾਕ ਹੈ ਜੇ ਇਹ ਕਰੋਗੇ ਪਾਗਲ ਹੋ ਈਮਾਨਦਾਰੀ ਨਾ ਕਰੂਗਾ ਜਿੰਨਾ ਨਾ ਵੀ ਈਮਾਨਦਾਰੀ ਨਾਲ ਕੰਮ ਕੀਤਾ ਸਭ ਬਗਲ ਹੋਗੇ ਇਹ ਈਮਾਨਦਾਰੀ ਨਾਲ ਨਹੀਂ ਕਰੂਗਾ ਫਿਰ ਉਹ ਕਹੂਗਾ ਹਾਂ ਬਸ ਮਿਲ ਗਿਆ ਬਸ ਐ ਹੋ ਗਿਆ ਐ ਹੋ ਗਿਆ ਫਿਰ ਉਹ ਪਖੰਡ ਫਿਰ ਆਪਣਾ ਪਖੰਡ ਰਚ ਫਿਰ ਗੁਰੂ ਬੜਿਆ ਬਣਾਇਆ ਗਿਆ ਪੁਰਜ ਬਾਇਆ ਕਰੂਗਾ ਤੁਹਾਡੀਆਂ ਤਾਪ ਨੂੰ ਵਾਲਾ ਫਿਰ ਬਾਦ ਜੀ ਬਣ ਗਿਆ ਸਭ ਕੁਝ ਐ ਹੋ ਗਿਆ ਦਰਸ਼ਨ ਹੋ ਗਏ ਫਿਰ ਉਹ ਜੀਆਂ ਕਹਾਣੀਆਂ ਬਣਾ ਲੂਗਾ ਇਹ ਤਾਂ ਪਖੰਡ ਕਰੂਗਾ ਇਹ ਜੇ ਬਾਦਾਰੂ ਤਾਂ ਪਾਗਲ ਹੋ ਬੰਦੇ ਫੁੱਲਨੇ ਦੂਰ ਹੋ ਜਾਣਗੇ ਇਹਨੂੰ ਸਮਝਣ ਲਾ ਦੋ ਗੁਰਬਾਣੀ ਵਿਚਾਰਨ ਲਾ ਦੋ ਆਪੇ ਬੰਦੇ ਫੁੱਲਨੇ ਦੂਰ ਹੋ ਜਾਣਗੇ ਫੁੱਲਣਾ ਜਿਆਦਾ ਉੱਡਦਾ ਜਿਆਦਾ ਵਹਿਲਾ ਹੁੰਦਾ ਇਹ ਬਾਣੀ ਵਿਚਾਰਨਾ ਫੁੱਲਣਾ ਆਪੇ ਨਹੀਂ ਉੱਡਦਾ ਫੁੱਲਣਾ ਆਪੇ ਬੰਦ ਇਸ ਕਰਕੇ ਇੱਕ ਖਿੰਦ ਤੇ ਜੀਵਣਾ ਵਿਰਥਾ ਜਨ ਬਝੂੜੋ ਇੱਕ ਖਿੰਡ ਵੀ ਇਹਨੂੰ ਵਹਿਲਾ ਨਹੀਂ ਰਹਿਣ ਦੇਣਾ ਜਿਆਦਾ ਫੁੱਲਣਾ ਉੱਠ ਗੜੂ ਹੋਰ ਕੋਈ ਗੱਲੇ ਨਹੀਂ ਦੀ ਹੈ ਗੁਰਬਾਣੀ ਚ ਇਹ ਕੀ ਕਰਦੇ ਨਕਲ ਕਰਦੇ ਨੇ ਮਾਲਾ ਫੇਰ ਨੇ ਵੈਰੂ ਵੈਰੂ ਵਾਲੇ ਵੀ ਨਕਲ ਕਰਨ ਦੇ ਨੇ ਜਿਹਨਾਂ ਦਾ ਨਾ ਨਾ ਬੱਤਾਂ ਦਾ ਉਹਨਾਂ ਦੀ ਨਕਲ ਹੈ ਸਾਰੀ ਸਿੱਖ ਕਰ ਰਹੇ ਉਹਨਾਂ ਦਰਸ਼ਨ ਸੋ ਵੀ ਮਾਲਾ ਲਈ ਫਿਰਦਾ ਸੀ ਇੱਥੇ ਦੇਖ ਲਿਓ ਮਾਲਾ ਨੂੰ ਕੋਈ ਜਗ੍ਹਾ ਹੈ ਆ ਚੈਪਟਰ ਦੇ ਵਿੱਚ ਮਾਲਾ ਨੂੰ ਕੋਈ ਜਗ੍ਹਾ ਹੀ ਨਹੀਂ ਹੈ ਆ ਚੱਲ ਰਿਹਾ ਹੈ ਨਾ ਸ਼ਦ ਇਹ ਜੇ ਬਾੜਾ ਨੂੰ ਕੋਈ ਜਗਾਈ ਨਹੀਂ ਕਿਸੇ ਗੱਲ ਨੂੰ ਨਹੀਂ ਕੋਈ ਜਗਾ ਸਵਾਇ ਗੁਰਮਤਿ ਸੋਜੀ ਤੇ ਕਿਸੇ ਗੱਲ ਵਾਸਤੇ ਜਗਾ ਦੀ ਉਹ ਇਹਨਾਂ ਕੋਈ ਹੈ ਨਹੀਂ ਉਹ ਹੁਣ ਵੀ ਨਹੀਂ ਹੈ ਕਿਸੇ ਕੋਲ ਨਹੀਂ ਜਿਹੜੇ ਰੌਲਾ ਪਾਉਂਦੇ ਗੁਰਮਣੀ ਦੀ ਸਮਝ ਤੇ ਸਮਝ ਹੁੰਦੀ ਰੌਲਾ ਨਹੀਂ ਹੈ ਫਿਰ ਤਾਂ ਜਦ ਸਮਝ ਹੋ ਰੌਲਾ ਆਪੇ ਹਟ ਜਾਊਗਾ ਸਮਝ ਦੀ ਅਣ ਹੋਣ ਰੌਲਾ ਵਿਦਵਾਨਾਂ ਨੇ ਸਮਾਂ ਤੇ ਕੀ ਲਾਣਾ ਹੁੰਦਾ ਸਾਮਣੇ ਤਾਂ ਝਗੜੇ ਮਟਾਉਂਦੀ ਹੁੰਦੀ ਹੈ ਵਿਦਿਆ ਝਗੜੇ ਖੜੇ ਕਰਦੀ ਹੈ ਵਿਦਿਆ ਦੀ ਵਿਚਾਰ ਜਿਹੜੀ ਹੈ ਜੇ ਵਿਦਿਆ ਨੂੰ ਵਿਚਾਰਾਂਗੇ ਫਿਰ ਝਗੜੇ ਵਿਟਦੇ ਨੇ ਜਿੰਨਾ ਚਿਰ ਵਿਦਿਆ ਵਿਚਾਰੀ ਨਹੀਂ ਵਿਦਿਆ ਪਰ ਵਿਚਾਰੀ ਨਹੀਂ ਵਿਦਿਆ ਨੇ ਆਤਮ ਹੁੰਦੀ ਹੈ ਆਦਮ ਹੋ ਗਈ ਇਹਨਾਂ ਦੀ ਵਿਦਿਆਰਾਂ ਨੂੰ ਇਹ ਆਦਮ ਘਾਟੀ ਨਾ ਸਾਰੇ ਆਪਣੇ ਆਪ ਨੂੰ ਹੀ ਘਾਤ ਕਰ ਰਹੇ ਨੇ ਆਪਣੀ ਬੁੱਧੀ ਹੀਰ ਹੋ ਗਏ। ਦੇ ਯੋ ਜਿਸ ਕਰਣ ਜਿੱਥੇ ਵਰਦੀ ਇਹ ਤਾਂ ਸਾਬਤ ਕਰ ਦੇਣਾ ਨਾ ਵੀ ਤੁਸੀਂ ਬੁੱਧੀ ਹੋਏ ਬਏ ਨਾ ਸਭ ਕੀ ਹੈ। ਇਹ ਸਭ ਬਬਲ ਨੂੰ ਪਤਾ ਲੱਗ ਜਾਣ। ਕਹੂੰ ਜੋਗ ਭੇਸ ਉਦਾਸ ਕਹੂੰ ਜੋਗ ਭੇਸ ਉਦਾਸ ਕਿਤੇ ਜੋਗ ਭੇਸ ਹੈ ਜੋਗੀਰ ਜੋਗੀ ਆਪਣਾ ਭੇਸ ਆ ਉਹਨਾਂ ਦਾ ਕਿਤੇ ਉਦਾਸੀ ਨੇ ਉਦਾਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜੋਗੀਆਂ ਦੇ ਵਿੱਚੋ ਹੀ ਹੈ ਉਦਾਸੀ ਇਹ ਸ੍ਰੀ ਚੰਦਰ ਦਾ ਸ੍ਰੀ ਕਨ ਅਸਰ ਤੇ ਜਟਾਣੇ ਹੋਈ ਉਹ ਹੀ ਧੂਲ ਜੋਗੀ ਵਾਲਾਈ ਉਦਾਸੀ ਇਹਨਾਂ ਦੇ ਵਿੱਚੋ ਹੀ ਨੇ ਜੋਗ ਭੇਸ ਉਦਾਸ ਉਦਾਸ ਕਹੂੰ ਨਿਵਲੀ ਕਰਮਕਰੰਤ ਕਿਤੇ ਡਿਓਲੀ ਕਰਮ ਕਰਦੇ ਨੇ ਜਿਵੇਂ ਕਰ ਬੋਧਣਾ ਉਹ ਨੇਤੀਤ ਹੋਤੀ ਲੈ ਕੇ ਸਭਾਈ ਕਰਦੇ ਨੇ ਸਰੀਰ ਦੀ ਹਾਂਜੀ ਕਹੂੰ ਪੌਣ ਆਹਾਰ ਦੁਰੰਤ ਕਿਤੇ ਪੌਣ ਆਹਾਰ ਹੀ ਨੇ ਇਹ ਵੀ ਦੁਰੰਤ ਹੈ ਇਹ ਖਤਰਨਾਕ ਗੱਲ ਹੈ ਪੌਣ ਵਾਲੀ ਕੁਝ ਖਾਣਾ ਨਹੀਂ ਇਹ ਅੱਜ ਗੱਲ ਹੈ ਕੁਝ ਖਾਣਾ ਹੀ ਨਹੀਂ ਉਹਨਾਂ ਸਰਫ ਖੂਨ ਸਾਫ ਕਰਦੇ ਫਖੂਰ ਬਣੂਗਾ ਦਾ ਫਿਰ ਹਟਾ ਦੇ ਕੀ ਕਰਣੇ ਤੁਸੀਂ ਖੂਨ ਬਣੂ ਸਾਨੂੰ ਸਾਫ ਕਰਨਾ ਇਹ ਵੀ ਦਰੰਤਾ ਇਹ ਕੁਦਰਤ ਦੇ ਖਿਲਾਫ ਗੱਲ ਕੁਦਰਤ ਤੋਂ ਦੂਰ ਲਿਜਾਣ ਵਾਲੀ ਗੱਲ ਹੈ ਸਾਰੀ ਵੀ ਪਾਉਣੇ ਖਾਣੀਆਂ ਜੀ ਖਾਣਾ ਹੀ ਨਹੀਂ ਕੁਝ ਖਾਦੇ ਸ਼ਰੀਰ ਕਿਵੇਂ ਬਚੂ ਖਾਣ ਪੀਣ ਬਿਨਾਂ ਸ਼ਰੀਰ ਦੀ ਬਜਦਾ ਹੈ ਇਹ ਬੁਰਖਤਾਈ ਹੈ ਆ ਜਿਹੜਾ ਜੇ ਸਾਰੀ ਪੌਣ ਲਾ ਰਹੀ ਹੋ ਜਣ ਅਜਿਹੜਾ ਇਹਦੀ ਪੈਦਾ ਹੋਣ ਦਾ ਕਿਹਨੇ ਵਾਸਤੇ ਪੈਦਾ ਕੀਤਾ ਪਰਮੇਸ਼ਰ পাগল ਸੀ ਇਹ ਤਾਂ ਤੁਸੀਂ পাগল ਹੋਇਆ ਪਰਮੇਸ਼ਰ পাগল ਸੀ ਜਿਹਨੇ ਪੈਦਾ ਕੀਤਾ ਐਨਾ ਕੁਛ ਖਾਣ ਨੂੰ ਅਪਾਰ ਕਿਤੇ ਤੀਰਥਾਂ ਦੇ ਉੱਤੇ ਜਾ ਕੇ ਦਾਨ ਕਰਦੇ ਕਿੰਨਾ અપਹੋਰ ਦਾਨ ਕਰਦੇ ਉਹ ਕੀ ਬੱਲੇ ਬੱਲੇ ਰਾਜੇ ਦੇ ਲੋ ਜਾਸ ਗੜਦਨ ਜਾਸ ਗੜਾ ਹੋ ਫੋਕਾ ਜਾਸ ਕੋ ਸੁਬਦਾ ਰੰਗ ਦਾ ਜਿਹੜਾ ਇੱਥੇ ਸੰਸਾਰੀ ਜਾਸ ਉਹ ਦਰਗਾਹ ਦਾ ਜਾਸ ਨਹੀਂ ਹੈ ਦਰਗਾਹ ਜਨ ਕੀ ਬੜਾ ਬਣਦਾ ਹੰਕਾਰ ਜਿਹੜਾ ਹੁੰਦਾ ਹੈ ਤੈਸਾ ਮਾਨ ਤੈਸਾ ਅੱਬਾ ਹੰਕਾਰ ਜ ਬਦਲ ਜਾਂਦਾ ਬੜਾ ਬਣਣਾ ਜਿਹੜਾ ਹੈਗਾ ਨਾ ਰੱਬ ਦਾ ਸ਼ਰੀਕ ਬਣਨਾ ਬੜਾ ਬਣਨਾ ਤਕੂ ਜਿਹੜਾ ਬਣਦਾ ਬੜਾ ਬਣਦਾ ਬਣਦਾ ਬਣਦਾ ਆਖਰ ਕੀ ਬਣ ਜਾਂਦਾ ਹੈ ਵੀ ਮਾਇਆ ਪਰਮਾ ਮਾਇਆ ਪਰਮੇਸ਼ਰ ਰੱਬ ਕੋਈ ਗੁਰੂ ਮਾਇਆ ਹੱਬ ਕੋشن ਇਹ ਤਾਂ ਸੀੜੀ ਦੂਰ ਪਾਸੇ ਨੂੰ ਜਾਂਦੀ ਹੈ ਫਿਰ ਸ਼ਰੀਕ ਬਣਨ ਵਾਲੀ ਹੈ ਛੋਟਾ ਬਣਨ ਵਾਲੀ ਕੀ ਹੈ ਛੋਟਾ ਬਣਨਾ ਵਿਟਾ ਦੇ ਆਪਣੀ ਹਸਤੀ ਕੋ ਅਗਰ ਕੁਝ ਮਰਤਬਾ ਚਾਹੀਏ ਕਿ ਦਾਣਾ ਖਾਕ ਬਿਲਕੁਲ ਬਿਲਕੁਲ ਕਾਹ ਕੀ ਦਾਣਾ ਮਿਲਦਾ ਕਿੰਨੇ ਦਾਣੇ ਪੈਦਾ ਹੁੰਦੇ ਨੇ ਜੋ ਜੇ ਕੋ ਭਗਤ ਆਪਣੇ ਆਪ ਨੂੰ ਉਠਾਉਂਦਾ ਕਿੰਨੇ ਭਗਤ ਪੈਦਾ ਕਰ ਦਿੰਦਾ ਕਬੀਰ ਨੇ ਆਪਣੇ ਆਪ ਨੂੰ ਮਿਠਾਇਆ ਲੇਖ ਗੁਰਬਾਣੀ ਦੇ ਦਿੱਤੀ ਕਿੰਨੇ ਲੋਕਾਂ ਨੇ ਫਾਇਦਾ ਉਠਾਇਆ ਕਿੰਨੇ ਨੇ ਲਾਭ ਉਠਾਇਆ ਤੇਨ ਕੀ ਬਰਕਤ ਖਾਇਆ ਅਸੰਖ ਕਰੋੜ ਅਸੰਖ ਕਰੋੜ ਜਾ ਸਭ ਜੀ ਜਿਹਨੇ ਆਪਣੇ ਆਪ ਨੂੰ ਮਟਾਇਆ ਨੇ ਕੋ ਦ ਤਸੰਸਾਰ ਨੂੰ ਉਨ ਦੇ ਤੇ ਸੰਸਾਰ ਖੜਾ ਉਹਨਾਂ ਦੇ ਸਰਤੇ ਧਰਮ ਚੱਲ ਲਿਆਗੇ ਸਮੇ ਸਮੇਂ ਸਰ ਉਹਦੇ ਰਹਿਦੇ ਨੇ ਹਰ ਯੁਗ ਯੁਗ ਭਗਤ ਪਾਇਆ ਪਾਇਆ ਭਗਤੇ ਪਾਇਿਆ ਨ ਗੁਰੂ ਪਾਇਕ ਦਿਨ ਲਿਖਿਆ ਹੋਇਆ ਪਤਾ ਨਹੀਂ ਕਿ ਤੋਂ ਸੋਵਰਾ ਆ ਗਿਆ ਗੁਰੂ ਦਾ ਗੁਰੂ ਦਾ ਆਪੇ ਜਿਹਨੇ ਬਾਇਆ ਗੁਰੂ ਉਹ ਹੈ ਉਹ ਪਉਣ ਵਾਲਾ ਗੁਰੂ ਹੈ ਜਿਹੜੇ ਬਾਇਏ ਨੇ ਭਗਤ ਨੇ ਕੀਤੇ ਬਗਦੋ ਉਹ ਗੁਰੂ ਦੇ ਹੀ ਭਗਤ ਨੇ ਪੈਜ ਰੱਖਦਾ ਆ ਆਰਾਮ ਰਾਜ ਪੈਜ ਰੱਖਣ ਦੀ ਵੀ ਗੱਲ ਹੈ ਗੁਰਬਾਣੀ ਕਰਦੀ ਹੈ ਵੇਰੀ ਪੈਜ ਰੱਖੋ ਗੁਰੂ ਅਮਰਦਾਸ ਜੀ ਕਹਿੰਦੇ ਨੇ ਸਮਝ ਆਈ ਗੋਲਡ ਨਾਲ ਕੋਈ ਕਹਿਣਾ ਨਹੀਂ ਉਹ ਹੋਰ ਤਰੀਕਾ ਨਾਲ ਕਹਿਦੇ ਨੇ ਡੋਲਣ ਤੇ ਰੱਖੋ ਪ੍ਰਭੂ ਉਹ ਵੀ ਪੈ ਜੇ ਹਾਂਜੀ ਕਹੂੰ ਜਗ ਕਰਮ ਉਦਾਰ ਕਹੂੰ ਜਗ ਕਰਮ ਉਦਾਰ ਕਿਤੇ ਜਗ ਕਰਦੇ ਨੇ ਜਗ ਕਰਨਾ ਮੇ ਉਦਾਰ ਕਬ ਕਿਹੜਾ ਆਉਂਦਾ ਛੱਕੀ ਜਾਓ ਬਈ ਛੱਕੀ ਜਾਓ ਜਿਹੜਾ ਹੁੰਦਾ ਉਦਾਰ ਕਬ ਜ਼ਰੂਰ ਹੈ ਕਬਜਦਾ ਵਾਲਾ ਦੀ ਹੈ ਹਜ਼ਾਰ ਹੈ ਪਰ ਉਹ ਗੱਲ ਨਹੀਂ ਪ੍ਰਾਪਤ ਹੁੰਦੀ ਜਿਹੜੀ ਭਗਤੀ ਹੈ ਜੇ ਮਨ ਮੁਕਤਵਸਾਰੀ ਪ੍ਰਾਪਤ ਹੁੰਦੀ ਲੋ ਚੀਜ਼ ਕੋਹੁ ਅਗਨ ਹੋਤਰ ਅਨੂਪ ਕਾਈ ਅਗਨ ਹੋ ਤਰ ਅਗਨ ਦੇ ਵਿੱਚ ਸੁਭਗਰੀ ਬਹੁਤ ਕੀਮਤੀ ਉਹ ਹਵਨ ਕਰਦੇ ਨੇ ਘੋ ਬਗਾਇਆ ਕੇ ਸਰਵਗੈਰਾ ਇਹ ਜੋ ਕਿਵਤੀ ਜੀਗਰਨ ਦੇ ਵਿੱਚ ਪਾਈ ਜਾਂਦੇ ਨੇ ਕਹੂੰ ਨਿਆਏ ਰਾਜ ਵਿਭੂਤ ਕਿਤੇ ਨਾਇ ਸ਼ਾਸਤਰ ਪੜਦੇ ਨੇ ਰਾਜ ਕਰਨ ਵਾਸਤੇ ਜਿਹੜਾ ਰਾਜ ਕਰਨਾ ਹੁੰਦਾ ਉਹਨੂੰ ਸਾਫ ਕਰਨਾ ਇਤਸਾਬ ਪੜਨਾ ਪੈਂਦਾ ਉਹ ਇਹੀ ਤਾਂ ਪੜਾ ਰਿਹਾ ਸੀ ਉਹਨੂੰ ਪਰ ਲਾਲ ਨੂੰ ਇਹੀ ਬਣਾਉਣ ਲੱਗੇ ਸੀ ਬਾਅਦ ਚ ਲੈ ਕਹਿੰਦਾ ਮੈਂ ਆੜ ਜਾ ਕਹਿੰਦਾ ਮੈਨੂੰ ਪੜਨਾ ਹੈ ਮੁਝੇ ਕਾਇ ਪੜਾਓ ਆਲਜਾਲ ਆਲਜਾਲ ਕਹਿੰਦੇ ਵੀ ਰਾਜਾ ਬਣਨੇ ਹੋੜੇ ਰਾਜਾ ਦਾ ਉਲੜੇ ਉਹਨੇ ਨੂੰ ਹੀ ਪੜਾਈਏ ਪਹਿਲਾਂ ਪੜਾਤਾ ਰੁਭ ਗਿਆ ਉਹ ਕਹਿੰਦਾ ਬੰਨੂ ਤਾਂ ਉਹੀ ਪੜਾਓ ਜਿਹੜਾ ਪਹਿਲਾਂ ਪੜਾਇਆ ਮੇਰੀ ਪਟਿਆ ਲਿਖ ਦੋ ਹਾਂ ਮੇਰੀ ਪਟਿਆ ਲਿਖ ਦੋ ਸ੍ਰੀ ਗੋਪਾਲ ਸ੍ਰੀ ਗੋਪਾਲ ਵਾਲੀ ਗੱਲ ਦੋ ਇਹਦੀ ਮੈਂ ਪੜਨੇ ਪਰ ਪੇਪਾਰ ਫਸਣਾ ਹੈਗਾ ਉਹ ਨੂੰ ਉਹ ਰਾਜਾ ਬਣੋੜ ਲਾ ਕੇ ਤੁਸੀਂ ਮੈਂ ਰਾਜ ਤਾਂ ਨਰਸਨ ਮੁਝਾੜ ਇਹ ਪੁੱਠਾ ਪੁੱਠੀ ਪੜਾਈ ਹੈ ਪਹਿਲਾਂ ਜਿਹੜੀ ਮੈਨੂੰ ਪੜ੍ਹਾਤੀ ਬਚਪਨ ਚ ਉਹੀ ਪੜਾਈ ਗੱਲ ਪੜਾਓ ਮੇਰੀ ਬਾਡੀ ਇਹ ਵੀ ਪੜਾਈ ਪੜਾ ਨੇ ਪੜ੍ਹੀ ਇਹ ਤਾਂ ਫਸਾਉਣ ਵਾਲੀ ਪੜਾਈ ਹੈ ਅਸੀਂ ਇਹੀ ਪੜਾਉਂਦੇ ਕਾਲਜਾਂ ਦੇ ਵਿੱਚ ਪੜਾਉਂਦੇ ਨਹੀਂ ਆਏ ਜਿਹੜੇ ਪੀਸੀ ਐਸ ਬਣਦੇ ਨੇ ਐਸ ਐਸ ਅਫਸਰ ਬਣਦੇ ਨੇ ਉਹ ਕੀ ਨੇ ਇਹੀ ਪੜਾਈ ਹੈ ਔਰ ਕੀ ਹੈ ਤਾਂ ਇਹ ਸਾਰੇ ਬਾੜੇ ਬਾੜੇ ਸੰਤਾਂ ਦੇ ਪੈਰੀਂ ਪੈ ਕੇ ਦੁਨੀਆ ਆ ਕੇ ਜਿਹਨਾਂ ਨੂੰ ਕੁਝ ਵੀ ਨਹੀਂ ਪਤਾ ਉਹਨਾਂ ਸੰਤ ਬੇਫੂਕ ਬਣਾ ਦਿੰਦੇ ਨੇ ਨਾ ਉਹਨਾਂ ਸੰਤਾਂ ਦੇ ਮਗਰੇ ਕੱਖ ਵੀ ਨਹੀਂ ਪਤਾ ਉਹਨਾਂ ਜੋਸ਼ੀਓ ਸਾਰੇ ਫਰੋਡੀ ਨੇ ਇਹ ਢਾਲ ਜਾਲ ਹੈ ਕਹੂੰ ਨਿਆਇ ਰਾਜ ਵਿਭੂਤ ਨਿਆਇ ਕਾਨੂੰਨ ਪੜਨਾ ਵਿਪੂਤ ਵਿਪੂਤ ਵਿਪੂਤ ਇਹ ਕਹਿਆ ਨਾ ਗਿਆਨ ਉਹ ਗਿਆਨ ਗਿਆਨਿਕ ਵਸਤੂ ਹੈ ਗਿਆਰਗੇ ਵਿਪੂਤ ਨਹੀਂ ਹੈ ਪਦਾਰਥ ਹੈ ਗਿਆਨ ਗਿਆਨ ਪਦਾਰਥ ਪਾ ਨਾ ਪਦਾਰਥ ਪਾ ਕੇ ਕਬੀਰਾ ਗਾਣਾ ਖੋਲ ਵਿਪੂਤ ਵਿਪੂਤ ਵਸਤੂ ਨੂੰ ਕਹਿੰਦੇ ਰਾਜ ਕਰਨ ਦਾ ਜਿਹੜਾ ਹੈ ਨਾ ਕਾਨੂੰਨ ਲਿਆਏ ਸਾਫ ਕਰਨ ਦਾ ਲਿਆਏ ਹੁਣ ਸੁਪਰੀਮ ਕੋਰਟਾਂ ਨੇ ਜੱਜ ਪੜੇ ਨਹੀਂ ਹੋਏ ਕਿ ਕੁਆਲੀਫਾਈਡ ਨਹੀਂ ਹੋ ਪਰ ਧਾਰਮਿਕ ਦੌਰ ਤੇ ਵਿਚਾਰੇ ਕੋ ਕੋ ਪੜਾਈ ਨਹੀਂ ਪੜੀ ਉਹਨਾਂ ਨੇ ਪੜਾਈ ਹੈ ਨਾ ਉਹ ਵੀ ਪੜਾਈ ਹੈ ਪਰ ਜੇ ਆ ਪੜ ਲੈਂਦੇ ਹੋ ਜੇ ਦੋਨੋਂ ਅਰਦਬਾਨ ਬਸ ਗਏ ਸੀ ਉਹ ਜਿਵੇਂ ਉਹ ਸਿਆਣੇ ਨੇ ਜੇ ਆ ਪੜਾਈ ਪੜ ਲੈਂਦੇ ਐਸੇ ਜਲ ਵਿੱਚ ਗਏ ਬੁਖਤ ਹੋ ਜਾਂਦੇ ਉਹ ਲੋਕ ਬਸ ਦੂਏ ਪਾਸੇ ਲੰਦੇ ਕਹੂੰ ਸ਼ਾਸਤਰ ਸਮਰਤੀ ਰੀਤ ਉਹ ਸ਼ਾਸਤਰ ਸੁਮਰਤੀ ਰੀਤ ਕਿਤੇ ਸ਼ਾਸਤਰ ਸੁਮਰਤੀ ਰੀਤ ਨੂੰ ਸਥਾਪਿਤ ਕਰ ਰਹੇ ਨੇ ਬਈ ਨਾਈ ਭਾਈ ਆਹ ਰੀਤੀ ਚਲਉਣੀ ਆਪਾਂ ਜਿਵੇਂ ਸਾਡੇ ਬਰਿਆਦਾ ਚਲਾ ਰਹੇ ਨੇ ਬਰਿਆਦਾ ਕੀ ਹੈ ਇਹ ਸ਼ਾਸਤਰ ਸੁਮਰਤੀ ਰੀਤ ਹੈ ਬਰਿਆਦਾ ਹੋਰ ਕੁਝ ਨਹੀਂ ਹੈ ਸ਼ਾਸਤਰ ਉਹਦਾ ਆਦਮੀ ਦਾ ਬਣਾਇਆ ਹੋਇਆ ਇਹਦੀ ਪੋਥੀ ਹੁੰਦੀ ਆ ਨਾ ਇਹ ਪਰਮੇਸ਼ਰ ਦੀ ਬਣਾਈ ਹੁੰਦੀ ਹੈ ਜਿਹੜਾ ਗੁਰਬਾਣੀ ਦਾ ਗ੍ਰੰਥ ਹੈ ਉਹਦਾ ਨਾ ਪੋਥੀ ਹੁੰਦੀ ਹੈ ਗ੍ਰੰਥ ਦੂਜੇ ਵੀ ਸਾਰੇ ਇਸ ਕਰਕੇ ਨੂੰ ਪੋਥੀ ਉਹ ਕਿਹਾ ਹੈ ਉਹ ਜ਼ਬਰਦਸਤ ਬਹਿਤ ਪ੍ਰਾਨ ਨੂੰ ਪੋਥੀ ਕਹਿਣ ਲੱਗੇ ਤੇ ਜਾਣ ਕੇ ਸਭਾਂ ਗ੍ਰੰਥ ਛੱਡ ਕੇ ਕੋਕਾ ਪੋਥੀ ਧਰਮ ਪੁਸਤਕ ਦਾ ਜਿਹੜੀ ਆ ਨਾ ਪਰਮ ਗਿਆਨ ਦੇ ਗ੍ਰੰਥ ਨੇ ਉਹੋ ਥੀ ਕਹਿੰਦੇ ਸੀ ਉਹ ਉਹਨੂੰ ਵੀ ਪੜ੍ਹਨ ਕਹਿਣ ਲੱਗੇ ਸਾਡੀਆਂ ਵੀ ਪੋਥੀਆਂ ਤਾਂ ਇਹ ਕਹਿੰਦਾ ਸਮਰਤ ਬੇਸ ਪੁਰਾਣ ਪੁਕਾਰਣ ਪੋਥੀਆਂ ਉਹਨਾਂ ਨੂੰ ਪੋਥੀਆਂ ਕਹਿ ਰਹੇ ਨੇ ਨਾ ਪੁਕਾਰ ਰਹੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਤੁਸੀਂ ਪੋਥੀਆਂ ਪੁਕਾਰਣਾ ਸ਼ੁਰੂ ਕਰਤਾ ਵੀ ਪੋਥੀਆਂ ਗਿਆਨ ਵਨਾਂ ਸਭ ਕੋੜ ਗਾਲੀਓਂ ਛੀਆਂ ਨਾ ਬਿਨਾ ਸਭ ਕੋੜ ਨਾਮ ਨਹੀਂ ਆਇਆ ਨਾ ਜੀ ਨਾਮ ਜੀ ਤਾਂ ਪੋਥੀ ਹੁੰਦੀ ਹੈ ਸੰਭਰਤ ਵੇਦ ਪੁਰਾਨ ਪੁਕਾਣ ਪੋਥੀਆਂ ਨ ਪੋਥੀਆਂ ਪਕਾੜ ਲੱਗੇ ਹੋਏ ਨੇ ਇਹਨਾਂ ਪੋਥੀਆਂ ਕਹਿਣਾ ਸ਼ੁਰੂ ਕਰਤਾ ਇਹਨਾਂ ਨੇ ਕਬੀਰ ਨੇ ਕਿਹਾ ਦਾ ਕਮਰਬੰਦ ਪੋਥੀ ਇਹ ਪੋਥੀ ਇਹਦਾ ਹੀ ਨੋ ਜਿਹੜਾ ਜਾਂ ਤਾਂ ਵੇਦ ਵੇਦ ਵਿੱਚ ਵੀ ਸਾਰੇ ਬਾੜ ਲੈਦੇ ਨੂੰ ਇਹਨਾਂ ਦੀ ਗ੍ਰੰਥ ਚਾਰ ਪ੍ਰਕਾਰ ਦਾ ਇਹਨਾਂ ਨੇ ਪੋਥੀ ਰਖ ਲਿਆ ਨੋ ਉਹਦੀ ਪਰਮੇਸ਼ਰ ਦਾ ਥਾਂ ਉਹ ਵੀ ਬੋਥੀ ਕਹਿਣ ਲੱਗੇ ਸਾਡੇ ਪੋਥੀਆਂ ਤਨਨ ਕਹਾ ਇਹਨਾਂ ਨੂੰ ਪੋਥੀਆਂ ਕਹਿਣ ਲੱਗੇ ਤੁਸੀਂ ਇਹਨਾਂ ਦਾ ਨਾਮ ਕਿੱਥੇ ਇਹ ਤਾਂ ਝੂਠ ਹੈ ਜ਼ਰਾ ਨਾਂ ਬਿਨਾ ਸਭ ਕੂੜ ਕਾਲੀਆਂ ਉਹ ਛੀਆਂ ਗੱਲਾਂ ਨੇ ਉਹ ਛੀਆਂ ਗੱਲਾਂ ਯਾਰ ਰਵਾਂਡ ਦੀ ਕਥਾ ਹੋਰ ਕੀ ਹੈ ਸਾਡੇ ਜਿਹੜੀ ਰਵਾਂਡ ਦੀ ਕਥਾ ਸਾਡਾ ਰਾਮ ਹੋਰ ਹੈ ਸਾਡੇ ਕੋਲ ਨਹੀਂ ਹੈਗਾ ਸਾਡੇ ਆਰਾਮ ਨੇ ਸਾਡੀ ਰਚਨਾ ਬਣਾਈ ਹੈ। ਕਲਾ ਸੇ ਤੂੰ ਨਹੀਂ ਬਣਾਇਆ ਉਹਨੇ। ਇਹਨਾਂ ਨੇ ਕੋੜਾ ਬਣਾਇਆ। ਆਹ। ਕਹੂੰ ਬੇਦ ਸੇ ਉਹ ਬਪਰੀਤ। ਨਾਲੇ ਜਿਹੜਾ ਸਾਡਾ ਆਰਾਮ ਆ ਉਹਦੇ ਤਾਂ ਸਾਰੇ ਹੀ ਨੇ ਔਲਾਦ। ਕਾ ਕਬੀਰ ਤੂੰ ਰਾਮ ਕੀ ਅਣਸ? ਕਬੀਰ ਕਹਿ ਰਿਹਾ ਮੈਂ ਰਾਮ ਕੀ ਅਣਸ। ਤੇ ਦੱਸੋ ਪਾਜਾ ਨੇ ਰਾਮ ਕਹਤਾ ਮੈਂ ਲਵਕੋਸਾ ਲਵਕੋਸਾ ਰਾਮ ਦੀ ਅਣਸ ਨੂੰ ਨਹੀਂ ਨੋ ਹੋਇਆ ਇਹਨਾਂ ਰੱਖਿਆ। ਕਬੀਰ ਵੀ ਕਹਿ ਰਿਹਾ ਮੈਂ ਵੀ ਲਵ ਕੋ ਦਿਆ ਲਾਦ ਮੈਂ ਵੀ ਲਵ ਕੋ ਤੇ ਰਾਮਕੀ ਅਨਸਾਦ ਕਹਿੰਦਾ ਸਾਰੇ ਰਾਮਕੀ ਅਨਸ ਨੇ ਕੀ ਜਾਣਣ ਵੀ ਕੀ ਗੱਲ ਹੈ ਉੱਥੇ ਕਈ ਹੋ ਗਈ ਰਾਮਕੀ ਅਨਸ ਹੈ ਕੌਣ ਜਿਹੜਾ ਰਾਮਕੀ ਅਨਸ ਨਹੀਂ ਰਾਮਕੀ ਅਨਸ ਹੋਊ ਫਿਰ ਉਹ ਰੌਡਾ ਬਣਾ ਹੈ ਕੌਣ ਰਚਨਾ ਹੀ RAM ਰੇ ਬੜਾਈਏ ਸਾਧੂ ਰਾਮਕੀ ਅਨਸ ਤੇ ਮਨਾ ਤਾਂ ਕੋਈ ਵੀ ਨਹੀਂ ਹੈ ਜੇ ਕੋਈ ਕਹੇ ਮੈਂ ਹਰਾਮ ਗਿਆਨ ਤੇ ਨਹੀਂ ਮੈਂ ਹਰਾਮ ਗਿਆਨ ਸਹੂਗਾ ਉਹ ਦੱਸਿਆ ਫਿਰ ਕਿਹਦੀ ਅਣਸਬ ਗੱਲ ਆਤਮਾ ਦੀ ਹੈ ਸ਼ਰੀਰ ਦੀ ਨੀ ਹੈ ਇੱਥੇ ਗੁਰਬਾਣੀ ਸ਼ਰੀਰ ਦੇ ਵਾਸਤੇ ਕੋਈ ਜਗ੍ਹਾ ਨਹੀਂ ਤੇ ਮੋ ਵਿਦਵਾਨ ਖੜੇ ਨੇ ਸ਼ਰੀਰ ਤੇ ਉਹ ਤਾਂ ਆਸਮਾਨ ਦੀ ਗੱਲ ਕਰ ਰਹੇ ਨੇ ਤੁਸੀਂ ਸ਼ਰੀਰ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਕਰਦੇ ਰਹੋ ਇਹ ਤੁਹਾਨੂੰ ਦਿੱਤੀ ਮਾਇਆ ਮਾਇਆ ਵਿਦਵਾਨ ਮਾਇਆ ਤੋਂ ਗਾਹ ਹੀ ਨਹੀਂ ਸਕਦੇ ਰਾਂ ਉਹ ਬੋਲਣ ਵਾਲਾ ਜਿਹੜਾ ਕਹਿੰਦਾ ਮੈਂ ਅਣਸਾ ਉਹਦੀ ਗੱਲ ਕਰੋ ਜੇ ਦੀ ਵੀ ਅਣਸ ਨਹੀਂ ਹੈ ਉਹਦਾ ਅਣਸ ਕੀ ਹੈ ਕੋਈ ਮਿੱਟੀ ਦਾ ਨਾ ਬਣਸ ਹੁੰਦਾ ਨਾ ਅਣਸ ਹੁੰਦਾ ਕੁਝ ਨਹੀਂ ਹੁੰਦਾ ਇਹ ਮਿੱਟੀ ਹੈ ਮਾਟੀ ਮਾਟੀ ਹੋਈ ਐਕਟੀਵਿਟੀ ਐ ਇਹ ਘਬਰਾ ਕੀ ਇਹਨਾਂ ਦਾ ਨਗਾ ਇਤਰਾਮ ਕੀ ਐ ਇਸੇ ਗੱਲ ਦਾ ਰੌਣਾ ਜੀ ਤੁਸੀਂ ਜੀ ਹਿੰਦੂ ਹੋ இந்து ਦਾ ਕੁ ਵਿਚਾਰਦਾ ਦਾ ਰੌਣਾ ਸਿੱਖਿਕ ਵਿਚਾਰਦਾ ਦਾ ਰੌਣਾ ਇਸਾਈਿਕ ਵਿਚਾਰਦਾ ਦਾ ਰੌਣਾ ਮੁਸਲਮਾਨਿਕ ਵਿਚਾਰਦਾ ਦਾ ਰੌਣਾ ਜਿਹੜੇ ਮੁਸਲਮਾਨ ਹੋਏ ਨੇ ਜਿੱਦੂ ਅੱਜ ਉਹਨਾਂ ਨੂੰ ਕੋ ਹੋਏ ਹਿੰਦੂਰੇ ਉਹ ਵੀ ਉਹੜੇ ਵਿਚਾਂ ਹੋਏ ਨੇ ਸਾਡੇ ਹੀ ਬੋਤੀ ਨੇ ਹੋ ਸਾਡੇ ਵਿੱਚੋਂ ਹੋਏ ਨੇ ਹਿੰਦੁਸਤਾਨ ਚ ਹੋਏ ਨੇ ਮੁਸਲਮਾਨ ਈਸਾਈ ਵੀ ਹੋਏ ਨੇ ਹੁਣ ਮੁਸਲਮਾਨਾਂ ਦੀ ਤਾਦਾਤ ਨਾਲ ਸਿੱਖਾਂ ਨੂੰ ਕਿਤੇ ਜ਼ਿਆਦਾ ਨੇ ਹਿੰਦੁਸਤਾਨ ਚ ਹੋਏ ਨੇ ਉਹਨਾਂ ਨੂੰ ਨਹੀਂ ਕਹਿੰਦੇ ਵੀ ਇਹ ਦੂਰੇ ਉਹਨਾਂ ਨੂੰ ਕਹਿੰਦੇ ਇਹਨਾਂ ਨੂੰ ਕਿਉਂ ਕਹਿੰਣਾ ਨੇ ਨੋ ਹੂੰ ਉਹਨਾਂ ਨੂੰ ਨਹੀਂ ਕਹਿੰਦੇ ਉਹਨਾਂ ਨੇ ਬਸੀਰੂ ਢੋਲਦੇ ਨੇ ਕਿਉਂ ਬਈ ਉਹ ਉਹ ਭਾਈ ਦੀ ਹਣ ਬੱਚੇ ਨਹੀਂ ਹੋਏ ਹੁਣ ਜੇ ਖੂਨ ਵਗਰ ਜਾਂਦਾ ਖੋਲਦਾ ਥੋੜਾ ਹੀ ਆ ਉਹ ਨਾ ਜਿਉ ਉਹ ਰਿਹਣਪੁਰ ਸਾਈਬ ਨਹੀਂ ਹਣ ਰਾਸਾਈਆਂ ਨੂੰ ਤਾਂ ਕਰ ਲੈਂਦੇ ਨੇ ਫੈਲ ਲੱਤਾਂ ਲੱਤਾਂ ਗੋਲਿਆਂ ਤੱਕ ਧੋਗੇ ਮੁਸਲਮਾਨ ਨੂੰ ਨਿਕਲੋ ਤੇ ਇਹ ਗੋਖਾ ਜੋ ਕਹਿਣਾ ਇਹ ਪਖੰਡਵਾ ਦਾ ਸਾਰਾ ਵਿਦਵਾਨਾਂ ਦੇ ਲੈਵਲ ਦੀਆਂ ਗੱਲਾਂ ਨੇ ਇਹਨਾਂ ਨੂੰ ਕੀ ਬਧਰਮ ਕੀ ਹੁੰਦਾ ਹੈ ਤਾਂ ਵਿਦਵਾਨਾਂ ਦੇ ਲਾਡੋਲੀ ਗੱਲਾਂ ਨੇ 70 ਰੋਟੀਆਂ ਖਾਗਦੇ ਉਹਦੇ ਨੇ 70 ਝਗੜੇ ਪਾਉਂਦੇ ਨੇ ਧਰਮ ਤੇ ਇਹਨਾਂ ਨੇ ਕੀ ਲੈਣ ਬੈੱਦ ਦੇ ਵਿਚਾਰਤਾ ਸਿੱਖੀ ਪੜਨਤ ਨੇ ਬਾਟ ਪਾੜ ਕੇ ਸਿੱਧੂ ਬਣ ਗਏ ਸੀ ਤਾਂ ਗਏ ਹਿੰਦੂਆਂ ਉਹ ਸੋਨਾ ਛੱਡ ਕੇ ਪਿੱਤਲ ਲੈ ਲਿਆ ਤੂੰ ਹੀਰਾ ਛੱਡ ਕੇ ਕੌਡੀ ਨੂੰ ਮੁਠੀ ਚ ਫੜ ਲਿਆ ਤੋ ਇਹਨਾਂ ਨੇ ਤਾਂ ਹੋਰ ਕੀ ਹੈ ਤੇਰੇ ਕੋ ਬੇਦਾਤੀ ਛੱਡ ਕੇ ਸਿਮਰਤੀਆਂ ਨੂੰ ਲੈ ਲਿਆ ਖੋਟੇ ਸਿੱਕੇ ਤੂੰ ਅੰਨਾ ਨਹੀਂ ਤਾਂ ਹੋਰ ਕੀ ਹੈ ਜਿਹਦੇ ਘਰ ਸੱਚ ਹੋਵੇ ਉਹ ਝੂਠ ਨੂੰ ਲੈ ਲਵੇ ਤਾਂ ਨਾ ਨਹੀਂ ਤਾਂ ਹੋਰ ਕੀ ਹੈ ਆਪਣਿਆਂ ਨੂੰ ਅੰਨਾ ਕਿਹਾ ਨਾਨਕ ਨੇ ਉਹ ਕਹਿੰਦੇ ਅੱਡੂੜੀ ਕਿਹਾ ਅੱਡੇ ਨਾ ਕਹਿਣਾ ਹੋਰੇ ਨੂੰ ਕੀ ਕਹਦਾ ਤੁਹਾਡੇ ਕੋ ਬੇਦ ਪਿਆ ਹੈ ਬ੍ਰह्म ਗਿਆਨ ਪਿਆ ਨੂੰ ਛੱਡ ਕੇ ਤਤ ਗਿਆਨ ਨੂੰ ਹੱਲੇ ਹੀ ਬੈਠੇ ਹੋ ਤੁਸੀਂ ਸੋ ਤੂੰ ਜੀ ਇਹ ਜੀ ਬੋ ਜੀ ਕੀ ਲੈਣਾ ਤੁਸੀਂ ਇੱਥੇ ਕੀ ਕਰੂਗਾ ਤੁਹਾਡਾ ਇਹ ਉਹ ਪਵਿਸਾਂਗਰ ਨਹੀਂ ਪਾਰ ਕਰ ਸਕਦੇ ਇਹਨੂੰ ਗੱਲਾਂ ਨੂੰ ਤੁਸੀਂ ਪਵਿਸਾਂਗਰ ਪਾਰ ਕਰਨਾ ਤਾਂ ਕਰਮ ਤੇ ਆਓ ਤੁਸੀਂ ਉਹ ਹੋਰ ਗੱਲ ਜੇ ਤੁਹਾਡਾ ਫਸਲਾ ਹੀ ਦੀ ਪਵਿਸਾਂਗਰ ਪਾਰ ਕਰਨਾ ਫੇ ਰੋਲਾ ਪਾਈ ਜਾਓ ਫੇ ਤੁਸੀਂ ਧਰਮ ਕਹਦਾ ਧਰਮ ਫੇ ਰਖਦਾ ਰੇ ਗਏ ਪਵਿਸਾਂਗਰ ਪਾਰ ਨਹੀਂ ਹੁੰਦੇ ਫੇ ਧਰਮ ਨਹੀਂ ਫੇ ਤੜਾ ਫੇ ਧਰਮ ਨਹੀਂ ਫੇ ਤੜਾ ਤੜੇ ਦਾ ਸੰਸਾਰ ਲੜਾਈ ਕਰਾਉਣ ਵਾਲੇ ਟੜੇ ਹੁੰਦੇ ਨੇ ਲਾੜ ਵਾਲੇ ਧਰਮ ਦੇ ਨੋਂ ਤੇ ਲਾੜ ਵਾਲੇ ਧੜੇ ਹੁੰਦੇ ਨੇ ਧਰਮ ਨਹੀਂ ਹੁੰਦਾ ਧਰਮ ਦਾ ਧੜਾ ਸੱਚ ਨਾਲ ਹੈ ਬਸ ਕਿਸੇ ਨਾਲ ਨਹੀਂ ਗਾਹੂੰ ਬੇਦਸੋਂ ਵਿਪਰੀਤ ਕਾਹੂੰ ਬੇਦਸੋਂ ਵਿਪਰੀਤ ਕਿਤੇ ਬੇਦ ਤੋਂ ਵੀ ਉਲਟ ਖੜਾ ਸਭ ਕੁਝ ਹੁਣ ਸਭ ਬੇਦ ਤੇ ਉਲਟੇ ਖੜਾ ਉਹ ਐਗਜ਼ੈਕਟਲੀ ਉਲਟ ਖੜਾ ਇਹ ਬੇਦ ਤੇ ਉਲਟ ਰਹੀ ਧਰਮ ਹੈ ਸਾਰੇ ਅਪਣੀ ਇਹ ਤਾਂ ਬੇਦਿਨ ਬਸਾਲ ਨੇ ਪਰ ਜਿੱਦੀ ਜਿੱਦੀ ਬੁੱਧੀਆਂ ਉਹ ਕਰ ਰਹੇ ਚੰਗੇ ਕੰਮ ਕਰ ਰਹੇ ਨੇ ਕਈ ਦੇਸ਼ ਦੇਸ਼ ਦੇ ਦੇਚ ਉਹ ਉਹ ਦੇਸ਼ ਫਰੰਦਾ ਮਤਲਬ ਇਹ ਦੇਸ਼ ਛਾਟਰੂਬ ਇਹਦਾ ਵੀ ਗਿਆਨ ਵੱਧਾ ਭਗਤੀ ਦਾ ਹਿੱਸਾ ਦੇ ਛਾਟਰੂਬ ਦੇਸ਼ਾਂ ਦੇਸ਼ਾਂ ਦੇ ਵਿੱਚ ਕੁਬਲਾ ਫਰਦਾ ਪਹਿਲਾ ਹਿੱਸਾ ਹੈ ਉਹ ਦੇਸ਼ ਛਾਟਰੂਬ ਕਰਦੇ ਨੇ ਦੇ ਜਾਂਦੇ ਸੰਜ ਪ੍ਰਹੁਣ ਕਰਦੇ ਫਿਰਦੇ ਕਈ ਏਕ ਠੋਰ ਸਥੰਤ ਕਈ ਇੱਕ ਜਗ੍ਹਾ ਹੀ ਟਿਕੇ ਬੈਠੇ ਨੇ ਉਹ ਨਹੀਂ ਜਾਂਦੇ ਕਿਤੇ ਕਹੂੰ ਕਰਤ ਜਲਮ ਹੈ ਜਾਪ ਅਜ ਕਿਤੇ ਕਹਿੰਦੇ ਜਲਦੇ ਵਿੱਚ ਬੈਠ ਕੇ ਜਾਪ ਕਰਦੇ ਨੇ ਇਹਨਾਂ ਨੂੰ ਕਹਿਆ ਸੀ ਕੱਚ ਮੁੱਛ ਕੱਚ ਹੂੰ ਜਿਹੜੇ ਜਲ ਚ ਬੈਠ ਕੇ ਜਾਪ ਕਰਦੇ ਨੇ ਨਾ ਇਹਨਾਂ ਨੂੰ ਕੱਚ ਮੁੱਛ ਕਿਹਾ ਸੀ ਕਹੂੰ ਸਹਿਤ ਤਨ ਪਰ ਕਈ ਸਰੀਰ ਦੇ ਉੱਤੇ ਤੋੜੀ ਦੇ ਤੋਪ ਆ ਰ ਮੇ ਵਿਚ ਬੈਠ ਗੱਲ ਵਾਲੇ ਢੋਣੀਆਂ ਲਾ ਕੇ ਸ਼ਿਵ ਜੀ ਦੇ ਜਰਾ ਢੋਣੀਆਂ ਦਾਪ ਦੇ ਸੁਭ ਜੀ ਦੇ ਚੇਲੇ ਚਾਰੇ ਪਾਸੇ ਢੋਣੀਆਂ ਲਾ ਲੈਣੀ ਉਹਨਾਂ ਤੋਪੋੜੀ ਜੇੜ ਦਾ ਵੀ ਦਾ ਹੋਣਾ ਵਿਚਾਲੇ ਸਰੀਰ ਤੇ ਹੋ ਗਰਮੀ ਨੂੰ ਬਰਦਾਸ਼ਤ ਕਰ ਲੋ ਸਹਿਜ ਤਾਨੂੰ ਕਹੂੰ ਤਾਪ ਤਨ ਸਹੰਤ ਕਹੂੰ ਸਹਿਤ ਤਾਨ ਪਰ ਤਾਪ ਹਾਂ ਕੋਈ ਤਾਪ ਢੋਣੀਆਂ ਦਾਪ ਦੇਦੇ ਕੋਈ ਸਰੀਰ ਦੇ ਉੱਤੇ ਕਸ਼ਟ ਸਹੰਦੇ ਗਰਮੀ ਦਾ ਗਰਮੀ ਦਾ ਤਾਪ ਬਰਦਾਸ਼ਤ ਕਰਦੇ ਕਹੂੰ ਬਾਸ ਬਣਾਇਂ ਕ੍ਰੰਤ ਕਈ ਜੰਗਲ ਦੇ ਵਿੱਚ ਬਾਸ ਕਰ ਲਿਆ ਕਈਆਂ ਨੇ ਵੀ ਪਿੰਡ ਦੇ ਖੜਾ ਹੀ ਨਹੀਂ ਤਨ ਸਹੰਤ ਬੜਵਾ ਜੋ ઋષਿ ਰਹਿੰਦੇ ਹੁੰਦੇ ਸੀ ਨਾ ਜੰਗਲ ਦੇ ਵਿੱਚ ਕਹੂੰ ਤਾਪ ਤਨ ਸਹੰਤ ਕਈ ਸਰੀਰ ਦੇ ਉੱਤੇ ਕਸ਼ਟ ਸਹਿੰਦੇ ਨੇ ਆਪਣੇ ਕਸ਼ਟ ਕਹੂੰ ਗ੍ਰੇਸਟ ਧਰਮ ਅਪਾਰ ਕਿਤੇ ਅਪਾਰ ਧਰਮ ਬਹੁਤਾਂ ਲੋਕ ਜਾਂ ਕ੍ਰਿਸਤਰਨ ਦੇ ਵਿੱਚ ਲੱਗੇ ਹੋਣ ਇਹ ਬਹੁਤ ਹੈ ਨੇ ਕ੍ਰਿਸਤਰਨ ਦੇ ਵਿੱਚ ਲੱਗੇ ਹੁੰਦੀ ਹੈ ਬਾਰ ਨੇ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਸਾਰਿਆਂ ਨਾਲੋਂ ਜ਼ਿਆਦਾ ਗਿਣਤੀ ਇਹਨਾਂ ਦੀ ਹੋਈ ਹੈ ਕ੍ਰਿਸਤਰਨ ਕ੍ਰਿਸਤਰਨ ਸਾਰਿਆਂ ਨਾਲੋਂ ਜ਼ਿਆਦਾ ਗਿਣਤੀ ਇਹਨਾਂ ਦੀ ਅਸਲ ਦੇ ਵਿੱਚ ਸਾਰੀਆਂ ਜਿਹੜੀਆਂ ਦੂਜੇ ਨੇ ਨਾ ਕ੍ਰਿਸਤੀਆਂ ਦੇ ਸਰਤੇ ਹੀ ਖੜੇ ਨੇ ਇੱਥੇ ਹੀ ਰੋਟੀ ਮਿਲਦੀ ਆ ਉਹਨਾਂ ਨੂੰ ਸਾਰੇ ਇਹਨਾਂ ਦੇ ਸਰਤੇ ਖੜੇ ਨੇ ਇਹਨਾਂ ਨੂੰ ਬੁਰਾ ਕਹਿੰਦੇ ਨੇ ਆਪਣੇ ਆਪ ਨੂੰ ਇਹਨਾਂ ਨੂੰ ਉੱਚਾ ਸਮਝਦੇ ਨੇ ਰੋਟੀ ਇਹਨਾਂ ਦੇ ਸਿਰ ਤੇ ਖਾਦਦੇ ਨੇ ਇਸ ਕਰਕੇ ਇਹਨਾਂ ਦੇ ਜਿਹੜੇ ਬੁੱਧੀਆ ਨਾ ਪੁੱਠੀ ਹੋਈ ਹੋਈ ਹੈ ਤਾਂ ਗਰੀਬ ਨੇ ਨਾ ਇਹਨਾਂ ਦੇ ਸਿਰ ਤੇ ਰੋਟੀ ਖਾਣੇ ਹੋ ਜਿਹਨਾਂ ਦੇ ਸਿਰ ਤੇ ਤੁਹਾਡੇ ਡੇਰੇ ਚੱਲਦੇ ਉਹਨਾਂ ਨੂੰ ਆਪਣੇ ਨਾਲ ਘਟਿਆ ਸਮਝਦੇ ਹੋ ਤੇ ਪਰਮੇਸ਼ਰ ਨੂੰ ਤੁਸੀਂ ਫਿਰ ਵਧੀਆ ਕਿਵੇਂ ਸਮਝੋਗੇ ਪਰਮੇਸ਼ਰ ਦੇ ਆਸਰੇ ਸਾਡੀ ਸ੍ਰਿਸ਼ਟੀ ਹੈ ਕਮਤ ਕਮ ਦੀਦੇ ਆਸਰੇ ਤੁਸੀਂ ਉਹਨੂੰ ਆਪਣੇ ਨਾਲ ਚੰਗਾ ਸਮਝੋ ਤੂੰ ਤਾਂ ਆਪਣੇ ਨਾਲ ਚੰਗਾ ਸਮਝਦੀ ਹੀ ਨਹੀਂ ਸਾਡੇ ਵੀ ਗੁਰਦਾਨਾਂ ਸੰਗਤ ਪੁੱਠਾ ਬੋਲਦੇ ਨਾ ਹੋ ਜਿਹੜੇ ਗੋਲਕ ਦੇ ਪੈਸੇ ਤੋਂ ਤਨਖਾਹ ਲੈਂਦੇ ਨੇ ਸਾਗਰ ਦੀ ਨਾਦਰੀ ਕਰਦੇ ਜੋ ਪੁੱਠਾ ਬੋਲਦੇ ਗੋਲਕ ਜਾਲਦੀ ਆ ਸੰਦਦੇ ਸਿਰ ਤੇ ਪੁੱਠੀ ਮਾਤਾਂ ਨੂੰ ਇਹ ਤਾਂ ពੁੱਠੀ ਵੱਤ ਕਰ ਦਿੰਦਾ। ਇਹ ਵਰਤਾਂ ਨਹੀਂ ਰਹਿਣਦਾ। ਵੱਤ ਪੁੱਠੀ ਹੋ ਜਾਂਦੀ ਹੁੰਦੀ। ਸਾਰਿਆਂ ਦੀ ਉਹ ਜਾਂਦੀ ਹੁੰਦੀ ਹੈ। ਇੱਥੇ ਕਰਕੇ ਗੁਰੂ ਸਾਹਿਬ ਨੇ ਕਹਿ ਦਿੱਸਾਂ ਕੀ ਹੈ? ਇਹ ਤੋਂ ਬਚ ਕੇ ਰਹੋ। ਹਾਂਜੀ। ਕਹੂੰ ਰਾਜ ਉਦਾਰ, ਕਹੂੰ ਰਾਜ ਉਦਾਰ। ਕਈ ਐਸੇ ਰਾਜ ਕਰਦੇ ਨੇ। ਉਦਾਰ ਰੀਤੀ ਬਹੁਤ ਹੀ ਘੱਟ। ਕੈਸਰਾਡ ਕਈ ਐਸੇ ਰਾਜੇ ਸੀ ਲੈਂਦੇ ਦਾ ਸੀਗੇ ਉਹ ਕਹਿੰਦੇ ਨੇ ਪੁੱਠੀ ਚਾਟੀ ਜਿਹੜੀ ਫਸਲ ਹੋ ਜਾਂਦੀ ਹੈ ਨਾ ਕਿਸੇ ਇਹ ਤਾਂ ਬਹੁਤ ਥੋੜੀ ਦੇਰ ਹੋਈ ਦਿੱਤੀ ਰੁਜ਼ਵੀਨ ਟੋਟਰ ਦਿੱਤੀ ਸੀ ਜਮੀਨ ਬਾਕੀ ਸਰਕਾਰ ਅੰਡੀ ਹੁੰਦੀ ਹੈ ਜਮੀਨ ਦੀ ਸਾਰੀ ਹਮੇਸ਼ਾ ਅੜਾ ਸੀ ਲਗਾਉਂਦੇ ਨੇ ਨਾ ਹੁਣ ਵੀ ਢਾਲ ਉਹ ਸਾਬਤ ਕਰਦਾ ਗਏ ਸਰਕਾਰ ਬਗਲ ਦੀ ਉਹ ਕਹ ਲੈ ਲੱਗਾ ਹੁਣ ਕਲੂਰ ਹੋਰ ਬੜੇ ਹੋ ਗਏ ਉਹਨਾਂ ਨੇ ਭੜਕੇ ਚਾਟੀ ਦਾ ਦੇਣੀ ਜਿਹੜਾ ਖੇਤੀ ਕੀਤੀ ਆ ਉਹਨੂੰ ਚਾਟੀ ਪੁੱਠੀ ਕਰਕੇ ਉਹ ਤਾਂ ਮੁੱਠੀ ਦੇਣੀ ਜਿਹੜੇ ਦਾਣੇ ਉੱਤੇ ਆ ਗਏ ਉਹ ਰਾਜ ਨੇ ਲੈ ਲੈਣੇ ਬਸ ਰਹਿ ਗਿਆ ਲੈ ਲੈਣਾ ਨਹੀਂ ਰਹਿ ਗਿਆ ਉਹਨੂੰ ਦੇ ਦਿੰਦੇ ਹੋਰ ਬਾਤ ਕੁਝ ਆ ਰਹਾ ਜੇ ਕੋਨਾ ਕਿਨਾ ਕੋਚਾ ਕਿੱਡੀ ਹੋਤ ਨੇ ਹੋਰ ਥੋੜਾ ਕੋਚਾ ਉਹ ਇੱਥੇ ਪੱਥਰ ਨਿਕਲਦਾ ਕਿ ਤੋ ਕੁਝ ਨਿਕਲਦਾ ਕਿ ਤੋ ਕੁਝ ਨਿਕਲਦਾ ਰਾਜਾਂ ਤਾਂ ਹੀ ਰੱਖਣੀ ਪੈਂਦੀ ਹੈ ਕਿਉਂਕਿ ਸ਼ਾਂਤੀ ਆ ਲੋਕਾਂ ਚ ਉਸ ਰਾਜ ਪ੍ਰਬੰਧਨ ਦਾ ਖਰਚਾ ਵੱਧ ਜਾਂਦਾ ਜਿਹੜੇ ਰਾਜ ਪ੍ਰਬੰਧਨ ਵਿੱਚ ਕਰਾਪਸ਼ਨ ਹੁੰਦੀ ਹੈ ਖਰਚੇ ਵਾਜਾ ਦੋ ਤਾਂ ਆਪੇ ਕੋਈ ਬਈਮਾਨ ਬੈਠੇ ਨੇ ਉੱਤੇ ਕਹਾ ਹਵਲਦਾਰ ਨਹੀਂ ਹੁਣ ਪਬਲਿਕ ਦੇ ਵਿੱਚ ਸ਼ਾਂਤੀ ਹੈ ਦੁਨੀਆ 'ਚ ਸ਼ਾਂਤੀ ਹੈ ਇਸ ਕਰਕੇ ਸਰਕਾਰਾਂ ਦੇ ਖਰਚੇ ਵਧੇ ਹੋਏ ਹਵਲਦਾਰ ਨਹੀਂ ਹੈ ਰਾਜਕਰਨ ਜੇ ਰਾਜਕਰਨ ਵਾਲੇ ਵੰਦਰਾਂ ਨੂੰ ਖਰਚਾਈ ਨਹੀਂ ਖਰਚਾ ਦਾ ਲੋੜ ਨਹੀਂ ਪੈਂਦੀ ਆ Rajasthan 'ਚ ਪਿਛਲੇ 3 ਸਾਲ ਪਹਿਲਾਂ ਤੱਕ ਕਿਸੇ ਨਾਲੇ ਦੋਸ਼ ਪਾਈ ਗਦੇ ਚਾਰ ਸਪਾਈ ਬਸ ਲੋੜੇ ਨਹੀਂ ਪੈਂਦੀ ਗਾ ਸਾਨੂੰ ਕੋਈ ਕੇਸ ਹੈ ਨਹੀਂ ਉਹਦਾ ਕੋਈ ਕੋਈ ਕਰਦਾ ਹੀ ਨਹੀਂ ਕੁਝ ਗਰੀਬੀ ਹੈਗੀ ਆ ਦੂਰ ਦੂਰ ਤੱਕ ਉਹ ਹੈ ਕੋਈ ਪੈਦਾ ਨਹੀਂ ਕੋਈ ਝਗੜਾ ਨਹੀਂ ਜਿਵੇਂ ਝਗੜੇ ਕਾਦੇ ਨੇ ਜ਼ਮੀਨ ਦੇ ਨੇ ਜ਼ਮੀਨ ਤੋਂ ਤਾਂ ਕੋਈ ਹੁੰਦਾ ਨਹੀਂ ਵਹਿਲੀ ਪਈ ਹੈ ਪੈਸਾ ਲੋਕਾਂ ਕੋਲ ਹੈ ਹੋਰੀ ਜਦ ਪ੍ਰੋਸਪਰਿਟੀ ਵੱਧਦੀ ਹੈ ਨਾ ਪੈਸਾ ਵੱਧਦਾ ਝਗੜੇ ਵੀ ਹੁੰਦੇ ਨੇ ਕਹੂੰ ਰੋਗ ਰਹਿਤ ਅਭਰਮ ਕਿਤੇ ਰੋਗ ਰਹਿਤ ਅਭਰਮ ਰੋਗ ਰਹਤਾ ਹੈ ਕੋਈ ਰੋਗ ਰਹਿਤ ਹੋ ਰਹੇ ਦੇ ਕੁਛ ਕੁਝੇ ਸਮਝਦੇ ਨਾ ਅਸੀਂ ਰੋਗੀਓ ਸੰਸਾਰ ਰੋਗੀ ਨਾਮਦਾਰੂ ਰੋਗ ਸਮਝਦੇ ਨੇ ਵਕਾਰ ਸਾਰੇ ਰੋਗੇ ਨੇ ਸਾਰਿਆਂ ਨਾਲ ਵੱਡਾ ਰੋਗ ਹੈਕਾਰ ਦਾ ਹੈ ਵਾਕੀ ਵੀ ਰੋਗੇ ਨੇ ਸਾਰੇ ਕਉਂ ਰੋਗਾਂ ਤੋਂ ਰਹਿਦ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਕਉਂ ਰੋਗ ਰਹਿ ਤਾਂ ਪਰਮ ਪਰਮ ਕਰਕੇ ਸਾਰੇ ਰੋਗ ਨੇ ਇਹ ਵੀ ਪਤਾ ਉਹ ਸਖਾਂ ਨੂੰ ਵੀ ਪਤਾ ਵੀ ਰੋਗ ਪਰਮ ਕਰਕੇ ਇਹਦੇ ਦੂਰ ਕਰਨ ਦੀ ਕੋਸ਼ਿਸ਼ ਹੋ ਰਹੀ ਜਗਤ ਉਹ ਗਿਆਨ ਪੜਦੇ ਕਉਂ ਕਰਮ ਕਰਤ ਕਿਤੇ ਕਰਮ ਦਾ ਕਰਦੇ ਨੇ ਧਰਮ ਦੇ ਪਰ ਐ ਬਹੁਤ ਪੁੱਠੇ ਨਾ ਕਰਨ ਵਾਲੇ ਕਰਮ ਕਰਦੇ ਤਰਮ ਦੇ ਨਾਲ ਉਹਦੇ ਕਰਮ ਹੁੰਦੇ ਨੇ ਨਾ ਅਬੱਤੀਆਂ ਦੀਆਂ ਨਹੀਂ ਹੁੰਦੇ ਧਰਮ ਲੋਗ ਹੈ ਬਹੁਤ ਹੀ ਕਿਰਨਿਤ ਕੰਮ ਕਰਦੇ ਨੇ ਧਰਮ ਦੇ ਰੋਤ ਕਹੂੰ ਸ਼ੇਖ ਬ੍ਰਹਮ ਸਰੂਪ ਕਿਤੇ ਸ਼ੇਖ ਨੇ ਸ਼ੇਖ ਮੁਸਲਮਾਨਾਂ ਨੇ ਸੀ ਸ਼ੇਖ ਨੇ ਬ੍ਰਹਮ ਸਰੂਪ ਕਿਤੇ ਬ੍ਰਹਮ ਬ੍ਰਹਮਾਦੇਸ ਰੂਪ ਨੇ ਉਹ شیخ ਆਪਣੇ ਕੁਰਾਨ ਦਾ ਪ੍ਰਚਾਰ ਕਰ ਇਸਲਾਮ ਦਾ ਪ੍ਰਚਾਰ ਕਰਦੇ ਨੇ ਇਹ ਆਪਣੇ ਵੈਦਾਨਾ ਪ੍ਰਚਾਰ ਕਰਦੇ ਨੇ ਬ੍ਰਹਮਸਰੂਪ ਨੇ ਜਿਹੜੇ ਬ੍ਰਾਹਮਣ ਨੇ ਬ੍ਰਹਮਸਰੂਪ ਕਹਿੰਦੇ ਬ੍ਰਾਹਮਣ ਕੋਹ ਨੀਤ ਰਾਜ ਅਨੂਪ ਕਿਤੇ ਰਾਜਨੀਤਿਕ ਲੋਕ ਦੇ ਰਾਜਨੀਤੀ ਦੀ ਪੜਾਈ ਪੜਾ ਰਹੇ ਨੇ ਰਾਜਨੀਤੀ ਦਾ ਕੋਈ ਬਗੈਰ ਰਾਜਨੀਤੀ ਕਰਕੇ ਕਿਸੇ ਦੀ ਇੱਜ਼ਤ ਹੈ ਰਾਜਨੀਤੀ ਵੀ ਧਰਮ ਦੀ ਨੀਤੀ ਦਿਖੋ ਦਿੱਤੀ ਹੈ ਰਾਜਨੀਤੀ ਧਰਮ ਦੀ ਦਿੱਤੀ ਹੀ ਰਾਜਨੀਤੀ ਹੈ ਰਾਜ ਦੇ ਪਾਵਰ ਨਾਲ ਰਾਜ ਦੀ ਪਾਵਰ ਨਾਲ ਮਤਲਬ ਸੱਚ ਜਿਹੜਾ ਇਨਸਾਫ ਆ ਇਨਸਾਫ ਦਾ ਰਾਜ ਕਰ ਲੋ ਇਹ ਰਾਜ ਦਿੱਤੀ ਪਰ ਅਜ ਰਾਜ ਨੇ ਦੇਤੀ ਹੈ ਰਾਜ ਖੋਣਾ ਬਾਈ ਹੁਕਰ ਕਰ ਰੁਕ ਹੂੰ ਕੁਰਸੀ ਛਿਡਣੀਆਂ ਅਸੀਂ ਬਾਈ ਹੁਕਰ ਕਰ ਰੁਕ ਜਾਇਜ ਨਾਇਜ ਕੋਈ ਤਰੀਕਾ ਵਰਤਣਾ ਵਜਮੇ ਅਸੀਂ ਕਬ ਜੋੜੇ ਰਾਜ ਤੇ ये राजनीति नहीं है राजनीति नहीं है इन राजनीतिनी क्या जा सकता है समझी राजनीतिनी है कर्म धर्म शास्त्र में उदाहरण राजनीतिनी है ये अकर्म कर्म कह सकते हैं अनु है, है तो राजनीति हो यानी अकर्म कर्म दू राजनीति बदलया गया ਜਿਹੜੇ ਅਕ ਬڑے-ਬڑے ਢਕਾਇਆ ਤੇ ਹੋਰ ਆਦਮੀ ਨੇ ਸਾਰੇ ਬੁਰੇ ਆ ਜਾਂਦੇ ਲੋਕਾਂ ਨੂੰ ਡਰਾ ਕੇ ਵੋਟਾਂ ਲੈ ਲੀਆਂ ਪੈਸਾ ਦੇ ਕੇ ਇਹ ਰਾਜਨੀਤੀ ਰਾਜਨੀਤੀ ਕਹਿੰਦੇ ਰਾਜਨੀਤੀ ਧਰਮ ਦੀ ਤੀ ਦੇ ਅਨੁਸਾਰ ਹੋਵੇ ਤਾਂ ਰਾਜ ਰਾਜਨੀਤੀ ਉਹ ਹੈ ਜਿਹੜੀ ਉਹ ਨੀਤੀ ਹੋਵੇ ਜਿਹਦੇ ਨਾਲ ਧਰਮ ਲਿਆਉਣ ਉੱਪਰ ਸਾਬ ਲੋਕ ਕਾਨੂੰਨ ਦਿੰਦੇ ਰਹਿਣ ਬੱਦੋ ਵਦੇ ਦੂਜਾ ਕਹਿੰਦੇ ਦੋ ਵੇ ਵਧੀਆ ਸਰਵ ਕਰੂਗਾ ਇਹ ਤੋਂ ਵਧੀਆ ਲੋਕਾਂ ਨੂੰ ਦੇਖੋ ਪ੍ਰਚਾਰ ਤਾਂ ਇਹੀ ਕਰਦੇ ਨੇ ਵੀ ਅਸੀਂ ਦੋ ਜ਼ਿਆਦਾ ਖੁਸ਼ੀ ਲੋਕਾਂ ਨੂੰ ਰੱਖਾਂਗੇ ਬਾਅਦ ਕੀ ਕਰਦੇ ਨੇ ਝੂਠ ਬੋਲਦੇ ਨੇ ਸਾਰਾ ਝੂਠ ਬੋਲ ਕੇ ਵੋਟਾਂ ਲੈ ਲੈਂਦੇ ਨੇ ਬਾਅਦ ਦੇ ਵਿੱਚ ਇਹ ਰਾਜਨੀਤੀ ਨਹੀਂ ਇਹ ਕੂੜ ਹੈ ਕੂੜ ਨੀਤੀ ਕੂੜ ਕਹੂੰ ਰੋਗ ਤੋਂ ਵੀ ਹੋਰ ਚੀਜ਼ ਹੈ ਕੂੜ ਨਹੀਂ ਤੇ ਹੋਰ ਚੀਜ਼ ਹੈ ਕੂੜ ਨਹੀਂ ਤੇ ਝੂਠ ਫਰਾਡ ਕਪਟ ਇਹ ਰਾਜਨੀਤੀ ਜੇ ਨਹੀਂ ਰਾਜ ਹੋਣਾ ਭਾਈ ਉਹ ਕਰ ਕਰੋ ਝੂਠ ਬੋਲਣਾ ਪੈ ਜਾਏ ਕਪਟ ਕਰਨਾ ਪੈ ਜਾਏ ਜੋ ਮਰਜੀ ਕਰਨਾ ਪੈ ਜਾਏ ਬੜਰ ਕਰਨਾ ਪੈ ਜਾਏ ਕੁਝ ਵੀ ਕਰਨਾ ਪੈ ਜਾਏ ਰਾਜ ਖੋਲ ਇਹ ਰਾਜਨੀਤੀ ਇਹ ਬਹੁਤ ਖਤਰਨਾਕ ਸਟੇਜ ਹੈ ਇਹ ਇਹ ਤਾਂ ਖਤਰਨਾਕ ਸਟੇਜ ਹੈ ਜਿੰਦਾ ਜਨਕ ਪੋਜੀਸ਼ਨ ਰਹਿ ਪ੍ਰਾਇਜ ਨਹੀਂ ਹੁੰਦੀ ਕਹੂੰ ਰੋਗ ਸੋਗ ਬਹੀਨ ਕਹੂੰ ਰੋਗ ਸੋਗ ਬਹੀਨ ਕਿਤੇ ਰੋਗ ਸੋਗ ਬਹੀਨ ਕਈਆਂ ਦੇ ਮਨ ਚ ਟਿਕਾਉ ਹੈ ਨਾ ਰੋਗ ਹਨ ਸੋਗ ਹੈ ਰੋਗ ਸੋਗ ਸਭ ਟਿਕਾਇਆ ਤੇ ਨਵਨ ਰੋਆ ਕਹੂੰ ਏਕ ਭਗਤ ਅਧੀਨ ਹਾਂ ਕਿਤੇ ਇੱਕ ਭਗਤੀ ਦੇ ਅਧੀਨ ਸਿਰਫ ਭਗਤੀ ਦੇ ਬਿਨੋਂ ਕੁਛ ਕਰਦਾ ਹੀ ਨਹੀਂ ਕਹੂੰ ਰੰਕ ਰਾਜਕੁਮਾਰ ਕਿਤੇ ਰੰਕ ਰਾਜਕੁਮਾਰ ਨੇ ਰਾਜਕੁਮਾਰ ਰੰਕ ਹੋ ਜਾਂਦੇ ਨੇ ਕਹਿੰਦੇ ਰਾਜਕੁਮਾਰ ਛੱਡ ਕੇ ਕੰਗਾਲ ਹੋ ਕੇ ਸਾਧ ਬਣ ਜਾਣਾ ਇਹ ਭਗਤੀ ਹੈ ਉਹ ਹੋ ਗਿਆ ਸੀ ਨਾ ਆਪਣੇ ਬੁੱਧ ਬੁੱਧ ਕੀ ਸੀ ਰਾਜਕਮਾਰ ਸੀ ਉਹ ਛਲਿਆ ਗਿਆ ਨਾ ਜਾ ਕੇ ਬਾਹਰ ਜੁੱਦਲ ਜੀ ਰੰਕ ਹੋ ਗਿਆ ਨਾ ਕੋਈ ਪੈਸਾ ਤਾਂ ਲੈ ਕੇ ਨਹੀਂ ਗਿਆ ਕੋਟ ਰਾਜਛੜ ਦੇ ਰੰਗਾਂ ਕੋ ਹੋ ਜਾ ਲੋ ਇਹਨੂੰ ਭਗਤੀ ਸਮਝਦੇ ਸੀ ਕਹੂੰ 베ਦ ਵਿਆਸ અવਤਾਰ ਕਹਿੰਦੇ 베ਦ ਵਿਆਸ ਦੇ અવਤਾਰ ਹੋਏ ਬੈਠੇ ਨੇ ਵੀ ਅਸੀਂ 베ਦ ਵਿਆਸ ਤੇ ਕਈ ਬ੍ਰਹਮ 베ਦ ਰਟੰਤ ਕਈ ਬ੍ਰਹਮ ਬ੍ਰਾਹਮਣ ਨੇ 베ਦਾਂ ਨੂੰ ਰੜ ਰਹੇ ਨੇ ਬ੍ਰਾਹਮਣ ਨੇ 베ਦਾਂ ਨੂੰ ਯਾਦ ਕਰ ਰਹੇ ਨੇ ਜਵਾਨੀ ਕੋਈ ਇੱਕ 베ਦ ਕੋਈ ਦੋ 베ਦੀ ਆ ਕੋਈ ਤ੍ਰਿ베ਦੀ ਆ ਕੋਈ ਚਤੁਰ베ਦੀ ਆ ਵੇਦਰਾ ਡਾਟਰਾ ਹੈ ਨਹੀਂ ਕੋਈ ਸ਼ੇਖ ਨਾਮ ਉਚਰੰਤ ਸ਼ੇਖ ਨੇ ਨਾਮ ਵਿਚਾਰਦੇ ਨੇ ਨੇ ਭਲਾ ਉਹੀ ਰੇੜੇ ਬੈਠੇ ਨੇ ਸ਼ੇਖਾਉਣ ਸ਼ੇਖਾਉਣ ਕੋਈ ਬੈਠੇ ਰਹਿੰਦਾ ਉਹਦੇ ਵਿੱਚ ਬੈਠ ਕੇ ਮਾਲਾ ਫੇਰਦੇ ਨੇ ਸ਼ੇਖ ਨੇ ਸਾਰੇ ਇਹ ਸ਼ੇਖਨਾਗ ਨੇ ਸਾਰੇ ਜਿਵੇਂ ਰਾੜੇ ਆਲਾ ਫੇਰਦਾ ਸੀ ਪਿੱਛੋਂ ਕੀ ਕਰਦੇ ਨੇ ਉੱਡ ਚਲੇ ਇਹ ਤੇ ਬੰਦੇ ਜਿਹੜੇ ਜੁੱਤੀਆਂ ਪੋਈ ਜਾਂਦੇ ਉਹਦੀਆਂ ਹੋਰ ਕੀ ਕਰਦੇ ਹੋਰ ਕੀ ਉਹ ਜਿਹੜਾ ਦੇ ਗਿਆ ਇਹਨਾਂ ਨੂੰ ਆਏ ਬਸ ਉਹਨੂੰ ਹੋਰ ਆ ਕੀ ਉਹ ਉਹ ਦੁਨੀਆ ਦਾ ਸਦਾ ਸਭ ਕੁਝ ਕਿਹਾ ਹੋਇਆ ਸਿੱਖੀ ਦੇ ਨਾਮ ਤੇ ਸਭ ਕੁਝ ਚੱਲਦਾ ਫਰਮ ਕੋਲ ਕਿਹਾ ਹੋਇਆ ਹੈ ਔਰ ਸਿੱਖੀ ਦੇ ਨੋਤੇ ਚੱਲਦਾ ਕਿ ਉਹਦਾ ਪ੍ਰਚਾਰ ਨਹੀਂ ਨਾ ਗੱਲਾਂ ਦਾ ਹੋਇਆ ਜੇ ਪ੍ਰਚਾਰ ਹੁੰਦਾ ਪਹਿਲਾਂ ਤਾਂ ਜਿਹੜੇ ਕਮੇਟੀ ਵਾਲੇ ਨੇ ਵੀ ਮਰਦੇ ਨੇ ਸਾਰੇ ਸਿਆਸੀ ਆਦਮੀ ਕਰਦੇ ਵਜਦਾ ਕੌਣ ਹੈ ਜੇ ਇਹਦਾ ਪ੍ਰਚਾਰ ਹੋ ਜਾ ਤਾਂ ਨਹੀਂ ਕਰਦੇ ਪ੍ਰਚਾਰ ਵਜਦਾ ਹੀ ਕੋਈ ਨਹੀਂ ਇਹਦੇ ਵਿੱਚ ਕੋਈ ਨਹੀਂ ਵਜਦਾ ਇਹ ਹੁਣ ਸਾਰਿਆਂ ਨੇ ਸਲਾਹ ਕਰ ਲਈ ਵੀ ਇਹਨੂੰ ਰਹਿਣ ਦੋ ਪ੍ਰਚਾਰ ਇਹਨੂੰ ਕਰੋ ਆਦਮਰਾਂ ਦਾ ਪ੍ਰਚਾਰ ਨਗਰੋਂ ਬੜਾ ਸੋਖਾ ਲੋਕਾਂ ਨੂੰ ਆਜੂ ਸਮਝ ਸਾਰੇ ਆਪਣੇ ਵਾਲ ਉਂਗਲੀ ਉਠੂ ਬਚਿਆ ਕੋਈ ਨਹੀਂ ਸਾਰਿਆਂ ਨੇ ਸਲਾਹ ਕਰਕੇ ਛੱਡਿਆ ਹੈ ਵੀ ਇਹਨੂੰ ਰਹਿਣੇ ਦੋ ਬੜੋ ਹੀ ਬੱਚੀ ਉਹ ਤੇ ਬਾਹਰ ਬੱਚੀ ਉਹਨਾਂ ਦੀ ਵਗ ਤੇ ਬਾਹਰ ਸਾਰਿਆਂ ਨੇ ਛੇਕ ਹੋਏ ਨੇ ਉਹ ਹੁਣ ਛੇਕ ਹੋਣ ਸਾਰਿਆਂ ਨੇ ਵੀ ਨੇ ਜਾ ਲੋਕਾਂ ਨੇ ਠੀਕ ਆ ਸੀ ਖੋਸ਼ਾ ਚੈੱਕ ਹੋਈ ਵਧੀਆ ਹੁਣ ਪਤਾ ਨਹੀਂ ਸ਼ਿਕਾ ਕਾਲਜਾਂ ਜਾਂਦੇ ਪਤਾ ਤੇ ਪਤਾ ਲੱਗੂ ਕੱਚ ਪੱਕੇ ਦਾ ਕੌਣ ਠੀਕ ਹੈ ਕੌਣ ਗਲਤ ਹੈ ਇਹ ਤਾਂ ਸਾਰੇ ਆਪਣੇ ਅੰਮ੍ਰੋ ਠੀਕ ਕਹਿੰਦੇ ਨੇ ਸਾਰੇ ਕਹਿੰਦੇ ਨੇ ਸਭ ਕੋ ਪੂਰਾ ਆਪੋ ਹੋਵੇ ਘੱਟ ਨਾ ਕੋ ਪਾਈਏ ਤਾਂ ਨਾਨਕ ਤੋਲਿਆ ਜਾਪ ਇਹ ਤਾਂ ਡਾਉੜੇ ਵਰਗੀ ਦੀ ਸੀਮਾਨ ਜਦੋਂ ਇਹ ਪ੍ਰਚਾਰ ਦੀ ਗੱਲ ਉਹ ਕਹਿੰਦਾ ਨਾ ਲੋ ਲੋ ਲੋ ਤੁਸੀਂ ਕਿੱਲ ਦੀ ਜਗਾ ਹੋਏ ਸਰੋਵੜੀ ਕਮੇਟੀ ਦਾ ਪ੍ਰਚਾਰਥੀ ਕੀ ਨਾ ਅਸੀਂ ਕਿਹਾ ਅਸੀਂ ਪ੍ਰਚਾਰ ਕਰਨੇ ਚਾਹਦੇ ਕਹਿੰਦੇ ਤੁਸੀਂ ਕਿੱਲ ਆ ਗਏ ਸਰੋਵੜੀ ਕਮੇਟੀ ਦਾ ਗੁਰਮਤਿ ਪ੍ਰਚਾਰਥੀ ਕੋਹਾ ਕਲੰਡੀ ਤੁਸੀਂ ਬਾਹਰ ਜਾਓ ਐ ਤਾਂ ਹੋਰ ਜੋ ਪ੍ਰਚਾਰ ਕਰਦੇ ਤੇ ਸਵਾਲ ਕਰਨੀ ਹੈ ਦਾ ਪ੍ਰਬੰਧ ਹੈ ਇਹ ਤਾਂ ਗੋਲਕਦੀ ਬੰਡਰ ਤੇ ਕੀ ਮਤਲਬ ਆ ਗੋਲਕਦਾ ਪ੍ਰਬੰਧ ਹੈ ਤੇ ਤਾਂ ਪ੍ਰਚਾਰ ਦਾ ਕੋਈ ਮਤਲਬ ਨਹੀਂ ਬੈਰਾਗ ਹੂੰ ਸੰਨਿਆਸ ਪਰ ਬੈਰਾਗ ਹੈ ਕਿਤੇ ਕਿਤੇ ਸੰਨਿਆਸੀ ਨੇ ਕਿਤੇ ਬੈਰਾਗ ਦਾ ਪ੍ਰਚਾਰ ਹੋ ਰਿਹਾ ਸੰਨਿਆਸ ਦਾ ਪ੍ਰਚਾਰ ਹੋ ਰਿਹਾ ਰੂਪ ਉਦਾਸ ਕਿਤੇ ਵਿਚਾਰੇ ਉਦਾਸੀ ਬਣੇ ਕੋਈ ਜਾਂਦੇ ਨੇ ਬੋਲਦੇ ਹੀ ਨਹੀਂ ਕਿਸੇ ਨਾਲ ਸਭ ਕਰਮ ਫੋਕਟ ਜਾਣ ਇਹ ਸਾਰੇ ਹੀ ਕਰਮ ਫੋਕੇ ਲੋ ਜਿੰਨੇ ਘਣਾਤੇ ਨਾ ਇਹ ਸਾਰੇ ਫੋਕੇਨ ਤਸੋ ਬਜਿਆ ਕੌਣ ਸਭ ਧਰਮ ਨੇ ਬਲਮਾਨ ਇਹ ਸਾਰੇ ਧਰਮਾਂ ਨੂੰ ਕੋਈ ਫਰਲੀ ਲੱਗਦਾ ਫਸਲ ਬੜੀ ਹੋਊਗੀ ਦੋਏ ਤਿਲਾਂ ਨਾਲ ਤਿਲਾਂ ਦੇ ਬੂਟੇ ਬੜੇ ਹੋਣਗੇ ਫੁੱਲ ਉਹਨਾਂ ਨਾਲੋਂ ਜ਼ਿਆਦਾ ਲੱਗਣਗੇ ਡੋਡੀਆਂ ਮੋਡੀਆਂ ਹੋਣਗੀਆਂ ਪਰ ਵਿੱਚ ਕੀ ਹੋਊ ਵਿੱਚ ਸਵਾ ਪੀਤਨ ਵਿੱਚ ਸਵਾ ਵਾਹ ਫੜੀਏ ਭੁਲੀਏ ਬਪੜੇ ਪੀਤਨ ਵਿੱਚ ਸਵਾ ਦੇਖਣ ਨੂੰ ਬਹੁਤ ਇਹਨਾਂ ਦੇ ਬਗਰ ਪਬਲਿਕ ਹੋਊਗੀ ਡੇਰੇ ਬੜੇ ਵਧੀਆ ਹੋਣਗੇ ਚਮਕਦਮਕ ਬਹੁਤ ਹੋਊਗੀ ਪਰ ਅੰਦਰ ਕੀ ਹੋਊਗਾ ਅੰਦਰ ਸਵਾ ਵਿੱਚ ਕੁਛ ਨਹੀਂ ਹੈ ਲੈਣ ਇਹਨਾਂ ਕੋਲ ਤਤ ਗਿਆਨ ਵਾਲੀ ਕੋਈ ਗੱਲ ਨਹੀਂ ਦਖਾਵਾ ਇਹ ਸਭ ਕੁਝ ਹੈ ਬੁੱਟਾ ਤਗੜਾ ਦਿਖਾਵਾ ਹੈ ਸਿਹਤ ਚੰਗੀ ਆਰਾਂ ਦੀ ਦਿਖਾਵਾ ਹੈ ਕੱਪੜੇ ਵਧੀਆ ਨੇ ਫੋਲ ਵਧੀਆ ਨੇ ਦਿਖਾਵਾ ਹੈ ਬਾਣੇ ਵਧੀਆ ਨੇ ਸਭ ਦਿਖਾਵਾ ਹੈ ਆਤਮਾ ਵਧੀਆ ਨਹੀਂ ਹੈ ਆਤਮਿਕਾਂ ਨਹੀਂ ਹੈ ਹਾਂ ਪਰਦੇਦ ਅਰਦਾਸ ਕਰ ਦਿੰਦੇ ਹਾਂ ਇਹ ਗੱਲਾਂ ਹੈ ਬਿਨ ਇੱਕ ਨਾਮ ਆਧਾਰ ਸਭ ਕਰਮ ਧਰਮ ਵਿਚਾਰ ਬਿਨ ਇੱਕ ਨਾਮ ਆਧਾਰ ਕੇਵਲ ਇੱਕ ਨਾਮ ਦੇ ਆਧਾਰ ਤੋਂ ਬਿਨਾ ਜਿਹੜੇ ਸਾਰੇ ਕਰਮ ਨੇ ਧਰਮ ਨੇ ਬੇਕਾਰ ਨੇ ਸਭ ਤਾਂ ਉਹ ਮੇਰੇ ਨਾਲ